ਮੰਤਰ ਮਾਤਨ ਮਿੱਤਰ ਜਿਹਦੇ ਕੋਈ ਜਾਤ ਨਹੀਂ ਸਰੀਰ ਨਹੀਂ ਔਰ ਨਾ ਹੀ ਉਹ ਪਤਿਤ ਹੋ ਸਕਦਾ ਨਾ ਕੋਈ ਬਾਪ ਹੈ ਨਾ ਕੋਈ ਮਿੱਤਰ ਹੈ ਨਾ ਕੋਈ ਬਤਰੀ ਹੈ ਮਾਂ ਹੈ ਬਾਤਰੀ ਮਾਂ ਨੂੰ ਕਹਿੰਦੇ ਨੇ ਮੰਤਰ ਮਾਤਨ ਮਿੱਤਰ ਔਰ ਨਾ ਕੋਈ ਬੁੱਤਰ ਹੈ ਉਹਦਾ ਉਹ ਵਰਤਰ ਵੀ ਕੋਈ ਨਹੀਂ ਉਹਦਾ ਸਭ ਉੱਤਰ ਨਹੀਂ ਜਿਹਦੇ ਨਾਲ ਬਸ ਚਾਜ ਮੇ ਕੋਈ ਉਹ ਬਸ ਕੀਤਾ ਜਾ ਸਕਦਾ ਉਹ ਬਸ ਕੱਢਣਾ ਕੋਈ ਬੁੱਤ ਨਹੀਂ ਸਰਬ ਠੌਰ ਵਿਖੇ ਰਮਿਓ ਜੈ ਚੱਕਰ ਚਹਿਣ ਨਛਤਰ ਫਿਰ ਵੀ ਉਹ ਸਾਰਿਆਂ ਦੇ ਵਿੱਚ ਰਹਿ ਰਮਿਆ ਹੋਇਆ ਫਿਰ ਵੀ ਉਹ ਸਾਰਿਆਂ ਵਿੱਚ ਰਮਿਆ ਹੋਇਆ ਹਰ ਹਿੱਤੇ ਵਿੱਚ ਰਮਿਆ ਹੋਇਆ ਕੀ ਤੇ ਚੱਕਰ ਚੱਲਦੀ ਕੋਈ ਵੀ ਤਾਂ ਕੋਈ ਸ਼ਕਲ ਹੈ ਚਿੱਤਰ ਨਾ ਕੋਈ ਚਿੱਤਰ ਹੈ ਨਾ ਚੱਕਰ ਹੈ ਨਾ ਚਿੱਦ ਫਿਰ ਵੀ ਸਾਰਿਆਂ ਵਿੱਚ ਰਹਿਣਾ ਹੈ ਆਦੀ ਦੇਵ ਉਦਾਰ ਮੂਰਤ ਅਗਾਧਨਾਥ ਅਨੰਤ ਉਹ ਆਦਿ ਦੇਵ ਹੈ ਐਸਾ ਦੇਵ ਹੈ ਜਿਹਦੇ ਨਾਲ ਸ੍ਰਿਸ਼ਟੀ ਦਾ ਮੁੱਢ ਵੱਜਾ ਸ੍ਰਿਸ਼ਟੀ ਸ਼ੁਰੂ ਹੋਈ ਹੈ ਉਦਾਰ ਮੂਰਤ ਉਦਾਰ ਮੂਰਤ ਹੈ ਉਦਾਰ ਮੂਰਤ ਕਹਿੰਦੇ ਨੇ ਮੂਰਤੀ ਮਾਨ ਅੱਖਾਂ ਨੂੰ ਦੇਖਣ ਵਾਲੀ ਜੇ ਮੂਰਤੀ ਨਹੀਂ ਤਾਂ ਫਿਰ ਕੀ ਹੋ ਗਿਆ ਹੈ ਤਾਂ ਮੂਰਤੀ ਹੋ ਅਕਾਲ ਮੂਰਤ ਅੱਖਾਂ ਨੂੰ ਦੇਖਣ ਵਾਲੀ ਮੂਰਤੀ ਅਕਾਲ ਮੂਰਤ ਨਹੀਂ ਹੁੰਦੀ ਕਾਲ ਮੂਰਤ ਹੁੰਦੀ ਕਾਲ ਹੁੰਦੀ ਹੈ ਜੋ ਅੱਖਾਂ ਨੂੰ ਦੇਦਾ ਕਾਲ ਵਸ ਹੈ ਕਿਉਂਕਿ ਅਕਾਲ ਮੂਰਤ ਹੈ ਇਸ ਦਾ ਸਾਡੇ ਗਿਆਨ ਨੂੰ ਤੇ ਪਰੇ ਹੈ ਜੋ ਗਿਆਨ ਇੰਦਰਾਂ ਦੇ ਵਿੱਚ ਹੈ ਉਹ ਕਾਲ ਹੈ ਸਾਰਾ ਹੀ ਵਾਯੂ ਜੋ ਜਿਸ ਅਨੰਤ ਅਗਾਧ ਨਾਥ ਹੈ ਉਹ ਨਾਥ ਹੈ ਸਾਰਾਂ ਦਿਨ ਹੱਥ ਪਾਈ ਹੋਈ ਆ ਸਾਰੇ ਉਹਦੇ ਹੁਕਮ ਚ ਚੱਲੇ ਉਹਦੀ ਇਛਾ ਅਨਸਾਰ ਚੱਲਦੇ ਨੇ ਅਗਾਧ ਹੈ ਉਹ ਬੁੱਧੀ ਫੇਰ ਵੀ ਅਸੀਂ ਇਹ ਨਹੀਂ ਬਿਲਦੇ ਵੀ ਅਸੀਂ ਉਹਦੇ ਹੁਕਮ ਚ ਅਗਾਧ ਬਸ ਰਹੇ ਸਾਰੇ ਉਹਦੇ ਹੁਕਮ ਚ ਚੱਲਦੇ ਨੇ ਸਮਝ ਕੇ ਜ਼ਰੂਰੀ ਉਹਦੇ ਹੁਕਮ ਚ ਤਾਂ ਅਗਾਧ ਜੇ ਸਾਨੂੰ ਪਤਾ ਹੋਵੇ ਫਿਰ ਅਗਾਧ ਅਗਾਧ ਰਹੇ ਸਾਰੇ ਕਹਿੰਦੇ ਨੇ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਹਾਂ ਮਰਜ਼ੀ ਨਾਲ ਹੋਣੀ ਚੱਲਦੇ। ਵਰਜੀ ਨਾਲ ਨਹੀਂ ਚੱਲਦੇ ਸੀ ਆਪਣੀ ਨਾਲ। ਕਰੀਏ। ਜੋ ਕਦ ਸਫਲ ਹੁੰਦੇ ਨੇ ਉਹ ਦੀ ਮਰਜ਼ੀ ਨਾਲ ਹੁੰਦੇ ਨੇ ਜਿਹੜੇ ਫੇਲ ਨੇ ਸਾਡੀ ਮਰਜ਼ੀ ਕੰਮ ਨਹੀਂ ਹੁੰਦੇ ਸਿਰੇ ਚੜਦੇ ਸਾਡੀ ਮਰਜ਼ੀ ਉਹਦੀ ਹੈ। ਜਿਹੜੇ ਸਿਰੇ ਚੜਦੇ ਉਹਦੀ ਹੀ ਹੁੰਦੀ। ਆਗਾਦ ਅਨੰਤ। ਆਗਾਦ ਹੈ ਉਹ। ਨਾਸਤ ਹੈ। ਆਗਾਦ ਹੈ ਬੁੱਧੀ ਤੋਂ ਪਰੇ ਹੈ। ਹਨ ਨਾਤਾ ਕਦੇ ਵੀ ਅੰਤਰੀਓ ਦਾ ਆਦ ਅੰਤ ਨੀ ਜਾਣੀ ਐ ਅਵਿਖਾਦ ਦੇਵ ਤੁਰੰਤ ਆਦ ਅੰਤ ਨਾ ਜਾਣੀ ਐ ਉਹਦਾ ਆਦ ਅੰਤ ਕਿਸੇ ਨੇ ਨਹੀਂ ਜਾਣੇ ਅਜ ਤੱਕ ਜਾਣੇ ਨਹੀਂ ਜਾ ਸਕਦਾ ਆਦ ਅੰਤ ਉਹਦਾ ਅਵਿਖਾਦ ਐ ਉਹ ਕੋਈ ਵਿਖਾਦ ਨਹੀਂ ਉਹਦੇ ਵਿੱਚ ਕਿਸੇ ਨਾਲ ਝਗੜਾ ਨਹੀਂ ਕਰਦਾ ਅਵਿਖਾਦ ਹੁੰਦਾ ਕਿਸੇ ਨਾਲ ਉਹਦਾ ਕੋਈ ਝਗੜਾ ਨਹੀਂ ਹੈ ਓਏ ਹਰਦੇ ਹਰਦੇ ਓਏ ਜਦੋਂ ਅਵਤਾਰ ਹੋਏ ਸਾਰਿਆਂ ਦੇ ਝਗੜੇ ਰਹੇ ਜਿੱਦਿੇ ਅਵਤਾਰ ਹੋਏ ਨੇ ਬੜ ਬੜੇ ਝਗੜਾ ਤਾਂ ਰਹੇ ਹੀ ਆ ਕਿਸੇ ਕਿਸ ਨਾਲ ਕਿਉਂਕਿ ਉਹਦਾ ਝਗੜਾ ਨਹੀਂ ਹੈ ਕਿਸੇ ਨਾਲ ਰਹਾ ਹਾਂ ਇਸ ਕਰਕੇ ਉਹਨੂੰ ਵਿਖਾਦ ਕਹਿ ਦਿੰਦੇ ਦੇਵ ਦੁਰੰਤ ਦੇਵ ਹੈ ਉਹ ਦੁਰੰਤ ਹੈ ਦੁਰੰਤ ਦਾ ਮਤਲਬ ਹੈ ਸਗੋਂ ਲੋਕਾਂ ਦੇ ਝਗੜੇ ਦੂਰ ਕਰਨ ਵਾਲਾ ਹੈ ਝਗੜਾ ਦੂਰੀ ਪੈਦਾ ਕਰਦਾ ਇੱਥੇ ਝਗੜਾ ਹੋ ਦੂਰੀ ਪੈਦਾ ਹੋ ਗਈ ਬਣਾਦੀ ਦੂਰੀ ਪੈਦਾ ਕਰਦਾ ਝਗੜਾ ਦੁਰੰਤ ਦੂਰੀਆਂ ਦਾ ਤਾਂ ਅੰਤ ਕਰਦਾ ਉਹ ਆਪਣਾ ਝਗੜਾ ਇੱਥੇ ਜਦੋਂ ਉਹਜਾ ਹੋ ਜਾਂਦਾ ਫੇਰ ਕਬੀਰ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੂੰ ਪਰ ਹੰਤ ਬੁੱਲਾ ਛੱਡ ਦੇ ਦੂ ਜਿਹਦਾ ਝਗੜਾ ਮੁੱਕ ਗਿਆ ਉਹਜਾ ਹੀ ਹੋ ਗਿਆ ਜਿੰਨਾ ਚਿਰ ਝਗੜਾ ਹੈ ਉਨਾ ਚਿਰ ਜੀਵ ਹੈ ਜੀਵ ਦਾ ਝਗੜਾ ਜਦੋਂ ਜੀਵ ਸੰਸਾਰੀ ਜੀਵਨ ਛੱਡ ਗਿਆ ਜਿੰਨਾ ਜਦ ਸੰਸਾਰੀ ਜੀਵਨ ਹੈ ਝਗੜਾ ਹੈ ਸੰਸਾਰ ਦੇ ਵਿੱਚ ਝਗੜਾ ਹੀ ਰਹਿਣਾ ਭਾਇਆ ਤੇਰੀ ਬੇਰੀਏ ਉਹਨੂੰ ਬਦਿ ਚਾਹੀਦੀ ਹੈ ਤੂੰ ਬਦ ਕਿਉਂ ਮਗਦਾ ਝਗੜੇ ਨਹੀਂ ਇਹਦੇ ਸੰਸਾਰੇ ਰਹਿਣੇ ਨਹੀਂ ਕੋਈ ਝਗੜੇ ਸੀਗੇ ਸਾਰੇ ਤਿਆਗਤਾ ਤੇ ਝਗੜਾ ਵੀ ਹੋ ਗਿਆ ਦੇਵ ਭੇਵ ਨਾ ਜਾਣਹੀ ਜੇ ਮਰਮ ਵੇਦਕ ਤੇਵ ਦੇਵ ਤੇ ਜਿਹਨਾਂ ਦੀ ਪੂਜਾ ਕਰਦੇ ਨੇ ਲੋਕ ਉਹਨਾਂ ਨੇ ਕਿਹਦਾ ਭੇਦ ਜਾਣੇ ਆਪ ਲੋਕ ਤਾਂ ਦੇਵਤਿਆਂ ਨੂੰ ਬਹੁਤ ਮੰਨਦੇ ਨੇ ਦੇਵਤਿਆਂ ਦੀ ਪੂਜਾ ਕਰਦੇ ਨੇ ਵੀ ਦੇਵਤੇ ਬਹੁਤ ਸ੍ਰੇਸ਼ਟ ਨੇ ਭਈ ਦੇਵਤਾਰੀ ਬਣਿਆ ਜਾ ਸਕਦਾ ਖੁਦ ਦੇਵਤੇ ਵੀ ਭੇਦ ਨਹੀਂ ਜਾਣਦੇ ਕਿਰਨ ਅਸੀਂ ਸ੍ਰੇਸ਼ਟ ਬੰਦੇ ਆ ਦੇਵ ਭੇਵ ਨਾ ਜਾਣਹੀਂ ਉਹਨਾਂ ਭੇਜ ਵੀ ਜਾਣਦੇ ਜਿਹ ਮਰਮ ਵੇਦਕ ਤੇਵ ਨਾ ਵੇਦਕ ਤੇਵ ਨਾ ਉਹਦਾ ਮਰਮ ਭਾ ਖੋਜ ਸਕੇ ਜਾਣ ਸਕੇ ਭੇਦ ਨਹੀਂ ਜਾਣ ਸਕੇ ਤੋ ਸਣਕ ਔ ਸਣਕੇਸ ਨੰਦਨ ਪਾਵਹੀਨਾ ਸੇਵ ਸਦਕ ਔਰ ਸਭ ਕੇ ਤਨੁਦਰ ਹੁੰਦਾ ਹੈ ਜਾਦਰ ਵਰਮਾ ਦੇ ਪੁੱਤ ਬਨਰ ਨਾਰਦ ਨੂੰ ਇਹ ਵਿਚੇ ਰਗੜੀ ਜਾਂਦੇ ਨੇ ਇਹ ਨਾਰਦ ਤਾਂ ਹੈ ਨਹੀਂ ਵਿਚੇ ਨਾਰਦ ਉਹਨੂੰ ਕਹੀ ਜਾਂਦੇ ਐਵੇਂ ਖਾ ਉਹ ਖਾ ਨਾਰਦ ਹੈਗਾ ਪਰ ਗਿਆਨੀ ਅਲੱਗ ਨਾਰਦ ਤਾਂ ਖੁਰਪੁਰ ਜਿਹੜਾ ਅਸਲੀ ਨਾਰਦ ਹੈ ਉਹ ਤਾਂ ਅਸਲੀ ਬ੍ਰਹਮ ਨਾਰਦ ਵਾਚੇ ਨਾਰਦ ਦੀ ਭਗਤੀ ਹੈ ਗੁਰਮਤ ਨਾਰਦ ਦੀ ਭਗਤੀ ਹੈ ਭਗਤ ਨਾਰਦ ਦੀ ਰੇਦੇ ਨਫਜੀ ਸਨ ਕਨੁਦ ਸਨ ਕਨੁਦ ਸੰਕਲਨ ਸੰਤਖਾਰ ਔਰ ਸੁਨਾਤਨ ਯਾਰ ਇਹ ਕਿ ਲੈ ਨਾ ਬ੍ਰਹਮਾ ਨੇ ਇਹ ਨਾਲੇ ਵੀ ਨਹੀਂ ਜਾਣਾ ਜਾਂ ਇਹ ਨਾਲੇ ਬ੍ਰਹਮਾ ਨਹੀਂ ਜਾਣਾ ਅਸਲ ਚ ਬ੍ਰਹਮਾ ਇਹਨਾਂ ਦਾ ਉਹ ਹੈ ਜਿਹਦੇ ਬ੍ਰह्म ਗਿਆਨ ਤੋਂ ਬਿਨੋ ਬਿਨੋ ਵਾਕੀ ਲਿਖਿਆ ਸਭ ਕੁਝ ਵਿਦਵਾਨ ਸੰਸਾਰੀ ਵਿਦਿਆ ਆਰਵੈਦਿਕ ਸਾਰੀ ਜਾਣਦਾ ਚਾਹੀਦਾ ਤਾਰਿਆਂ ਨਾਲ ਜਾਣਦਾ ਇਹ ਜਾਣਦਾ ਉਹ ਜਾਣਦਾ ਸਾਰੇ ਕਢ ਲੈਂਦਾ ਵੀ ਗ੍ਰੈਂਡ ਕਦਰ ਲੱਗੂ ਇਹ ਕਰੂ ਹੋ ਸਭ ਕੁਝ ਜਾਣਦਾ ਆਤਮਗਿਆਨੀ ਈ ਹੈ ਇਹਨਾਂ ਦਾ ਬ੍ਰਹਮ ਹੈ ਜਿਹੜਾ ਯੂ نو ਅਸੀਂ ਕਹਿੰਨੇ ਆ ਬ੍ਰਹਮ ਗਿਆਨੀ ਕੁੜ ਮੱਤੇ ਜੀਨ ਬ੍ਰਹਮ ਕਹਿੰਦੀ ਹੈ ਉਹ ਆਤਮ ਗਿਆਨੀ ਹੈ ਉਹਨਾਂ ਦਾ ਉਹਨਾਂ ਦੀ ਭਗਤੀ ਨਾਰਦ ਦਾ ਪੁੱਤਰ ਹੈ ਉਹਦੀ ਗੱਲ ਨੂੰ ਕੋਈ ਰੱਦ ਨਹੀਂ ਕਰ ਸਕਦਾ ਜਿਹਦੀ ਕੋਈ ਗੱਲ ਨੂੰ ਕੱਟ ਨਹੀਂ ਸਕਦਾ ਰੱਦ ਨਹੀਂ ਕਰ ਸਕਦਾ ਸੱਚ ਹੈ ਜਿਹਦੇ ਕੋਲ ਉਹਨਾਂ ਅਰਥ ਸੱਚੀ ਮਤਦਾਨ ਉਹਨਾਂ ਅਰਧਿਪਕ ਬੋਤ ਹੈ ਨਾਰਦੀ ਭਗਤੀ ਹੈ ਗੁਰਬਾਣੀ ਨਾਰਦੀ ਭਗਤੀ ਹੈ ਕਬੀਰ ਕਹਿੰਦਾ ਭਗਤ ਨਾਰਦੀ ਦੇ ਦਦੇ ਨ ਉਪਜੀ ਹਿਰਦੇ ਚ ਹਿਰਦੇ ਜੋ ਪੈਦਾ ਹੁੰਦੀ ਹੈ ਭਗਤ ਨਾਰਦੀ ਬਾਹਰੋਂ ਨਹੀਂ ਲਈ ਜਾਂਦੀ ਬਾਹਰੋਂ ਤਾਂ ਸਿਰਫ ਇਹ ਦੱਸਿਆ ਜਾਂਦਾ ਕਿ ਹਿਰਦੇ ਚ ਬਣੂਗੀ ਇਹ ਭਾਰੋ ਤਾਂ ਸਮਝਾਇਆ ਜਾਂਦਾ ਵੀ ਇਹ ਪ੍ਰਾਪਤ ਕਿੱਥੋਂ ਕਰਨੀ ਹੈ ਕਿਵੇਂ ਕਰਨੀ ਹੈ ਖਿਆਲ ਨਾ ਸਾਰਿਆਂ ਦੇ ਅੰਦਰ ਆ ਭਗਤੀ ਦਾ ਦੱਬਿਆ ਹੋਇਆ ਸਾਰਿਆਂ ਦੇ ਥੱਲੇ ਪਾਣੀ ਨੇ ਜ਼ਮੀਨ ਦੇ ਮਿੱਟੀ 'ਚ ਆਪਣੇ ਆਪਣੇ ਵੇੜੇ ਚਾਹੇ ਦਾ ਵੇੜਾ ਛੋ ਵੇੜੇ बिकੋ ਜੈਨ ਲੱਗਦਾ ਛੋਟਾ ਵੱਡਾ ਵੀ ਵੇੜੇ बिकੋ ਖੇਦੇ बिकੋ ਜੈਨ ਮਤ ਵੀ ਕੋਜੇ ਗਿਆਨ ਵੀ ਕੋਜੇ ਸਭ ਕੁਝ ਜੋ ਤੇ ਕੋਜੇ ਸਾਰਿਆਂ 'ਚ ਪਾਈ ਵੱਧ ਘਟ ਕੇ ਸਾਨੂੰ ਕੁਝ ਨਹੀਂ ਦਿੱਤਾ ਹੋਇਆ ਤੁਸੀਂ ਆਪਣੇ ਅੰਦਰ ਬੇੜੇ 'ਚ ਬੋਰ ਕਰ ਲਓ ਫੜੀ ਉੱਥੇ ਵੀ ਹੈਗਾ ਥੱਲੇ। ਕੋਹ ਲਾ ਲਓ ਆਪਣੇ ਲਾ ਲਓ ਬੇੜੇ 'ਚ ਪਰ ਲਾਉਣਾ ਆਪਣੇ 'ਚ ਪਊਗਾ। ਜਿਹੜਾ ਸੁਣਿਆ ਸੁਣਿਆ ਹੋਇਆ ਗਿਆਨ ਹੋਰ ਹੈ। ਸੁਣਿਆ ਹੋਇਆ ਗਿਆਨ ਉੱਦਦਾ ਉਦੋਂ ਜਿਹੜਾ ਪ੍ਰਾਪਤ ਉਦੋਂ ਆਉਂਦਾ। ਸੁਣਿਆ ਹੋਇਆ ਤਾਂ ਗਿਆਨ ਹੈ। ਕੰਨਾਂ ਨੂੰ ਨਾਮ ਜਿਹੜਾ ਹੁੰਦਾ ਸੁਣਿਆ ਹੋਇਆ ਉਹਨੂੰ ਗਿਆਨ ਕਹਿੰਦੇ ਨੇ ਤਤ ਗਿਆਨ ਕੰਨਾਂ ਨੂੰ ਸੁਣਿਆ ਜਾਂਦਾ ਕੰਨਾਂ ਨਾਲ ਸੁਣੀ ਜਾਂਦੀ ਹੈ ਗੁਰਬਾਣੀ ਉਹਨੂੰ ਭੁੱਲਣਾ ਪੈਂਦਾ ਮੰਨ ਕੇ ਫਿਰ ਖੋਦਣਾ ਪੈਂਦਾ ਅੰਦਰ ਆਪਣੇ ਅੰਦਰੋਂ ਹੀ ਪ੍ਰਾਪਤ ਹੁੰਦਾ ਨਾ ਬਾਹਰੋਂ ਨਹੀਂ ਤਾਂ ਪ੍ਰਾਪਤ ਹੋਇਆ ਕਿਵੇਂ ਸੇ ਨਾ ਬਾਹਰੋਂ ਨਾਮ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਨਾਮ ਦੀ ਜਾਣਕਾਰੀ ਬਾਹਰੋਂ ਪ੍ਰਾਪਤ ਹੁੰਦੀ ਹੈ ਗੁਰਬਾਣੀ ਜਾਣਕਾਰੀ ਹੈ ਨਾਮ ਦੀ ਕੁਰਬਾਨੀ ਦੇ ਨਾਮ ਦੀ ਜਾਣਕਾਰੀ ਹੈ ਬਿਨਾ ਨਾਮ ਦੇ ਸੁਣਨ ਵਾਲਾ ਨਾਮ ਹੈ ਉਹ ਇਹ ਇਹ ਤਾਂ ਨਾਮ ਸੁਣਨ ਵਾਲੀ ਹੈ ਸਾਰੀ ਉਹ ਬਾਣੀ ਹੋਈ ਹੈ ਕਿਸੇ ਬੰਦੇ ਦੀ ਜਿਹਦੇ ਅੰਦਰੋਂ ਨਾਮ ਲੈ ਲਿਆ ਉਹਨੇ ਦੱਸਿਆ ਵੀ ਐ ਬਣਦਾ ਹੁੰਦਾ ਹੈ ਐਹ ਹੁੰਦਾ ਹੈ ਹੋਰ ਪਾਵਹੀ ਨਾਮ ਸੇਵ ਪਾਵਹੀ ਨਾਮ ਸੇਵ ਹਸੇਵ ਆ ਵੀ ਨਾ ਹਿਸਾਬ ਨਹੀਂ ਪਾਸ ਲਾ ਸਕਦਾ ਉਹਦਾ ਹਿਸਾਬ ਹਿਸਾਬ ਲਾਉਣਾ ਜੋਤਿਸ਼ਾਲੇ ਜੋਤਿਸ਼ ਕੀ ਹਿਸਾਬੇ ਉਹਦਾ ਕੋਈ ਹਿਸਾਬ ਨਹੀਂ ਲਾ ਸਕਦਾ ਜੱਛ ਕਿਨਰ ਮਛਮਾਨਸ ਮੁਰਗ ਉਰਗ ਅਪਾਰ ਜੱਛ ਕਿਨਰ ਮਛਮਾਨਸ ਮਛ ਬਲਸ ਬਲਸ ਆਦਮੀ ਮਛ ਮੁਰਗ ਅਪਾਰ ਮੁਰਗ ਇਹ ਅਪਾਰ ਪੈਦਾ ਹੋਏ ਹੋਏ ਨੇ ਅਪਾਰ ਨੇ ਇਹ ਜੱਛ ਵਗੈਰਾ ਨੇ ਇਹ ਆਦਮੀ ਹੋਏ ਸਾਰੇ ਹੀ ਅਸਰ ਚੇ ਹੈ ਮਛ ਵੀ ਆਦਮੀ ਹੋਈ ਹੈ ਇਹ ਸਾਰੇ అవਤਾਰ ਆਦਮੀ ਦੇ ਰੂਪ ਚ ਹੋਏ ਨੇ ਜਾਨਵਰਾਂ ਦੇ ਰੂਪ ਚ ਨਹੀਂ ਹੋਏ ਹੋਏ అవਤਾਰ ਇਹ ਜਿਵੇਂ ਜਿਹੜਾ ਪਾਣੀ ਚ ਰਹਿਣ ਵਾਲਾ ਤੁਮ ਇਕਬੀਰ ਕਹਿੰਦਾ ਜਲ ਕੀ ਤਰਬਰ ਵੀ ਇਹ ਕੋਲ ਮੱਛੀ ਕਰਾਉਂਗਾ ਮੱਛੇ ਦਾ ਜਿਹਨਾਂ ਨਾਮ ਦੇ ਵਿੱਚ ਰਹੇ ਰਹਿਣ ਕਰਕੇ ਮੱਛੇ ਜਿਉਂ ਜਲ ਛਾੜ ਬਾਹਰ ਪੇ ਉਬੀਡੋ ਵੀਡੋ ਮੱਛ ਨੂੰ ਕਹਿੰਦੇ ਜਿਵੇਂ ਕਹਿੰਦੇ ਮੱਛੀ ਜਲ ਨੂੰ ਛੱਡ ਕੇ ਬਾਹਰ ਚਲੇ ਆ ਤਾਂ ਮਰ ਉਹ ਪਰ ਮਰੂਣਾ ਬਾਹਰ ਤੜਫੂ ਇਸ ਕਰਕੇ ਮੱਛੇ ਅਵਤਾਰ ਹੈ ਜਾਂ ਅਵਤਾਰ ਹੈ ਫਿਰ ਮੱਛੇ ਹੈ ਫੇਰ ਹੀ ਬਾੜੀ ਦੇ ਬਾਹਰ ਜਾਂਦਾ ਪਾਣੀ ਦੇ ਜਨਨ ਜਰ ਬਾਹਰ ਵਰਦਾ ਜਾਂਦਾ ਰਹਿੰਦਾ ਇਹ ਕੋਲਵਾਚ ਕਰਾਉ ਹੈ ਇਹ ਮੇ ਕਾਛ ਹੈ ਕਹਿੰਦਾ ਜਦ ਉਸ ਰੁੜ ਗਿਆ ਸੂਦਰ ਸੋਣਾ ਸੀਗਾ ਸੁਮੇਰ ਪਰਬਤ ਇਹਦੀ ਖੋਪੜੀ ਤੇ ਖੜਾ ਸੀ ਕਛੂ ਦੀ ਖੋਪੜੀ ਤੇ ਉਹ ਕਛੂ ਦੀ ਖੋਪੜੀ ਜਿਹਦੀ ਖੋਪੜੀ ਤੇ ਸਾਰਾ ਜਿਹਨੇ ਵਿਚਾਰਿਆ ਨਾ ਗੁਰਮਤ ਸਾਰੀ ਉਹਦੀ ਖੋਪੜੀ ਤੇ ਖੜਾ ਰਹੋ ਸੁਮੇਰ ਪਰਬਤ ਉਸਰ ਖੋਪੜੀ ਹੁੰਦੀ ਆ ਉਹਦੀ ਖੋਪੜੀ ਦੇ ਬਾਹਰ ਆਇਆ ਸਾਰਾ ਵਿਚਾਰਨ ਦਾ ਇਹਨੂੰ ਵਿਚਾਰਿਆ ਕੱਚੂ ਫਿਰ ਕੱਲ ਖੜਾ ਸੀ ਇਹਨਾਂ ਤੇ ਉਹ ਬੰਧਾ ਨੀਦ ਮੱਲੇ ਬੰਦੇ ਕੱਥੇ ਖੜੇ ਸੀ ਸਵੇਰ ਪਰਬਤਾਂ 'ਤੇ ਸੁੁੱਧਾ ਲਟਕਦੇ ਸੀ ਬੰਦੇ ਕੱਥੇ ਖੜੇ ਸੀ ਉਹ ਤਾਂ ਗੱਲ ਵੱਢਦੀ ਹੋਈ ਰਹੀ ਜੀ ਕਹਿੰਦੇ ਪਹਿਲਾਂ ਤਾਂ ਖੀਰ ਸਾਗਰੇ ਨਹੀਂ ਹੈ ਸਰਦਾਰ ਦੇ ਉੱਤੇ ਖੀਰ ਹੁੰਦਾ ਦੁੱਧ ਦਾ ਸਾਗਰ ਦੁੱਧ ਬੁਲਾਉਣਾ ਛੱਪੜ ਦਾ ਪਾਣੀ ਦਾ ਬੁਲਾਉਣਾ ਨਹੀਂ ਆਸ ਬਦਲ ਦਾ ਬੁਲਾਉਣਾ ਨਹੀਂ ਸੀ ਦੁੱਧ ਦਾ ਸਮੁੰਦਰ ਕਿਤੇ ਹੈ ਉਹ ਨਹੀਂ ਗੁਰਮਤ ਬੁਲਾਉਣੀ ਸੀ ਆਹੀ ਦੁੱਧ ਇਹ ਖੋਪੜੀ ਫਿਰ ਕੱਛੂ ਦੀ ਖੋਪੜੀ ਨਹੀਂ ਇਹ ਸਿਰ ਦੀ ਖੋਪੜੀ ਹੈ ਖੋਪੜੀ ਪੁੱਠੇ ਕੱ ਲਈਏ ਨਾ ਉਹਦੇ ਵਿੱਚ ਪੈਂਦਾ ਕੁਝ ਨਾ ਉਸ ਗੱਲਾਂ ਹੋਰ ਨੇ ਕਛੂ ਦੀ ਵੀ ਆਪਾਂ ਖੋਪਰੀ ਕਹਿੰਦੇ ਬੰਦੇ ਦੀ ਵੀ ਖੋਪਰੀ ਜਿਹਾ ਸੱਤੇ ਖੋਪਰੀ ਨਹੀਂ ਹੈ ਇਹ ਜਿਹਾਂ ਗੱਲਾਂ ਨੇ ਬੁਝਾਰਤਾ ਉਸ ਵੇਲੇ ਕਹਤੀ ਉਹ ਹੁਣ ਆਇਆ ਲੱਗਦਾ ਉਹ ਗੱਲਾਂ ਪੱਕੀਆਂ ਹੋ ਗਈ ਉਹ ਬੋਲੀ ਗਏ ਬੋਲੀ ਗਏ ਉਹੀ ਪੱਕੀਆਂ ਹੋ ਗਈਆਂ ਸਾਰੀਆਂ ਗੱਲਾਂ ਕਹੀਆਂ ਆਆਂ ਜੋ ਚਲ ਛਾੜ ਬਾਹਰ ਪਿਓ ਮੀਨ ਪਿਛਲੇ ਜਨਮ ਹੋ ਤਪ ਕਾ ਹੀ ਨਾ ਪਿਛੇ ਤਾਂ ਮੇਰੇ ਤਪ ਕੀਤਾ ਨਹੀਂ ਸੀ ਤਪ ਨਾ ਸੀ ਹੁਣ ਕੋ ਹੁਣ ਤਾਂ ਮੈਂ ਤਪ ਕਰ ਲਿਆ ਹੁਣ ਦੱਸ ਮੇਰੀ ਕੀ ਹਾਲ ਤੂ ਗਾਹ ਨੂੰ ਅੱਗੇ ਨੂੰ ਦੱਸ ਮੇਰਾ ਕੀ ਬਣਾਂਗਾ ਤਜਿਲੇ ਬਨਾਰਸ ਮਤ ਪਈ ਥੋੜੀ ਹੁਣ ਮੈਂ ਬਨਾਰਸ ਛੱਡਦਾ ਜਿੰਨਾ ਚਿਰ ਮਜੀਨੇ ਬਨਾਰਸ ਨਹੀਂ ਛੱਡਿਆ ਉਹਦਾ ਸੰਸਾਰ ਚੋਂ ਖੜਾ ਨਹੀਂ ਛੁੱਟਦਾ ਗੁਰਬਾਤ ਉਹਨੂੰ ਆਉਣੀ ਬਣ ਸਕਦਾ ਤਜਿਲੇ ਬਨਾਰਸ ਪੈਦਾ ਛੜਤੀ ਬਨਾਰਸ ਤਜਤੀ ਬਨਾਰਸ ਬਦਾ ਰਾਸ ਮੇਰੇ ਅੰਦਰ ਰਾਸ ਪੈਦਾ ਹੋ ਗਿਆ ਨਾਮ ਤਾਤੀ ਰਾਸ ਅੰਦਰ ਪੈਦਾ ਹੋ ਗਿਆ ਰਸ ਮਿਲ ਗਿਆ ਨਾਮ ਰਸ ਉਥੋਂ ਮਿਲਿਆ ਜਾ ਕੇ ਮਾਂ ਕਰ ਤੋ ਭਾਈ ਥੋੜੀ ਥੋੜੀ ਅਗਲ ਵੀ ਆ ਗਈ ਪਹਿਲਾ ਬੇਅਕਲ ਸੀ ਜਿਹੜੀ ਅਕਲ ਮਾੜੀ ਮੋਟੀ ਹੁੰਦੀ ਹੈ ਉਹਨੂੰ ਵੀ ਮਾਰ ਦਿੰਦੇ ਨੇ ਤਾਂ ਸੰਤ ਮਾੜਾ ਵਾਲੇ ਪਰਸਵਾਦੀ ਵਾਲੇ ਅਰ ਹੋਰ ਜਿਹਦੀਆਂ ਬਤਾਲੇ ਨੇ ਜੇ ਥੋੜੀ ਬਹੁਤੀ ਅਕਲ ਉਹਨੂੰ ਮਾਰ ਦਿੰਦੇ ਨੇ ਤਾਂ ਉਹਨਾਂ ਦੇ ਬਸ ਚ ਰਹੂਗਾ ਆਦਮੀ ਨਹੀਂ ਉਹ ਤੇ ਬਾਕੀ ਹੋ ਜੂਗਾ ਉਹਨਾਂ ਦੇ ਜਿੰਨਾ ਜਰੋਂ ਦੀ ਅਕਲ ਮਾਰਨਾ ਨੇ ਉਹਨੂੰ ਚੇਲਾ ਨਹੀਂ ਬਣਾ ਸਕਦੇ ਸੀ ਦਿੰਦੇ ਨੇ ਵੀ ਤੂੰ ਕਾਬਲੇ ਨਹੀਂ ਹੈਗਾ ਉਹਨਾਂ ਨੂੰ ਵਧਾਵੇਂ ਸਤ ਉਹ ਕਬੀਰ ਉਹੀ ਗੱਲ ਹੋਈ ਤੋ ਚੇਲਾ ਦਾ ਪਾੜ ਲਿਆ ਫਿਰ ਉਹ ਬੰਦਿਆ ਨਹੀਂ ਉਹਨਾਂ ਨੇ ਕਹੇ ਤਾਂ ਸੱਪ ਕਰ ਲਿਆ ਸੀ ਉਹੀ ਭਗਤ ਬਣ ਗਿਆ ਇਹਨਾਂ ਦੀ ਅਸੀਂ ਤੇ ਫੇਰਤੀ ਫੜ ਕੇ ਉਹ ਤਾਂ ਇਹਨਾਂ ਤੋਂ ਨਿਕਲ ਜਾਂਦਾ ਫਿਰ ਆਦਮੀ ਦੇ ਹੱਥਾਂ ਚ ਜਿਵੇਂ ਨਿਆਣਾ ਆਪਣੇ ਹੱਥਾਂ ਚੋਂ ਨਿਕਲ ਜਾਂਦਾ ਕਹਿੰਦੇ ਨੂੰ ਹੋਵੇ ਸੱਪ ਹੱਥਾਂ ਚੋਂ ਨਿਕਲ ਜੂਗਾ ਇਹਦਾ ਬਣ ਜੂਗਾ ڈاکੂ ਮਨਾਂ ਦੇ ਹੱਥਾਂ ਚੋਂ ਲੈ ਗਿਆ ਕਬੀਰ ਇਹ ਹੱਥਾਂ ਚੋਂ ਨਿਕਲਣ ਵਾਲਾ ਆਦਮੀ ਨੂੰ ਨਹੀਂ ਪਾਲਦੇ ਚੱਲਾ ਇਹ ਇਹ ਤਾਂ ਨਹੀਂ ਆਦਮੀ ਨਿਕਲ ਜਾਣੇ ਨਾ ਜੋ ਗਿਆਨਵਾਨ ਨਾ ਹੋ ਜਾਣ ਇਹ ਗਿਆਨਵਾਨ ਹੋਣਾ ਨਹੀਂ ਦਿੰਦੇ ਗਿਆਨਵਾਨ ਹੋ ਹੋਏ ਅਰ ਇਹਨਾਂ ਦੀ ਦਾੜੀ ਨੂੰ ਹੱਥੋਂ ਨਹੀਂ ਪਾਇਆ ਇਹਨਾਂ ਨੇ ਜੜਾ ਗਿਆਨਤਾ ਨੂੰ ਹੱਥ ਪਾਇਆ ਦਾੜੀ ਨੂੰ ਹੱਥੇ ਆਹੋ ਉਹ ਦਾੜੀ ਬੁੱਧੀ ਹੁੰਦੀ ਹੈ ਗੁਰਬਾਣੀ ਦੇ ਵਿੱਚ ਦਾੜੀ ਬੁੱਧੀ ਨੂੰ ਇਹ ਜੀ ਤੇਰੀ ਬੁੱਧੀ ਦੀ ਬੇਇਤੀ ਕਰਤੀ ਵੀ ਇਹ ਗਲਤ ਕਹਿਣਾ ਤੂੰ ਦਾੜੀ ਨੂੰ ਹੱਥੇ ਹੈ ਜ਼ਿਆਦਾ ਗੱਲ ਕੱਟ ਦੇਣੀ ਹੈ ਨਾ ਮਾਪਾ-ਬਾਪ ਦੀ ਬੇਤੀ ਕਰ ਰਹੇ ਨੇ ਉਦਾਲੀ ਨੂੰ ਅੱਥੇ ਉਦੋਂ ਇਹ ਨਹੀਂ ਗੱਲੀ ਠੀਕ ਹੈ ਆ ਹਲ ਉਹਦੇ ਕਰਤੀ ਹੈ ਇਹਦੇ ਗੁਰੂ ਦੀ ਗੁਰੂ ਕਾਹਦਾ ਰਹੇਗਾ ਉਹ ਇਹ ਨਹੀਂ ਆ ਜਾ ਹੁਣ ਦੁੱਧ ਤੇ ਨਾ ਤਾਂ ਬੜੀ ਸਹੀ ਰੱਖਦੇ ਨੇ ਉਹ ਜਦੋਂ ਤਾਂ ਦਿੰਦੇ ਨੇ ਪਹਿਲਾਂ ਹੀ ਇਹ ਨੇਤ ਨੇਤ ਪੁਕਾਰ ਹੀ ਸ਼ਿਵ ਸ਼ੰਕਰ ਔ ਮੁਖਚਾਰ ਉਹਨੂੰ ਬਿਆਨਤ ਬਿਆਨਤ ਕਹਿੰਦੇ ਨੇ ਸ਼ਿਵ ਵੀ ਸ਼ੰਕਰ ਵੀ ਬ੍ਰਹਮਾ ਵੀ ਮੁਖਚਾਰ ਬ੍ਰਹਮਾ ਨੂੰ ਕਹਿੰਦੇ ਆਹ ਮੁਖਚਾਰ ਆਹ ਮੁਖਚਾਰ ਸ਼ਿਵ ਸ਼ੰਕਰ ਚਾਰ ਪ੍ਰਕਾਰ ਦਾ ਗਿਆਨ ਹੈ ਉਹਦੇ ਕੋਲ ਉਹਨੂੰ ਮੁਖਚਾਰ ਕਰਦੇ ਨੇ ਨੇਤ ਹੀ ਬਿਆਨਤ ਬਿਆਨਤ ਕਹਿੰਦੇ ਨੇ ਤੈਨੂੰ ਹੈ ਸ਼ਿਵ ਸ਼ੰਕਰ ਔ ਮੁਖਚਾਰ ਸ਼ਿਵ ਸ਼ੰਕਰ ਆਉ ਮੁਖ ਚਾਰ ਉਹ ਸ਼ਿਵ ਤਾਂ ਕਹਿੰਦੇ ਨੇ ਸ਼ਿਵ ਦੇ ਨਾਲ ਸ਼ੰਕਰ ਲਾਇਆ ਅਸਲੀ ਸ਼ਿਵ ਨੇ ਕਿਹਾ ਅਸਲੀ ਸ਼ਿਵ ਨਾਲ ਸ਼ੰਕਰ ਨਹੀਂ ਲੱਗਦਾ ਇਹ ਸ਼ੰਕਰ ਹੈ ਸ਼ੰਕਾਵਾਦੀ ਹੈ ਜੋ ਸ਼ਕਾ ਹੈ ਪਰ ਪਰਮਾਤਮਾ ਦੇ ਅੰਦਰ ਸ਼ਿਵ ਦੇ ਅੰਦਰ ਪਰ ਮੈਂ ਬੋਲਾਦਾ ਤੁਹਾਨੂੰ ਫਰਦਾ ਜੋ ਸ਼ਿਵ ਉਹ ਸ਼ਿਵ ਨਹੀਂ ਹੈਗਾ ਇਹ ਜਿਹਨੂੰ ਕਹੇ ਸ਼ਿਵ ਸ਼ਕਤ ਆਪੋ ਪਾਇ ਗਉਰੀ ਹੈਗਾ ਸ਼ਿਵ ਪੀਰ ਖਾਲਸਾ ਪਾਬਨੇ ਬਰੂ ਕਹਿ ਦੰਦੇ ਆ ਐ ਸ਼ੁਕ ਨੇ ਸਰਬ ਸਤਪਤ ਪਤਾਰ ਕੇ ਤਰ ਜਾਪ ਹੀ ਜਹ ਜਾਪ ਸਾਰੇ ਸਤਾਂ ਪਤਾਲਾਂ ਦੇ ਥੱਲੇ ਥੱਲੇ ਧਰ ਥੱਲੇ ਥੱਲੇ ਉਹਦਾ ਜਾਪ ਹੈ ਉੱਪਰ ਨਹੀਂ ਹੈ ਉੱਪਰ ਤਾਂ ਸੱਚਖੰਡ ਹੈ ਸਤਪਤਾਲਾਂ ਦੇ ਥੱਲੇ ਸਤਪਤਾਲ ਸੱਚਖੰਡ ਤੋਂ ਥੱਲੇ ਥੱਲੇ ਨੇ ਸਤ ਭਾਗ ਬਣਾਏ ਨੇ ਉਹਨਾਂ ਨੇ ਸਤ ਪੌੜ ਜਾਂ ਬੰਦੇ ਦੇ ਪਹਿਲਾਂ ਕਹਿੰਦਾ ਹੁੰਦਾ ਤਾ ਜਿਹੜੇ ਸਾਧ ਨੇ ਉਹਨੂੰ ਸਮਝ ਨਹੀਂ ਸੀ ਗੁਰਬਾਨੀ ਦੀ ਉਹ ਸਭ ਤਪਤਾਲ ਸਭ ਤਕ ਆਸੇ ਬੁਲਦੇ ਸੀ ਕਹਿੰਦਾ ਹੁੰਦਾ ਤੇ ਸਤ ਪੌੜ ਜਾਂ ਸੁਰਗਰੂ ਲਾਈਆਂ ਬਾਬੇ ਨਾਨਕ ਨੇ ਉਹ ਇਹ ਬਾਬੇ ਨਾਨਕ ਦਾ ਜਾ ਬੇ ਕਰਦਾ ਉਹ இந்து ਮਤਾ ਹੈ ਜਿਹੜਾ ਕਹਿੰਦਾ ਉਚਾਦਲ ਬਾਬੇ ਨਾਨਕ ਦਾ ਇਹ ਵੀ இந்து ਮਤਾ ਹੈ ਉਹਨੂੰ ਹਲਰਜੀ ਦਾ ਹੈ ਇਹ ਨੂੰ ਨਾਲ ਜਰੂਰ ਪਰ ਸਿਕਮਤ ਦਾ ਇਹ ਨੂੰ ਮਤ ਦਾ ਨਹੀਂ ਗਾਣੇਗਾ ਇਹਨਾਂ ਕਿ ਜੇ ਉਹ ਨਹੀਂ ਹੈ ਹਦੂਮਤ ਕੀ ਹੈ ਸਿਕਮਤ ਕੀ ਹੈ ਹਦੂਮਤ ਨਾਲ ਹਲਰਜੀ ਹੈ ਤੋ ਮਤ ਨਾਲ ਕਈ ਵਾਰ ਸਿਕਮਤ ਨਾਲ ਹਲਰਜੀ ਹੈ ਸਿੱਧੂ ਮਤ ਸਮਝ ਲੈ ਤੈਨੂੰ ਜਿਵੇਂ ਸਮਝ ਲੈ ਚੰਡੀ ਚਰਤਲ ਨੂੰ ਚੰਡੀ ਦੀ ਨੂੰ ਸਮਝ ਲੈਣ ਤਦੋਂ ਕਰਾਂ ਤੁਰ ਜੇ ਇਹਨਾਂ ਨੂੰ ਹਿੰਦੂਵਾਦ ਦਾ ਸਿੱਖਵਾਦ ਦਾ ਗਿਆਨ ਹੁੰਦਾ ਤੈਨੂੰ ਇਹਦੇ ਖਿਲਾਫ ਕੀ ਹੁੰਦੇ ਸਿੱਖਵਾਦ ਦਾ ਹਿੰਦੂਵਾਦ ਦਾ ਮਤਲਬ ਨਹੀਂ ਕਿ ਗਿਆਨ ਹੈਗਾ ਕੀ ਹੁੰਦੀ ਹੈ ਹੋਰ ਤਾਂ ਵੀ ਇਹਦੇ ਦਾੜੀ ਹੈ ਤੇ ਦਾੜੀ ਹੈ ਦੀ ਵਾਹ ਜਿਹੋ ਗੱਲ ਦਾ ਪਤਾ ਹੋਰ ਕੁਝ ਨਹੀਂ ਇਹ ਆਏ ਕਵਰਾਂ ਦੇ ਮੱਥਾ ਡੇਗਦਾ ਡੇਗਦਾ ਦੀ ਹੇ ਯਾਗੁਸ਼ ਪਤਾ ਹੋਣੀ ਪਤਾ ਕੁਝ ਫਲਸਫੇ ਦੀ ਨਹੀਂ ਪਤਾ ਹਰੂ ਸਰਬ ਸਭਤ ਪਤਾਰ ਕੇ ਤਰ ਜਾਪ ਹੀ ਜਹਿ ਜਾਪ ਸਾਰੇ ਜਾਪ ਜਪਦੇ ਤੇ ਹੁੰਦਾ ਸਤਿ ਪਤਾਲਾਂ ਆਕਾਸ਼ਾਂ ਦੇ ਵਿੱਚ ਸਾਰੇ ਸੰਸਾਰ ਚ ਉਹਦਾ ਜਾਪ ਜਪਿਆ ਜਾਂਦਾ ਸੱਜ ਖੰਡ ਇਹ ਨਹੀਂ ਜਪਿਆ ਜਾਂਦਾ ਸੱਜ ਛੱਡ ਕੇ ਆਏ ਆਲੇ ਇਹ ਉਡਕਦਾ ਤਰਖਤ ਵਿਚ ਉਹਨਾਂ ਨੇ ਤਰੇ ਗਏ ਤਰ ਥੱਲੇ ਥੱਲੇ ਉੱਪਰ ਕੀ ਉੱਪਰ ਸੱਜ ਹੈ ਸਾਧਿਕਾ ਨੂੰ ਛੱਡ ਕੇ ਬਾਕੀ ਸਾਰੀ ਜਗ੍ਹਾ ਜਾਪ ਚ ਪਿਆ ਜਾਂਦੇ ਬਾਰਾਜਾ ਨੁਕਤਾ ਰੱਖਿਆ ਹੋਇਆ ਹੈ ਉਹ ਗੁੱਡੀ ਰੱਖੀ ਹੋਈ ਹੈ ਬਲੂ ਨੂੰ ਕੌਣ ਸਮਝੇ ਇਹਨੂੰ ਤਾਂ ਪਤਾ ਹੀ ਲੱਗੇ ਵਿਚਾਰ ਪੰਡਤਾਂ ਨਾਲ ਇਹਨੂੰ ਕੀ ਪਤਾ ਲੱਗਣਾ ਦਾ ਪੰਡਤ ਇਹ ਤਾਂ ਪੰਡਤ ਹੈ ਆਦੀ ਦੇਵ ਅਗਾਧ ਤੇਜ ਅਨਾਦ ਮੂਰਤ ਅਤਾਪ ਆਦਿ ਦੇਵ ਅਗਾਧ ਅਗਾਧ ਤੇਜ ਅਗਾਧ ਤੇਜ ਆਦ ਦੇਵ ਹੈ ਅਗਾਧ ਤੇਜ ਤੇਜ ਕਰਨਾ ਤੇ ਜਿਹੜਾ ਬਸ ਅੱਜ ਤੱਕ ਤੇਜ ਔਰ ਦੱਸ ਵੀ ਨਹੀਂ ਸਕਦੇ ਬੁੱਧੀ ਦੇ ਨਾਲ ਤੇਜ ਦੇਖ ਕੇ ਤਾਂ ਝਾਕੇ ਨਹੀਂ ਹੋਇਆ ਤੇਜ ਵੱਲ ਪਹਨ ਦੱਸਿਆ ਜਾਂ ਨਹੀਂ ਸਕਦਾ ਜਿਹੜੀ चीज ਦੇਖ ਵੀ ਨਹੀਂ ਸਕਦੇ ਉਹ ਦੱਸ ਵੀ ਨਹੀਂ ਸਕਦੇ ਉਹਨੂੰ ਸੂਰਜ ਵੱਲ ਨੂੰ ਝਾਕਦਾ ਹੁੰਦਾ ਨਹੀਂ ਦੱਸਾਂਗੇ ਕੀ ਅਗਾਧ ਤੇਜ ਅਨਾਦ ਮੂਰਤ ਅਤਾਪ ਅਨਾਦ ਮੂਰਤ ਐਸੇ ਮੂਰਤਾਂ ਜਿਹਦਾ ਆਦ ਨਹੀਂ ਹੈ ਅਨਾਦੀ ਦੇਖੋ ਆਦ ਮੂਰਤ ਆਦ ਦੇਵ ਅਨਾਦ ਮੂਰਤ ਹੈ ਆਦ ਦੇਵ ਹੈ ਅਨਾਦ ਮੂਰਤ ਹੈ ਮੂਰਤ ਤਾਂ ਦੇਣ ਤੋਂ ਪਹਿਲਾਂ ਵੀ ਹੋਈ ਸੀ ਜੇ ਦੇਣਾ ਸ਼ੁਰੂ ਕੀਤਾ ਆਦ ਦੇ ਬੜੀਆਂ ਮੂਰਤਾਂ ਪਹਿਲਾਂ ਵੀ ਸੀ बैठा ਦਾ ਬਹੁਤ ਦਰ ਕਈ ਸਾਲ ਦਾ ਸੀ ਉੱਥੇ ਸੰਤ ਪਲੰਗਰ ਤਾਂ ਹੁਣ ਲਾਇਆ ਹੈ ਜਾਂ ਲੰਗਰ ਲਾਤਾ ਦੇ ਬਣ ਗਿਆ ਜਾਂ ਉੱਧਰ ਕਿ ਲਾਤਾ ਵਰਤੌਣ ਲੱਗਾ ਜਦ ਦੇ ਦੇ ਬਣਿਆ ਜਨਾ ਚ ਬੈਠਾ ਸੀ ਦੇਵਤਾ ਹੈ ਨਹੀਂ ਸੀ ਉਹਨਾਂ ਚ ਸ੍ਰਿਸ਼ਟੀ ਦੀ ਰਜਨਾਵੀ ਸੀ ਦੇਵ ਹੈ ਨਹੀਂ ਸੀ ਉਹਨਾਂ ਚ ਪਰ ਮੂਰਤ ਸੀ ਆਪ ਸੀਗਾ ਉਹ ਸੰਸਾਰ ਹੈ ਨਹੀਂ ਸੀ ਆਪ ਸੀਗਾ ਉਹ ਜਿਹੜਾ ਆਪ ਸੀਗਾ ਵਾਲੀ ਮੂਰਤਾ ਉਹ ਅਨਾਦ ਦੇ ਅਨਾਦ ਮੂਰਤਾ ਦੇਵ ਆਦ ਜਦ ਬਣਾਇਆ ਜੋ ਸ੍ਰਿ ਸ੍ਰੀ ਪੈਦਾ ਕਰ ਲਈ ਜੇ ਦੇਣ ਲੱਗਿਆ ਚੀਜ਼ਾਂ ਅਤਾਪ ਅਤਾਪ ਤਾਪ ਤੋਂ ਰਹਤੇ ਚਿੰਤਾ ਬੁਖਤ ਕਿਸੇ ਕਸਬ ਦੀ ਹੈ ਰਹਿ ਜਾ ਤਮਸ ਤਿੰਨੇ ਤਾਪ ਨੂੰ ਜੰਤਰ ਮੰਤਰ ਨਾ ਆ ਮੰਤਰ ਨਾ ਜੰਤਰ ਮੰਤਰ ਜੰਤਰ ਮੰਤਰ ਦੇ ਵਿੱਚ ਵਸ ਨਹੀਂ ਆ ਸਕਦਾ ਜੰਤਰ ਮੰਤਰ ਜਿ ਵਸ ਚ ਕਰਦੇ ਨੇ ਉਹ ਜੰਤਰ ਮੰਤਰ ਦੇ ਵਾਸਤਾ ਕੁਸ ਨਹੀਂ ਹੁੰਦਾ ਇਹ ਤਾਂ ਐਵੇਂ ਭੁਲੇਖੇ ਕੁਝ ਵੀ ਨਹੀਂ ਹੁੰਦਾ ਵਸ ਚ ਪਰਮ ਦੇ ਜਾਲ ਤਫਸਦੇ ਨੇ ਲੋਕ ਜੰਤਰ ਮੰਤਰ ਪਰਮ ਦੇ ਜਾਲ ਨੂੰ ਹੀ ਕਹਿੰਦੇ ਨੇ ਜੰਤਰ ਮੰਤਰ ਕੋਈ ਸ਼ਕਤੀ ਨਹੀਂ ਹੈ ਪਰਮ ਪਰਮ ਜਾਲ ਪਰਮ ਦਾ ਜਾਲ ਬਣਿਆ ਹੋਇਆ ਉਹਦੇ ਵਿੱਚ ਵਸ ਲੈਂਦੇ ਨੇ ਜੰਤਰ ਮੰਤਰ ਨਾ ਉਹ ਵੀ ਕਰ ਤੰਤਰ ਮੰਤਰ ਨਾ ਕੀਨ ਆਣਾ ਤੰਤਰ ਮੰਤਰ ਕੀਤਾ ਜਾ ਸਕਦਾ ਹੋਵੇ ਤੇ ਕੋਈ ਆਤਮਾ ਤੇ ਕੋਈ ਤੰਤਰ ਮੰਤਰ ਜੰਤਰ ਚੱਲਦਾ ਹੀ ਕਿਸੇ ਦਾ ਵੀ ਜਿਹੜਾ ਭਲੇਖਾ ਪਾਇਆ ਹੋਇਆ ਇਹ ਭਲੇਖਾ ਕਟਿਆ ਉਹਰੇ ਤਾਂ ਹੀ ਨਿਹੰਸੋ ਦੱਸਦੇ ਰਹਿਣ ਤੇ ਵੀ ਉਹ ਸੀਧਾ ਦੀ ੱਟਾ ਬਟਲਿਆਉਂਦੇ ਜਿਹੜਾ ਜ਼ਿਆਦਾ ਹੋਵੇ ਨਾ ਕਹਿਣਾ ਉਹਦੇ ਐਡਾ ਵੱਟ ਕੇ ਫਰਸ ਲਾ ਲੈਂਦੇ ਨੇ ਕਹਿੰਦੇ ਸਾਨੂੰ ਜਿਉਂਦਾ ਜਿਹੜਾ ਆਦਮੀ ਜਿਉਂਦਾ ਨਹੀਂ ਕੁਛ ਕਰ ਸਕਦਾ ਮਰਿਆਏ ਕੀ ਕਰ ਲੂ ਉਹ ਇਹ ਮੰਦਾ ਟਾਰਿਆ ਹੋਰ ਕੁਛ ਨਹੀਂ ਉਹ ਜਿਉਂਦਾ ਦਾ ਕੁਛ ਕਰ ਨਹੀਂ ਸਕਦਾ ਉਹ ਮਰਿਆ ਕੀ ਕਰ ਲੂਗਾ ਉਹ ਨਾਲੇ ਮਰਿਆ ਹੋਇਆ ਕਿਤੇ ਉੱਥੇ ਹੁੰਦਾ ਉਹਦਾ ਜੰਦੇ ਹੀ ਲੈ ਕੇ ਕਿਸੇ ਜੂਨ ਚ ਪਾ ਦਿੱਤਾ ਜਾਂਦਾ ਉਹ ਬੁਲਜਬੇ ਝੇਲ ਤੋਂ ਬਾਹਰ ਨਿਕਲਿਆ ਦੇਉਣਾ ਚਿਰ ਜੇ ਝੇਲ ਤੋਂ ਬਾਹਰ ਵੀ ਬੁਲਜਬ ਲਿਆਇਆ ਜਾਂਦਾ ਨਾ ਪੇਛੇ ਤੇ ਤਾਂ ਵੀ ਹਤਕੜੀ ਲੱਗਦੀ ਐ ਜੇ ਭੱਜ ਜਿਵੇਂ ਬਰੋਸਿਓ ਫੜਾਈ ਦੱਦਾ ਉਹ ਇਹਨੂੰ ਨੀ ਕੋਈ ਛੱਡਦਾ ਜਿੰਨਾ ਚਿਰ ਮੁਕਤੀ ਨਹੀਂ ਹੁੰਦੀ ਇਹ ਬੋਲ ਜਮ ਹ ਕੋਈ ਛੱਡਦਾ ਨਹੀਂ ਇਹਨੂੰ ਜਿੰਨਾ ਚਿਰ ਮੁਕਤੀ ਨਹੀਂ ਹੁੰਦੀ ਕੋਈ ਆਜ਼ਾਦ ਨਹੀਂ ਹੈ ਇੱਥੇ ਐਵੇਂ ਭਲੇਖਾ ਕੱਢਿਆ ਜਾਂਦਾ ਹੈ ਕੀ ਕਹਿੰਦੀ ਐ ਵੱਡਾ ਹੋਇਆ ਦੁਰੀਦਾਰ ਗੱਲ ਸੰਭਲ ਘੱਟ ਚਲਾਇਆ ਫਿਰ ਉਹਦਾ ਸੁਗੜ ਪਾ ਕੇ ਚਲਾਇਆ ਹੋਇਆ ਤੁਸੀਂ ਕਹਿੰਦੇ ਭੂਤ ਅੱਥੇ ਆਜੂਗਾ ਆ ਕੇ ਮੈਂ ਜਾਊ ਉਹ ਤਾਂ ਸੰਗੜ ਪਾਇਆ ਨਾ ਤੇ ਜੰਤਰਾ ਗੁਰਬਾਣੀ ਨਾਲ ਕਲੀਅਰ ਕੀਤਾ ਬਾਹਰ ਕੱਢਣਗੇ ਜਿਹੜੇ ਤੋਂ ਥੱਗੜ ਲਾਇਏ ਨੇ ਜਿਹੜੇ ਜਪਾਹਾ ਕੋ ਰੌਲਾ ਹੀ ਨਹੀਂ ਆ ਸਰੀਰ ਤੇ ਕੋ ਰੌਲਾ ਨਹੀਂ ਸਰੀਰ ਦੇ ਨਾਲੇ ਹੱਡਣੀ ਲੱਗੂਗੀ ਜਾਊਗਾ ਜੇ ਸਰੀਰ ਤੇ ਯਾਦ ਕਰਦਾ ਫਿਰ ਯਾਦ ਨਹੀਂ ਹੈ ਇਹ ਆਤਮਾ ਨਹੀਂ ਆਜ਼ਾਦ ਹੈਗੀ ਪਹਿਲਾਂ ਇਹਦੇ ਵਿੱਚ ਕੋਠੜੀ ਜਾਂ ਕੋਠੜੀ ਚੋਂ ਕੱਢਦੀ ਸਾਰੇ ਹਸਕੜੀ ਲਾਉਂਦੇ ਜੀ ਉਹ ਜੇੜ ਚੋਂ ਬਾਹਰ ਬਾਜ ਕੱਢਦੇ ਨਾ ਪਹਿਲਾਂ ਕਹਿੰਦੇ ਨੇ ਬਾਹਰ ਬਾਹਰ ਕੱਢ ਸਿੱਖਾ ਥਈ ਹਸਕੜੀ ਲਾ ਲੈਂਦੇ ਪਹਿਲਾਂ ਤਾਂ ਬਾਹਰ ਘੜਦੇ ਰਿੜ ਬਾਹਰ ਕੰਨ ਕਰਦੇ ਕੋਈ ਤਾਂ ਇਹ ਲੋਕਾਂ ਨੂੰ ਗਿਆਨ ਨਹੀਂ ਹੈ ਉਹ ਡਰ ਜਾਂਦੇ ਨੇ ਆਪਣੇ ਪੈਰਾਂ ਵਾਲੇ ਹਾਰਟ ਅਟੈਕ ਹੋ ਜਾਂਦੇ ਹੋਰ ਕੁਝ ਨਹੀਂ ਭਾਈ ਇਹ ਹੋਰ ਕੁਝ ਨਹੀਂ ਹੋਏਗਾ ਅਸੀਂ ਕਹਦੇ ਡਰਦੇ بڑے بڑے ਸੰਤ ਰਹੇ ਅਸੀਂ ਸੱਬਰ ਲਾਲਾ ਕੁੱਟੇ ਨੇ ਪਤਾ ਵੀ ਕੁਝ ਹੁੰਦਾ ਨਹੀਂ ਵਿੱਚ ਅਸੀਂ ਕੱਲ ਨੂੰ ਕਹਿ ਦੇਵੀਏ ਅਸੀਂ ਸੰਤਾਂ ਸਾਡੇ ਜੀ ਕੀ ਕੁਝ ਵੀ ਨਹੀਂ ਹੈ ਨਾਨਕ ਤਾਂ ਹੀ ਕਹਿੰਦਾ ਕਿ ਕੁਝ ਨਹੀਂ ਹੁੰਦਾ ਉਹਨੇ ਆਪਣੀ ਸੱਚੀ ਗੱਲ ਦੱਸਤੀ ਇਹ ਸੱਚ ਬੋਲਦੇ ਨਹੀਂ ਦਫਾ ਉਹ ਪਰਪੰਚ ਚੱਲਦਾ ਨਹੀਂ ਝੂਠ ਵਿੱਚ ਉਹ ਪਰਪੰਚ ਜੇ ਸੱਚ ਬੋਲੀਏ ਪਰਪੰਚ ਨਹੀਂ ਚੱਲਦਾ ਇੱਕ ਕਹਿਣਾ ਹੈ ਸਾਡੀ ਕੋਈ ਤਾਕਤ ਨਹੀਂ ਪਰਪੰਚ ਕਿੱਥੇ ਚੱਲਦਾ ਉਹ ਤਾਂ ਕਹਿਣਾ ਹੀ ਪੈਂਦਾ ਹੈ ਤਾਕਤ ਦਾ ਮੇਰੇ ਚੋ ਆ ਉਹ ਪਰਪੰਚ ਜੇ ਚਲਾਉਣਾ ਹੋਵੇ ਤਾਂ ਸੱਚ ਬੋਲੀਏ ਪਰਪੰਚ ਚੱਲਦਾ ਨਹੀਂ ਇਹ ਝੂਠੇ ਦੇ ਪਰਪੰਚ ਨੇ ਝੂਠ ਬੋਲਣਾ ਹੀ ਪੈਂਦਾ ਰੁਕੀ ਕਰਨ ਵਿਚਾਰੇ ਰੋਟੀ ਨਹੀਂ ਖਾਣੀ ਫਿਰ ਪਾਪੀ ਬਾਤ ਸਭ ਕੁਝ ਕਰਨਾ ਪੈਂਦਾ ਰਨ ਫਿਰ ਇਹੀ ਰਹਿ ਜਾਂਦਾ ਹੈ ਰਹਿ ਜਾਂਦਾ ਹੈ ਕੀ ਹੈ ਕਹਾ ਨਰਕ ਅੱਗੇ ਨਰਕ ਇਹਾ ਭੋਗ ਵਿਲਾਸ ਜਿਹੜੇ ਇੱਥੇ ਭੋਗਵਲਾਸ ਚ ਪਏ ਨੇ ਨਾ ਅੱਗੇ ਉਹਨਾਂ ਵਾਸਤੇ ਨਰਕ ਹੈ ਇੱਥੇ ਭੋਗਵਲਾਸ ਨੇ ਨਾ ਅੱਗੇ ਨਰਕ ਹੈ ਇਹ ਦੇਖ ਵੀ ਡੇ ਕਰੋ ਇਹਦੇ ਵਿੱਚ ਇਹਨੂੰ ਨਹੀਂ ਕੋਈ ਰੋਕ ਸਕਦਾ ਇੱਥੇ ਭੋਗਵਲਾਸ ਅੱਗੇ ਨਰਕ ਹੈ ਚਾਹੇ ਕੁਝ ਕਹਨੇ ਹੋਰ ਤੁਹਾਨੂੰ ਸਭ ਦਰਦ ਦੀਆਂ ਕਾਰਾਂ ਆਏ ਵੋ ਅੱਗੇ ਨਰਕ ਹੈ ਚਾਹੇ ਤੇਰੀ ਆਪਣੀ ਇਹ ਵਿੱਚੋਂ ਨਾ ਚਾਹੇ ਸੰਦਲਦੀ ਗੱਲ ਤਾਂ ਰੂਚੀ ਤਾਂ ਉਹੋਗ ਬਲਾ ਚਾਹੇ ਨਾਮ ਜਰੂਚੀ ਤਾਂ ਹੈ ਨਹੀਂ ਗੱਲ ਤਾਂ ਰੂਚੀ ਦੀ ਉਹਦੀ ਚਾਹੇ ਪੈਸੇ ਉਹਦੇ ਆਪਣੇ ਨੇ ਚਾਹੇ ਸਬਦ ਤੇ ਅਰੇ ਆਪਣੇ ਪੈਸੇ ਨਾਲ ਕਾਰਨ ਤੁਰੇ ਫਿਰਦੇ ਨੇ ਉਹ ਵੀ ਰੂਚੀ ਆਉਂਦੀ ਨਾ ਤੇਰੇ ਨਾਲ ਫਰਕ ਪੈਣਦਾ ਜੇ ਉਹ ਬਾਣਾ ਬਾਣ ਫਿਰ ਰੂਚੀ ਲਿਆਣਗੇ ਕਾਰਾਂ ਈਸ਼ਵਰੀ ਜੇ ਤਹਾਨੂੰ ਪੈਸਾ ਹੈਗਾ ਨਾ ਸਾਰਾ ਆਪਣਾ ਰਾਜਿਆਂ ਕੋਲ ਆਪਣਾ ਦੀ ਹੁੱਧ ਜੇ ਕਿਸੇ ਤੋਂ ਪੈਸਾ ਨਾ ਵੀ ਲੈਣ ਕਾਂ ਵੀ ਨਰਕਈ ਹੈ ਕੋ ਕੋ ਦੇ ਕੀ ਭੋਗ ਲਾ ਸਰ ਰੂਚੀ ਨਹੀਂ ਗੱਲਾ ਰੂਚੀ ਕੀ ਹੈ ਰੂਚੀ ਨਾਮ ਦੀ ਨਹੀਂ ਹੈ ਭੋਖ ਨਾਮ ਦੀ ਨਹੀਂ ਹੈ ਭੋਖ ਹੈ ਭੋਗ ਲਾਦੀ ਭੋਗ ਰਾਦੀ ਭੋਖਰੇ ਅੱਗੇ ਨਰਕ ਹੈ ਚਾਹੇ ਪੈਸਾ ਨਹੀਂ ਰੋੜਾ ਹੈ ਵੀ ਲੋਕਾਂ ਤੋਂ ਲੈਣਾ ਨਹੀਂ ਲੈਂਦਾ ਕਿਦੋਂ ਆਵੇ ਪੈਸਾ ਇਹਦਾ ਨਹੀਂ ਕੋ ਰੋੜਾ ਇਸ ਗੱਲ ਦਾ ਜਾਏ ਉਹਦੀ ਆਪਣੀ ਜਾਇਦਾਦ ਨਹੀਂ ਹੋਵੇ ਆਪਣੇ ਪੈਸਾ ਨਾ ਹੋਵੇ ਸਵਾਲ ਤਾਂ ਕਿਉਂ ਭੋਗ ਬੁਲਾਦੇ ਵਿੱਚ ਰੁਚੀ ਆ ਇਹ ਆ ਨਾਮ ਚ ਰੁਚੀ ਉਹਦੀ ਅੱਗੇ ਵਾਸਤੇ ਕੁਝ ਕਰ ਰਿਹਾ ਹੈ ਇੱਥੇ ਵਾਸਤੇ ਕੁਝ ਕਰ ਰਿਹਾ ਜੇ ਤਾਂ ਕਰ ਫਰਮਾਇਸ਼ ਖਾਇਆ ਬੇਗਮ ਹਦ ਮੰਨ ਲ ਬਸਾਰਿਆ ਵਿਚਾਰਾ ਇਹ ਜੋਬ ਨਹਰੇ ਮੈਨ ਨੇ ਸਭ ਕੁਝ ਹੈ ਸਰਬ ਠੌਰ ਰਹੋ ਵਿਰਾਜ ਧਰਾਜ ਰਾਜ ਪਰਬੀਨ ਅਧਿ ਰਾਜ ਆ ਚਾਹੇ ਬਹੁਤ بڑا ਰਾਜਾ ਹੈ ਅਧਿ ਰਾਜ ਨੂੰ ਧਰਾਜ ਕਹਿੰਦੇ ਆਣਾ ਤਾਂ ਤੈਨੂੰ ਸਿਆਰੀ ਅਧਿ ਰਾਜ ਯਾਨੀ ਰਾਜਾ ਦਾ ਰਾਜਾ ਅਧਿ ਰਾਜ ਨੂੰ ਕਹਿੰਦੇ ਨੇ ਬਹੁਤ ਵੱਡਾ ਰਾਜਾ ਅਧਿ ਰਾਜ ਅਧਿ ਰਾਜ ਤਾਂ ਤੈਨੂੰ ਸਿਆਰੀ ਸੀ ਹੁਣੇ ਮੇਰੇ ਉਹ ਇੱਦੀ ਰਹੀ ਅਕਾਲੇ ਤੱਕ ਜਬੀ ਉਹ ਕ ਮਤ ਕਰ ਲੂਏ ਤੇ ਚਕਰਵਰਤੀ ਰਾਜਾ अधिराज لفظ ਹੈ। अधिराज ਹੁੰਦਾ ਹੈ ਮਹਾਰਾਜ ਜਿਹਨੂੰ ਫਕੀਰ ਚਕਰਮੰਤੇ। अधिराज ਮਹਾਰਾਜਾ। ਹ ਸਰਵ ठाोर ਰਹੋ ਬਿਰਾਜ। ਸਰਵ ठाोर ਰਹੋ ਬਿਰਾਜ। ਸਾਰੇ ਪਾਸੇ ਬਿਰਾਜ ਰਹੇ ਸਾਰੇ ਹਰਦਿਆਂ ਦੇ ਵਿੱਚ ਏਡੀਆਂ ਵੀ ਇਧਰ ਦੱਖਣ ਜਾਏ ਉੱਤਰ ਜਾਏ। ਉਹ ਜਿਵੇਂ ਉੱਥੇ ਲਿਖਿਆ ਨਾ ਦੱਖਣ ਦੇਸਰੀ ਕਬਸ। ਉਹ ਸਾਰੇ ਪਾਸੇ ਹੀ ਹੈ। ਉਹੀ ਗੱਲ ਕਹਿੰਦੇ ਨੇ ਨਾ ਗੁਰੂ ਨਾਨਕ ਦੇਵ ਜੀ ਤਾਂ ਟੋਡਾ ਅੱਲਾ ਨਹੀਂ ਆ ਉਦੋਂ ਮੇਰੇ ਪੈਰ ਕਰਦੇ ਉਹ ਕਾਨੂੰ ਕਹਿੰਦੇ ਤੇ ਗੱਲ ਇਹ ਗੱਲ ਹੋਈ ਵੀ ਨਹੀਂ ਹੈ ਨਾ ਉਹ ਬੰਦੇ ਤੇ ਵੀ ਪੱਕੇ ਜਾਏਗਾ ਉਹ ਤਾਂ ਬੰਦੇ ਹੀ ਨਹੀਂ ਇਸ ਗੱਲ ਨੂੰ ਪੱਕੇਆਂ ਦਾ ਬੂਰਤੀਆਂ ਤੋੜੀਆਂ ਹੋਈਆਂ ਨੇ ਕੁਰਾਨ ਪੜ੍ਹਿਓ ਪਤਾ ਲੱਗਦਾ ਸਾਰੇ ਪਾਸੇ ਉਹ ਸਰਵ ਹੈ ਉਹ ਇਹ ਨਹੀਂ ਸੀ ਬੰਦੇ ਇਹ ਤਾਂ ਸਾਡੀਆਂ ਕਹਾਣੀਆਂ ਜੋੜੀਆਂ ਹੋਈਆਂ ਨੇ ਮੇਉਦੂ ਪੈਰ ਕਰ ਲਿਆ ਕਹਿੰਦੇ ਨੇ ਮੱਕਾ ਖੁੱਭ ਗਿਆ ਐਵੇਂ ਜੋੜੀਆਂ ਹਈਆਂ ਕਹਾਣੀ ਜੜੀ ਦੰਤ ਕਾ ਥਮ ਕਾ ਜੋੜੀਆਂ ਨੇ ਕਲ ਪ੍ਰਚਾਰ ਨਗੇ ਜਦ ਆਪਣੇ ਪੰਜਾਬ ਚ ਸਿੱਖਾਂ ਦਾ ਰਾਜ ਹੋ ਗਿਆ ਨਾ ਜਿਹੜੇ ਸਾਥ ਸੀ ਜਿਹੜੇ ਮੁਸਲਮਾਨ ਪਹਿਲਾਂ ਕੁੱਟ ਕੇ ਰੱਖੇ ਤੇ ਡਰਾ ਕੇ ਰੱਖੇ ਤੇ ਉਹਨਾਂ ਨੂੰ ਮਿਲ ਗਿਆ ਗੁਰਦੁਆਰੇ ਪਹਿਲਾਂ ਤਾਂ ਬੋਲਦੇ ਨਹੀਂ ਸੀ ਡਰਦੇ ਸੀ ਫਿਰ ਇਹ ਉਹ ਜਿਹੜੀ ਅੰਦਰ ਜੈਲਸੀ ਸੀ ਨਾ ਜੈਲਸੀ ਉਹਦੇ ਅੰਦਰ ਮੁਸਲਮਾਨ ਲੋਕ ਅੰਦਰ ਉਹ ਜੈਲਸੀ ਤੋਂ ਨਿਕਲੀਆਂ ਗਆਂਢੀਆਂ ਨੇ ਬੱਕਾ ਕਮਾਤਾ ਛੇਵੇਂ ਪਾਸ਼ਾ ਕੋਲਰੂ ਲੈ ਆਏ ਉਹ ਜਵਾਈ ਬਣ ਗਏ ਇਹ ਸਭ ਜੈਲਸੀ ਵਾਲੀਆਂ ਗਆਂਢੀਆਂ ਨੇ ਜਿਵੇਂ ਕੋਈ ਅ ਬਦਲੇ ਦੀ ਭਾਵਨਾ ਨਾਲ ਕਹੀ ਹੋਈ ਗੱਲਾਂ ਨੇ ਉਹ ਸੱਚ ਮੰਨ ਲੀਆਂ ਉਦੋਂ ਉਹਨਾਂ ਦਾ ਸੱਪਾ ਪਿਆ ਹੋਇਆ ਜਿਹੜੀਆਂ ਗੱਲਾਂ ਉਦੋਂ ਕਹਿਤੀਆਂ ਉਹਨਾਂ ਨੇ ਨਾ ਜਾਣ ਕੇ ਤਨ ਚੋਬੇ ਮਾਰ ਕੇ ਉਹ ਅਸੀਂ ਸੱਚ ਮੰਨ ਲਿਆ ਸਗਦੇ ਨਾ ਦੌਰ ਪਰ ਸਭ ਅੱਜ ਉਹਨਾਂ ਦਾ ਸੱਪਾ ਪਿਆ ਗਿਆ ਗੁਰੂ ਨਾਨਕ ਦੇਵ ਜੀ ਨਾਲ ਲਿਖੀ ਕਿਸੇ ਨੇ ਬਕਾਖ ਮੋੜ ਲਈ ਪ੍ਰਚਾਰੀ ਜਾਂ ਉਹ ਮੁਸਲਮਾਨ ਦਾ ਰਾਹ ਸੀ ਜਾਂ ਪ੍ਰਚਾਰ ਕਰਕੇ ਦਿਖਾ ਮਗਾ ਕਮਨ ਨਾਲ ਜੇ ਸਾਖੀ ਹੁੰਦੀ ਤਾਂ ਸਭ ਪਾਸ਼ਾ ਲਿਖ ਦਿੰਦੇ ਇੱਥੇ ਵਿੱਚ ਉਹਨਾਂ ਨੇ ਲਿਖਿਆ ਲਿਖਿਆ ਕਰਤ ਚਲੋ ਆਦ ਦੇ ਵਿੱਚ ਨਾਲ ਇਹਦੇ ਵਿੱਚ ਲਿਖ ਦਿੰਦੇ ਆਪਣੇ ਜੰਗ ਯੁੱਧ ਵੀ ਤਾਂ ਲਿਖਿਆ ਨੇ ਉਹਨਾਂ ਨੇ ਜਬਰਨਾਮੇ ਵੀ ਤਾਂ ਲਿਖਿਆ ਉਹ ਵੀ ਲਿਖ ਦਿੰਦੇ ਇੱਥੇ ਜੇ ਬਾਬੇ ਬੋਢੇ ਦੀ ਸਾਖੀ ਹੁੰਦੀ ਹੈ ਜੇ ਲਿਖ ਦਿੰਦੇ ਸਭ ਝੂਠ ਹੈ ਉਹ ਲੈ ਕਾ ਨਿਕਲੇ ਨਾ ਚਿੱਟੇ ਹੋ ਕੇ ਉਹ ਹੋ ਕੇ ਫੇਰੀ ਸਭ ਝੂਠ ਹੈ ਸਭ ਝੂਠ ਤਦਪਾਸ਼ਾ ਇੱਕ ਵੀ ਸਾਖੀ ਹੁੰਦੀ ਇੱਥੇ ਲਿਖ ਦਿੰਦੇ 10 ਗ੍ਰੰਥ ਵਿੱਚ ਉਹਨਾਂ ਨੇ ਆਪਣੀ ਜੰਦ ਲਿਖੀ ਹੈ ਚਮਕੌਰ ਸਾਹਿਬ ਦੀ ਜੰਦ ਲਿਖੀ ਹੈ ਇਹ ਤਾਂ ਇਤਿਹਾਸ ਹਨ ਜੇ ਦੂਜਾ ਕੋਈ ਇਤਿਹਾਸ ਹੁੰਦਾ ਹੈ ਜੇ ਇਹਦੇ ਵਿੱਚ ਦਰਜ ਕਰ ਦਿੰਦੇ ਹੋ ਇੱਕ ਇਤਿਹਾਸ ਹੀ ਦੂਜਾ ਉਹਦੇ ਦਰਜਿਆ ਆਪਣੇ ਸੱਤੇ ਬਲਵਾਨ ਦੇ ਬਾਅਦ ਸੱਤੇ ਬਲਵਾਨ ਦੇ ਬਾਅਦ ਇਹ ਇਤਿਹਾਸ ਵਾਲੀ ਗੱਲ ਸੀ ਹੁੰਦਾ ਜਿਹਗੀ ਹੈ ਉਸ ਕੋਈ ਵੱਡੀ ਘਟਨਾ ਸੀ ਸਾਡੇ ਹੋਰ ਇਹ ਨਹੀਂ ਕੋਈ ਉਦਾਂ ਜੇ ਕਿ ਰਾਜ ਉਹ ਦੂਹੇ ਪਾਸੇ ਦਿੱਤਾ ਫਿਰ ਉਹਦਾ ਕਲੇਸ਼ ਵੀ ਸ਼ੁਰੂ ਹੋਇਆ ਬੇਦੀਆਂ ਦੇ ਕਲੇਸ਼ ਆਖਿਆ ਹੁਣ ਤੇ ਹੀ ਆ ਬੇਦੀਆਂ ਦਾ ਕਲੇਸ਼ ਵਿਕਤੀ ਸਾਡੇ ਕੋਲ ਹੈ ਲੇਕਿ ਫਿਰ ਉਹ ਗੱਡੀ ਨੂੰ ਤੁਸੀਂ ਉਹ ਗੱਡੀ ਹੈ ਉਹ ਨਹੀਂ ਹੈ ਗੱਡੀ ਗੱਡੀ ਮਹਾਦਰ ਗੱਡੀ ਬੇਰਾਂ ਦੀ ਪ੍ਰਚਾਰੀਆ ਸਾਧਾਂ ਦੀ ਕੋਈ ਗੱਡੀ ਵਾਲੀ ਗੱਲ ਨਹੀਂ ਸੀ ਦਾਸਾਂ ਦੀ ਗੱਡੀ ਹੁੰਦੀ ਹੈ ਦਾ ਆਸਦ ਨਾ ਨਹੀਂ ਕੀ ਹੁੰਦੀ ਐ। ਦਾ ਚਾਹਦਾ ਧਰਤੀ ਹੁੰਦੀ ਐ ਉਹ ਵੀ ਬਿਨਾ ਕਪੜਾ ਪਛਾਏ ਤੇ। ਜਿਹੜਾ ਦਾਸਦਾ ਉਹ ਤਾਂ ਪੁੱਜੇ ਵੈਨ ਉਹਦਾ ਕਪੜਾ ਪਛਾਏ ਤੇ ਬਿਲੋ। ਉਹਨਾਂ ਦੀ ਗੱਦੀ ਨਹੀਂ ਹੁੰਦੀ। ਕਾਇਦ ਆ ਰਿਹਾ ਕਬੀਰ। ਇਹ ਗੱਲ ਨੂੰ ਉੱਪਰ ਲੋ ਉੱਪਰ ਜਾ ਮੈਂ ਉੱਪਰ ਜਾ ਮੈਂ ਇਹ ਕਿਦਰ ਧਰਤੀ ਤੇ ਲੈਟ ਜਾਣਾ ਉੱਪਰ ਕਾਜ ਬਣ ਉਹ ਆਉਂਦਾ ਫਗਤਾਂ ਦਾ ਤਾਂ ਇਹ ਹੀ ਹੁੰਦਾ ਹੋਰ ਨਹੀਂ ਹੁੰਦਾ ਕੁਝ ਇਹ ਮੂਰਖਾਂ ਦੀਆਂ ਨੇ ਗੱਡੀਆਂ ਕਬੀਰ ਘਟਿਆ ਕੁਸ ਕਬੀਰ ਵੀ ਤਾਂ ਹੋਈ ਗੱਲ ਹੈ ਕਬੀਰ ਦੀ ਬਾਣੀ ਕਬੀਰ ਨੂੰ ਪਹਿਲਾਂ ਮਿਲਿਆ ਨਾਮ ਸਾਰਿਆਂ ਨੂੰ ਕਬੀਰ ਨੇ ਦੱਸਿਆ ਬਾਕੀਆਂ ਨੂੰ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੇ ਕਬੀਰ ਦੀ ਬਾਣੀ ਪੜ੍ਹੀ ਨਹੀਂ ਸਭ ਚਾਹੀਦਾ ਅਲੱਗ ਗੱਲ ਹੈ ਸਭ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆ ਗੁਰਦੀਨੀ ਵਸ ਕਬੀਰ ਕੋ ਲੈ ਉਹ ਵਸ ਸੁਭਾਲ ਕਬੀਰਦੀਨੀ ਸੰਸਾਰ ਕੋ ਸੰਸਾਰ ਨੂੰ ਖਬੀਰ ਨਾ ਦਿੱਤੀ ਵਸਤੂ ਲੈ ਜੇ ਸਮਸਤਕ ਭਾਗ ਲਉ ਜੀ ਦੇ ਵਸਤੂ ਭਾਗ ਨੇ ਇਹ ਗੱਲ ਠੀਕ ਹੈ ਲੈ ਨਹੀਂ ਸਕਦਾ ਵਸਤੂ ਕੁਰਬਾਨੀ ਚ ਪਈ ਹੈ ਹਰੇਕ ਪਰ ਮਣੀ ਦਾ ਗਮੇਲ ਨੂੰ ਇਹ ਗੁਰਬਾਣੀ ਨੇ ਤਾਂ ਸ਼ਬਦ ਬਨ ਕੇ ਗੁਰੂਆਂ ਨੇ ਤਾਂ ਸ਼ਬਦ ਬਨ ਕੇ ਦਰਜ ਕਰ ਲਿਆ ਉਹਨਾਂ ਨੇ ਆਪਣੀ ਬੇਇੱਜ਼ਤੀ ਥੋੜੀ ਮੰਨੀ ਵੀ ਅਸੀਂ ਸ਼ਬਦ ਕਬੀਰ ਦਾ ਨਾਂ ਨਹੀਂ ਵੇਸੀ ਆਪਣੇ ਨੌਲਿਖ ਦੀਏ ਤਾਂ ਸਾਨੂੰ ਮਿਲੀ ਹੈ ਉਹ ਸ਼ਬਦ ਰੋਬੀ ਤਾਂ ਸਕਦੇ ਸੀ ਜੇ ਇਹ ਜੇ ਵਿਦਵਾਨ ਹੁੰਦੇ ਨਾ ਜੇ ਇਹ ਨੇ ਲਿਖੋ ਲੈਂਦੇ ਨਾਨਕ ਲਿਖਤਾ ਉਹ ਜਿਹੜਾ ਸੱਚ ਸੀ ਸੱਚ ਲਿਖਤਾ ਵੀ ਪਾਈ ਕਵੀਰ ਨੂੰ ਮਿਲੀ ਹੈ ਨਾਨਕ ਨੂੰ ਤਾਂ ਕਵੀਲ ਦੀ ਬਾਣੀ ਮਿਲੀ ਹੈ ਇਸੇ ਕਰਕੇ ਗੈਰ ਹੈ ਸ਼ਬਦ ਗੁਰੂ ਨਾਨਕ ਕਿਹੜੇ ਸ਼ਬਦ ਗੁਰੂ ਕਹਿ ਰਿਹਾ ਇਸੇ ਨੂੰ ਕਹਿ ਰਿਹਾ ਸ਼ਬਦ ਗੁਰੂ ਸਿਰਦ ਤੋਂ ਜੇਲਾ ਸ਼ਾਬਾਦ ਉਹ ਤਾਂ ਅੰਦਰਲੇ ਨੂੰ ਕਹਿ ਰਿਹਾ ਗੁਰੂ ਐ ਪਰ ਦੱਸਿਆ ਤਾਂ ਐਸੇ ਨੇ ਹੋਇਆ ਸਾਰੇ ਹਦੋਤਾਂ ਦੇ ਵਿੱਚ ਸੀ ਬਾਣੀ ਭਗਤਾਂ ਦੀ ਗੁਰੂਕਾਰ ਵੇਲੇ ਹੀ ਸਾਰੇ ਹਦੋਤਾਂ ਚੋਂ ਗ੍ਰੰਥ ਚੱਲੇ ਗਏ ਸੀ ਗੁਰਬਾਣੀ ਆ ਤਾਂ ਸਾਰੀ ਜੋ ਗ੍ਰੰਥ ਤਿਆਰ ਹੋ ਗਿਆ ਨਾ ਆਪਣੇ ਪੁੱਤੀ ਸਾਹਿਬ फटाफटੋ ਤਾਰੇ ਕਰਕੇ ਸਾਰੇ ਹਦੋਤਾਂ ਚਲੇ ਗਏ ਤੇ ਲਗਾਤਾਰ ਹੁੰਦੇ ਰਹੇ ਨੇ ਤਾਰੇ ਤੇ ਹਜ਼ਾਰਾਂ ਦੇ ਦਾਦਾ ਜਿਹੜੇ ਉਤਾਰੇ ਹੋਗੇ ਸੀ। ਆ 4-500 ਦਾ ਹੋਲ ਇੱਥੇ ਪਿਆ ਸੀ। ਦਰਵਾਜ਼ਾ ਸਾਹਿਬ 'ਚ। ਜੋ ਹੋਰ ਪਤਾ ਨਹੀਂ ਕਿੰਨੇ ਪੈਦੇ ਲੋਕਾਂ ਕੋਲ ਪਾਕਿਸਤਾਨ 'ਚ ਉਧਰ-ਉਧਰ। ਸਾਰੇ ਹਿੰਦੂ ਸੰਜੇ ਪੈ ਸੀ ਉਤਾਰੇ। ਨਾਲੇ ਬਹੁਤ سارے ਸਾੜ ਦਿੱਤੇ ਉਹਨੇ। ਉਹ ਜਿਹੜਾ ਸੀਗਾ ਲਖਬਤ ਜਸਪਤ ਕਹਿੰਦਾ ਛੱਡਣਾ ਹੀ ਕੋਈ ਨਹੀਂ ਸੀ। ਫੇਰ ਵੀ ਇਹਦੇ ਪੈ। ਧਰਮ ਕਾਜ਼ਮੀ ਸੀ ਸਾਰਾ ਦਿਨ ਇਹੀ ਕੰਮ ਕਰਦੇ ਸੀ, ਲਿਖੀ ਜਾਂਦੇ ਸੀ। ਇਵੇਂ ਭਗਤ ਬਾਣੀ ਸੀ। ਕਬੀਰ ਦੀ ਬਾਣੀ ਸਾਰੀ ਪਈ ਸੀ। ਭਗਤਾਂ ਦੀ ਸਾਰਿਆਂ ਦੀ ਬਾਣੀ ਸਾਰੀ ਪਈ ਸੀ। ਜਿਕਰ ਉਹਦਾ ਸਿੱਖੀ ਦੀ ਸਮਝ ਇਤਨੂੰ ਤਾਂ ਜੀ ਹੈ। ਜੇ ਨਾਨਕ ਤੋਂ ਬਿਨਾਂ ਹੋਰ ਕਿਸੇ ਨੂੰ ਕੋਈ ਕਹਿ ਦਈਏ ਇਹ ਆ ਫੁੱਕ ਜਾਂਦਾ ਵੀ ਕਿਉਂ ਕਹਿ ਤਾ। ਇਸੇ ਕਰਕੇ ਇਹਨਾਂ ਨੂੰ ਅਕਲ ਨਹੀਂ ਆਉਣੀ। ਇਹਨਾਂ ਦੇ ਅੰਦਰ ਈਰਖਾ ਦੁਇ ਹੈ। ਨਫਰਤ। ਜੇ ਤੇ ਨਫਰਤ ਹੁੰਦਾ ਤਾਂ ਨਾਮ ਨਹੀਂ ਫਲਦਾ ਹੁੰਦਾ। ਪੱਠੇ ਦੀ ਜਮੀਨ ਤੇ ਜਿੱਥੇ ਪੱਠਾ ਲੱਗਿਆ ਹੋਵੇ ਉੱਥੇ ਫਸਲ ਨਹੀਂ ਪੈਦਾ ਹੁੰਦੀ ਹੁੰਦੀ ਇਹਨਾਂ ਦੇ ਅੰਦਰ ਦਾ ਪੱਠੀ ਹੈ ਉਹ ਪੱਠੀ ਹੈ ਜਿਹਨੂੰ ਕਬੀਰ ਕਹਿੰਦਾ ਕੀ ਜਾਇ ਪਰਿ ਪੱਠ ਛਾਰ ਕੁਰਬਾਨੀ ਦਾ ਗਿਆਨ ਕੁਰਬਾਨੀ ਦੀ ਜਿਹੜਾ ਹੈ ਨਾ ਸੋਜੀ ਕੁਰਬਾਨੀ ਦੇ ਸ਼ਬਦ ਇਹਨਾਂ ਦੀ ਪੱਠੀ 'ਚ ਜਾ ਕੇ ਡਿਕਦੇ ਨੇ ਪੱਠੀ 'ਚ ਉਹ ਨਾਸਰੇ ਕੋਈ ਨਹੀਂ ਹੁੰਦਾ ਜਾਇਪਰੀ ਪੱਠ 4 4 ਪੱਠੀ ਦੀ ਸੋਹ ਦੇ ਜਾ ਕੇ ਡਿੱਪੀ ਉੱਥੇ ਹੱਬ ਲੱਗਿਆਉਣਗੇ ਗਰਭ ਸੋਹ ਦੀ ਪੱਠੀ ਦੀ ਉੱਤੇ ਪੈ ਗਈ ਉਹ ਬੋਹ ਦੁੱਡ ਗਈ ਕਬੂਦ ਕੀ ਕਰ ਲੂ ਪੱਠੀ ਦੇ ਉੱਤੇ ਜਾ ਕੇ ਦੇਖ ਇਹਦਾ ਉਹ ਹਾਲ ਤੈਰਲ ਦੀ ਇਹਨਾਂ ਦੇ ਅੰਦਰ ਈਰਖਾ ਇਹਨਾਂ ਦੇ ਅੰਦਰ ਅਸਬੋਖ ਮਾਰ ਕੀ ਬੇਦਨ ਆਉ ਸੁਣ ਕੇ ਬਚ ਜਾਂਦਾ ਬੇਦ ਜੇ ਕੰਨ ਚ ਬੇਦ ਸ਼ਬਦ ਪੈ ਜਵੇ ਬਚ ਜਾਂਦਾ ਗੁਰਬਾਣੀ ਕਹਿੰਦੀ ਬੇਦ ਕਿਤੇ ਕਹੋ ਬਾਤ ਝੂਠੇ ਝੂਠਾ ਜੋਰਾ ਵਿਚਾਰਾ ਉਹ ਕਹਿੰਦੀ ਤੂੰ ਆਪ ਝੂਠਾ ਜਿਹੜਾ ਵਿਚਾਰਦਾ ਨਹੀਂ ਉਹ ਖਿਲਾਫ ਖੜਾ ਹੈ ਜਾਇਪਰੀ ਪਟ ਸਾਰੇ ਇਹ ਗਾਣ ਹੋਣਾ ਬੜਾ ਮੁਸ਼ਕਲ ਗੱਲ ਹੈ ਇਵੜਾ ਤਖੜਾ ਹਾਜੂਰ ਚਾਹੀਦਾ ਸ਼ਾਂਤੀ ਚਾਹੀਦੀ ਹੈ ਵਿਚਾਰ ਚਾਹੀਦੀ ਹੈ ਸੱਚ ਚਾਹੀਦਾ ਰੂਬਰਤਾ ਚਾਹੀਦੀ ਹੈ ਇਹਨਾਂ ਕੋਲ ਤਾਂ ਕੁਝ ਵੀ ਨਹੀਂ ਹੈ ਇਹਨਾਂ ਕੋਲ ਤੇ ਕੁਝ ਗੰਧਰਵ ਸਰਬ ਵਿਰਾਜ ਇਧਰ ਰਾਜ ਪ੍ਰਵੀਨ ਜੱਛ ਗੰਧਰਵ ਦੇਵ ਦਾਨੋ ਦੇਵ ਦਾਨੋ ਰਾਖਸ਼ ਨਾ ਬ੍ਰਹਮ ਛਤਰੀ ਨਮਾਹ ਹੈ ਨਾ ਤੈਨਾਚਾ ਨਾ ਬ੍ਰਹਮ ਛਤਰੀ ਨਾ ਕਿਸੇ ਚ ਵਧੀ ਇਹਦਾ ਜੀਵ ਰਹਿਣਾ ਜ ਨਹੀਂ ਹੁੰਦਾ ਹੈ ਤਾਂ ਭਗਤਾਂ ਐ ਨਹੀਂ ਹੈ ਵੀ ਛਤਰੀ ਅਸੀਂ ਸਾਡੇ ਚ ਰੱਬ ਵਧੀਆ ਥੋੜੇ ਜਿ ਘਟ ਗਿਆ ਪੂਰਨੂਪ ਜਿਹੜੀ ਕਿਸੇ ਚ ਸ਼ਬਦ ਪ੍ਰਗਟ ਹੈ ਉਹ ਗੱਲ ਹੋਰ ਕਹੇ ਨੇ ਰਬਯੋ ਹੈ ਸਾਰਿਆਂ ਚ ਪ੍ਰਗਟ ਨਹੀਂ ਹੈ ਨਾ ਪਰਮ ਛਤਰੀਆਂ ਨਾਮਾ ਦਾ ਮੰਤਵ ਹੈ ਪ੍ਰਗਟ ਰੂਪ ਚ ਨਹੀਂ ਹੈ ਜੇ ਛਤਰੀ ਕਹਣਾ ਸੀ ਸ੍ਰੇਸ਼ਟ ਕਿਉਂ ਆ ਵੀ ਤੁਸੀਂ ਸ੍ਰੇਸ਼ਟ ਕਿਉਂ ਸਰਵ ਸ੍ਰੇਸ਼ਟ ਪ੍ਰਗਟ ਹੈ ਚਾਹੇ ਰਵਦਾਸ ਜਮਾਰ ਹੈ ਚਾਹੇ ਚੰਡਾਲ ਤਾਂ ਤੇ ਉੱਤਮ ਗਣੋ ਚੰਡਾਲਾ ਨਾਨਕ ਜਗ ਜਸ ਗੋਪਾਲਾ ਜਿੱਦਾ ਗੋਪਾਲ ਬਸ ਗਿਆ ਉਹ ਚਨਾਲ ਵੀ ਜਿਹੜਾ ਹੈਗਾ ਉਤਮ ਸਿਆਉ ਸਦਨਾ ਤਸਾਈ ਹੈ ਉਹ ਵੀ ਉਤਮ ਹਿਰਦੇ ਚ ਪ੍ਰਗਟ ਹੈ ਲੋਰ ਹੋਰ ਕਿਸੇ ਖਾਸ ਯਾਦੇ ਦੀ ਉਤਤ ਜੇ ਕੋਈ ਕਹਵੇ ਬ੍ਰਾਹਮਣ ਮੈਂ ਉੱਚ ਕੋਈ ਉੱਚ ਨਹੀਂ ਸਭ ਬਰਾਬਰ ਨੇ ਨਾਮ ਤੋਂ ਬਿਨਾਂ ਸਾਰੇ ਹੀ ਨੇ ਮੁੱਖ ਦੀ ਗੱਲ ਨਾਵਾ ਦਾ ਉਜਰ ਇਸਾਰੇ ਦੀਚੇ ਜਾਤ ਪਾਤ ਕੋਈ ਹੁੰਦੀ ਹੋਈ ਨਹੀਂ ਦਰਗਾਹ ਜਣੀ ਕੋਈ ਜਾਤ ਪਾਤ ਹੁੰਦੀ ਸਾਡੀ ਆਪਣਾ ਜੁਲ ਜੁਲ ਦਰਗਾਹ ਦਾ ਫੈਸਲਾ ਦਰਗਾਹ ਦੇ ਹਸਾਬ ਨਾਲ ਹੁੰਦਾ ਤੁਸੀਂ ਬਲਦੇ ਫਿਰੋ ਜਾਤਾਂ ਨੂੰ ਨਹੀਂ ਬਲਦੇ ਕੋਈ ਉੱਥੇ ਕੋਈ ਮੰਨਤਾ ਨਹੀਂ ਕਿਸੇ ਜਾਤ ਨੂੰ ਉੱਥੇ ਇਹ ਮੰਨਤਾ ਜ਼ਰੂਰ ਆ ਆਪਣ ਕੋ ਜੋ ਜਾਣਾ ਉੱਚਾ ਸੋਈ ਗਲੀਆਂ ਸਭ ਤੇ ਨੀਚਾ ਕਹਣਾ ਨਹੀਂ ਜੀ ਸਾਡੀ ਤਾਂ ਇਹ ਜਾਤ ਉੱਚੀ ਆ ਏ ਹੁਣ ਲੰਗਰ ਵਰਤਾ ਸੀ ਤਾਂ ਖਾਣਾ ਨਹੀਂ ਛਕਣਾ ਨਹੀਂ ਕਹਿੰਦਾ ਕੋਈ ਨਹੀਂ ਤੁਸੀਂ ਬੈਠੋ ਭਾਈ ਉਪਰ ਤੇ ਛੱਕੀ ਗਾ ਉਪਰ ਛੱਕੀ ਗਾ ਥੱਲੇ ਬਾਟੇ ਰੱਖਿਆ ਹੋਇਆ ਸਾਰਿਆਂ ਨੂੰ ਛਕਣਾ ਛਕ ਲੋ ਉਹ ਥੱਲੇ ਡੁੱਲਿਆ ਨਾ ਸਾਰਿਆਂ ਦਾ ਸਭ ਤੇ ਢੀਚ ਉਹ ਪੀਉ ਨਾ ਉਹੜਾ ਸਾਰਿਆਂ ਦਾ ਛੱਕ ਛੱਕ ਕੇ ਡੁੱਲਿਆ ਉਹ ਪੀਣਾ ਬਹੁਤ ਹੁਣ ਥੋੜੂ ਤਾਂ ਉਹ ਪਲਾਇਆ ਸੀ ਕਿ ਘੁੱਟ ਸਾਰਿਆਂ ਨੂੰ ਪਲਉਂਦੇ ਨੇ ਕੋਈ ਇਹ ਨਾ ਸਮਝ ਲਵੇ ਮੈਂ ਹੂ ਚਾਹਾਂ ਜਿੱਦਾਂ ਉਹ ਛਗਲੇਗਾ ਤਾ ਤਾਂ ਚੱਲਿਆ ਸੱਚ ਨਾਲੇ ਪਿੱਛੇ ਮੁੜ ਜਾ ਪਿੱਛੇ ਮੁੜ ਜਾ ਦੇ ਬਿਸਟਾ ਦਾ ਕੀੜਾ ਬਿਸਟਾ ਬਾਹਰ ਸਮਾ ਜਾ ਜਾ ਕੇ ਅਮਰਤਾ ਇਹ ਬਿਲਦ ਇਹ ਵੀ ਬਿਲਦ ਹੋ ਬਰਦਾ ਇਹ ਕਹਿੰਦਾ ਅਸੀਂ શ્રેષ્ઠਾਂ શ્રેષ્ઠ ਨਹੀਂ ਹੈ ਜਿਹੜਾ શ્રેષ્ઠ ਕਹਿੰਦਾ ਆਪਣੇ ਆਪ ਨੂੰ ਉਹ ਤਾਂ ਨੀਚ ਹੈ ਜਿਹੜਾ ਕਹਿੰਦਾ ਮੈਂ ਜਾਣ ਲਿਆ ਸਭ ਕੁਝ ਉਸੇ ਤਰ੍ਹਾਂ ਜਾਣਣਾ ਐ ਸੋਈ ਅਜਾਣ ਕਹੇ ਬੇਜਾਨ ਜਿਹੜੇ ਪ੍ਰਭਗਿਆਲੀ ਦਾ ਬੋਲ ਲਾਉਂਦੇ ਨੇ ਮੈਂ ਜਾਨਣਾ ਜਾਣਨ ਹਾਰ ਨਛਾਣਾ ਰੇ ਜਨਨ ਹਾਰ ਤਾਂ ਛੜੀ ਨਹੀਂ ਜਨਨ ਤਾਂ ਲਬੇ ਜੀ ਤੁਸੀਂ ਜਾਣਨ ਹਾਲ ਹੁੰਦਾ ਕੌਣ ਬੈਸ਼ਨੰਗ ਕੇ ਵਿਖੇ ਵਿਰਾਜੈ ਸੂਦਰ ਭੀ ਵਹਿਨਾ ਹੈ ਦਾਤਾ ਬੈਸ਼ਨੂ ਵਿਖੇ ਵਿਰਾਜਦਾ ਹੋ ਨਾ ਊਧਰ। ਛੂਦਰ ਵੀ ਵਹਿਣਾ ਹੈ। ਛੂਦਰ ਵੀ ਨਹੀਂ ਆਉ। ਵੈਸ਼ ਨੂੰ ਨਹੀਂ ਆਉ। ਕੋਲ ਵੈਸ਼ ਨੂੰ আর ਛੂਦਰ ਸਭ ਤੋਂ ਪਵਿੱਤਰ ਮੰਨਦਾ ਸੀ ਨਾ। ਇਹ ਧੋ ਕੇ ਲੱਕੜੀਆਂ ਧੋ ਕੇ ਰੋਟੀ ਬਗਾਉਂਦੇ ਤੇ। ਇਹਨਾਂ ਦੇ ਵਿੱਚ ਇਹਨਾਂ ਵੈਸ਼ ਨੂੰ ਜਿਵੇਂ। ਦੋ ਜੁਲਾ ਕਰਨਾ। ਜਮੀਨ ਪੱਟ ਕੇ ਥੱਲੇ ਜੁਲਾ ਕਰਨਾ। ਉਹ ਬਹਿਰੋਨੀ ਕੈਟਗਰੀਆਂ ਦੇ ਵਿੱਚ ਨੇ ਬਹੁਤ ਅਸੀਂ ਪਵਿੱਤਰ ਆ ਅਸ਼ੂਦਾ ਦਾ ਵਿਚਾ ਨਾ ਵੇਚ ਉਹ ਵੇਚੂ ਨਹੀਂ ਹੈ ਵੇਚ ਹੈ ਕਾਲ ਜਿਹੜਾ ਆਪਣਾ ਨੂੰ ਵੇਚ ਸਮਝਦਾ ਅਸਲ ਜੋ ਵੇਚ ਨੂੰ ਹੈ ਇਹਦੀ ਜਿੱਤੇ ਦਾਣੇ ਅੰਨ ਕੇ ਜੀਵ ਆਇ ਨਾ ਕੋਏ ਸਾਰੇ ਦਾਣੇ ਅੰਨ ਜੀ ਹੈ ਉਹ ਖੁਰੇ ਤੂੰ ਦਾਲ ਇਹਨੇ ਜੀ ਮਾਰ ਕੇ ਖਾ ਗਿਆ ਤੂੰ ਕਹਿਣਾ ਮੈਂ ਵੇਚ ਦਾਂਸਬਜੀ ਉਹ ਵੀ ਉਹਦੇ ਵਿੱਚ ਵੀ ਜੀ ਦੇ ਮਾਰ ਕੇ ਨੇ ਰਹਤਾ ਪਾਤੀ ਤੋੜੇ ਮਾਲ ਨਹੀਂ ਪਾਤੀ ਪਾਤੀ ਜੀਓ ਪੱਤੇ ਪੱਤੇ ਜੀਵਨ ਤੂੰ ਕਹਣਾ ਮੈਂ ਬੈਸਰੂ ਹਾਂ ਤੂੰ ਬੁੱਧੀ ਹੀਰ ਬੁੱਧੀ ਹੀਰ ਕਰਕੇ ਆਪਣੇ ਆਪ ਨੂੰ ਬੈਸਰੂ ਮੰਨਦਾ ਹੈ ਬੈਸਰੂ ਹੈ ਨਹੀਂ ਥੋੜੀ ਅਕਲ ਕਰਕੇ ਆਪਣੇ ਆਪ ਨੂੰ ਬੈਸਰੂ ਬੋਲਣਾ ਹੋਰ ਗੱਲ ਹੈ ਬੈਸਰੂ ਹੋਣਾ ਹੋਰ ਗੱਲ ਹੈ ਬੈਸਰੂ ਕੌਣ ਬੈਸਰੂ ਸੋ ਜੇ ਸੁਪਰ ਸੁਪਰ ਸੰਦ ਜਿੱਤੇ ਤਾਂ ਪਰਮੇਸ਼ਰ ਪਰਸਾਨਾ ਵੈਸਲੂ ਫਿਰ ਸੰਕੀ ਮਾਇਆ ਤੇ ਹੋਏ ਫਿਰ ਵੈਸਲੂ ਤਾਂ ਆਉਂਦਾ ਗੂੜ ਗੌੜ ਨਾ ਭੀਲ ਭੀਕਰ ਬ੍ਰਹਮ ਸੇਖ ਸਰੂਪ ਗੂੜ ਗੌੜ ਗੌੜ ਬ੍ਰਹਮ ਲੁੱਤ ਦੇ ਗੌੜ ਬ੍ਰਾਹਮਣਾਂ ਦੀ ਇੱਕ ਜਾਤੀ ਦੇ ਗੋੜ ਬ੍ਰਾਹਮਣ ਅਰਮੇਧੀਆ ਕਰਦੇ ਰਹੇ ਆਦਮੀ ਦੀ ਬਲੀ ਦਿੰਦੇ ਰਹੇ ਗੋੜ ਬ੍ਰਾਹਮਣ ਯਾਦ ਦੁਦਾਰਖੇ ਬਹੁਤ ਗੂੜ ਗਿਆਨ ਵਾਲੇ ਹੋ ਜੀ ਪੁਰਬਾਉ ਨੂੰ ਨਹੀਂ ਸੀ ਮੰਨਦੇ ਧਰਮ ਲਈ ਆਦਮੀ ਦੀ ਬਲੀ ਉਹ ਜਿਹੜਾ ਰਾਜਾ ਕਰਦਾ ਨਾ ਮਹੇ ਦੇ ਅੱਗ ਉਹ ਇਹਨਾਂ ਨੇ केलं ਗੂੜ ਗਿਆਨ ਵਾਲੇ ਗੌੜ ਬ੍ਰਹਮੜ ਜਿਆਦਾ ਗੂੜ ਜਿਹਨੂੰ ਕੋ ਜਿਆਦਾ ਗੂੜ ਵਿਦਿਆ ਦਾ ਗਿਆਨ ਆ ਆ ਜਿਹੜੇ ਦੂਰੇ ਐ ਸਭ ਪ੍ਰਤੀ ਸ਼ਾਸਤਰ ਦਾ ਗਿਆਨ ਵਾਲੇ ਨੇ ਪੁਰਬਾਬ ਨੂੰ ਨਹੀਂ ਬੰਦਾ ਗੌੜ ਬ੍ਰਹਮੜ ਪੁਰਬਾਬ ਨੇ ਉਹਦੇ ਵਾਸਤੇ ਕੁਛ ਹੈ ਸਾਡੇ ਵਾਸਤੇ ਪੁਰਬਾਬ ਕੁਛ ਨਹੀਂ ਹੈ ਜੋ ਬ੍ਰਹਮ ਗਿਆਨੀਆਂ ਦੇ ਵਾਸਤੇ ਪੁਰਬਾਬ ਕੁਛ ਨਹੀਂ ਹੁੰਦਾ ਗੂੜ ਵੀ ਲਹਿਣਾ ਨਾਲ ਗੌੜ ਦੇ ਗੂੜ ਗੌੜ ਗੂੜ ਗਾਣ ਵਾਲੇ ਗੌੜ ਨੇ ਗੂੜ ਪੀਲ ਪੀਕਰ ਨਾ ਨਾ ਗੂੜ ਗੌੜ ਹੈ ਉਹ ਉਹ ਨਹੀਂ ਨਾ ਪੀਲੇ ਉਹਨੇ ਪੀਲੇ ਪੀਲੇ ਨੇ ਜਿਹਨਾਂ ਉਹਦੇ تیر ਮਾਰੇ ਸੀ ਕ੍ਰਿਸ਼ਨ ਤੇ ਅਸਲ ਜਿਹੜੇ ਨੇ ਆਦਿਵਾਸੀ ਜਿੱਥੇ ਹੁਣ ਉੱਤੇ ਦੱਖਣ ਦੇ ਵਿੱਚ ਜਿਹੜਾ ਪਹਾੜੀ ਇਲਾਕਾ ਹੈ ਆਦਿਵਾਸੀ ਰੂਪੀਲ ਕਹਿੰਦੇ ਸ਼ਿਕਾਰੀ ਸ਼ਿਕਾਰ ਘੜਨਾ ਰਖੋ ਨਾ ਪੀਲੇ ਨਾ ਪੀਲੇ ਪੀਕਰ ਬ੍ਰਹਮਸ਼ੇਖ ਸਰੂਪ ਨਾ ਬ੍ਰਹਮਾ ਰਾਤ ਦਿਵਸ ਨਾ ਮਦ ਉਰਧ ਭੂਮ ਆਕਾਸ਼ ਅਨੂਪ ਰਾਤ ਦਿਵਸ ਨਾ ਮਦ ਨ ਰਾਤਾ ਨਾ ਦਿਨ ਨਾ ਦੋਹਾਂ ਦਾ ਵਿਚਾਰਾ ਅਪਾ ਕਹਣਾ ਦੋ ਵੇਲੇ ਮਿਲਦੇ ਨੇ ਸਵੇਰ ਸ਼ਾਮ ਦੇ ਆਪਾ ਬਣਾਏ ਹੋਏ ਨੇ ਐ ਵੇਲੇ ਸਧਿਆ ਕਰਨੀ ਚਾਹੀਦੀ ਆ ਪੁੱਛਦੀ ਆ ਹੁਰਤ ਨਾ ਭੂਵ ਆਕਾਸ਼ ਅਵਰਤ ਨਾ ਭੂਵ ਐ ਨਾ ਆਕਾਸ਼ ਕੁਛ ਨਹੀਂ ਆ ਭੂਵ ਆਕਾਸ਼ ਦੇ ਵਿੱਚ ਕਿਤੇ ਰਹੀ ਹੈ ਜੇ ਤੁਸੀਂ ਕਹੋ ਇਹ ਜਗ੍ਹਾ ਹੈਗਾ ਕਿਤੇ ਕੋਈ ਅਕਾਸ਼ ਤੇ ਵਿੱਚ ਵੀ ਬੁੱਧਦੇ ਨੇ ਆਕਾਸ਼ ਦੀ ਵੀ ਪੂਜਾ ਕਰਦੇ ਨੇ ਧਰਮ ਦੀ ਵੀ ਪੂਜਾ ਕਰਦੇ ਨੇ ਧਰਤੀ ਦੀ ਪੂਜਾ ਨਹੀਂ ਕਰਦੇ ਧਰਤੀ ਦੀ ਪੂਜਾ ਕਦਾਂ ਕਰਦੇ ਨੇ ਉਹ ਇਹ ਕਹੇ ਵੀ ਧਰਤੀ ਵਿੱਚ ਨਹੀਂ ਹੈ ਸੂਰਜ ਦੀ ਪੂਜਾ ਕਰਦੇ ਸੂਰਜ ਵਿੱਚ ਨਹੀਂ ਹੈ ਪੂਜਾ ਤੋਂ ਰੋਕੇ ਗਰੇ ਹਨ ਕੋਈ ਜਾਤ ਪੂਜਣ ਲੋਕ ਜੋਗ ਨਹੀਂ ਹੈ ਕੋਈ ਵੀ ਜਾਤ ਪੂਜਣ ਜੋਗ ਨਹੀਂ ਹੈ ਪੀਲਾਂ ਦੇ ਵਿੱਚ ਕੋਈ ਆਦਮੀ ਨੂੰ ਪੀਲ ਪੂਜਦੇ ਹੋਣਗੇ ਜੋ ਪੀਲੇ ਹੈ ਦੀ ਤਾਂ ਪੀਲੇ ਪੂਜਣ ਦੇ ਯੋਗ ਨਹੀਂ ਗੌੜ ਬ੍ਰਾਹਮਣਾ ਜੀ ਗੌੜ ਨੂੰ ਕੋਈ ਸਾਨੂੰ ਪੂਜਦੇ ਹੋਣਗੇ ਗੌੜਾਂ 'ਚ ਹੁੰਦਾ ਹੀ ਨਹੀਂ ਇਹਦਾ ਬਲਾ ਕੋਈ ਵੀ ਗੌੜ ਪੂਜਣ ਯੋਗ ਨਹੀਂ ਹੈ ਐਸ ਤਰੀਕੇ ਨਾਲ ਕੈਟਾਗਰੀ ਕਰਿਆ ਨੇ ਸੰਕ ਸੰਤਨਦਲ 'ਚ ਹੈ ਨਹੀਂ ਉਹ ਸੰਕ ਸੰਤਨਦਲ ਦੇ ਜਿਹਨੇ ਚਲੇ ਨੇ ਕਿਸੇ ਨੂੰ ਪੂਜ ਨਹੀਂ ਸਕਦੇ ਆਦਮੀ ਨੂੰ ਅਡਾਡ ਕੱਟ ਕੇ ਵੀ ਫਿਰ ਅ ਦੇਖੋ ਕਿਸ ਤਰੀਕੇ ਨਾਲ ਖਟਿਆ ਹੈ ਪਹਿਲਾਂ ਸੋਚੇ ਤੌਰ ਤੇ ਕਹਤਾ ਜਾਤ-ਪਾਤ ਹੈ ਨਹੀਂ ਉਹਦੀ ਸਰੀਰ ਹੈ ਨਹੀਂ ਦੇਹ ਨਹੀਂ ਇਹ ਨਹੀਂ ਉਹ ਨਹੀਂ ਹੁਣ ਕੱਲੀ-ਕੱਲੀ ਕੈਟਾਗਰੀ ਨੂੰ ਕੱਟ ਰਹੀ ਹੈ। ਐਨੀ ਬ੍ਰਿਕੀ ਨਾਲ ਕੱਟਣ ਦੇ باوجود ਵੀ ਆਦਮੀ ਫਿਰ ਸਿੱਖ ਮੰਨਣ ਨੂੰ ਤਿਆਰ ਵੀ। ਐਨੀ ਬ੍ਰਿਕੀ ਨਾਲ ਦਾ ਗੁਰੂ ਗ੍ਰੰਥ ਸਾਹਿਬ ਨੇ ਕਟਿਆ ਹੀ ਨਹੀਂ ਹੈ। ਵਿਅਕਤੀ ਪੂਜਾ ਨੂੰ ਐਡੀ ਬ੍ਰਿਕੀ ਨਾਲ ਐਨੀ ਮਤਲਬ ਹੈ। ਸ਼ਿੱਦਤ ਨਾਲ। ਜੋਰ ਦੇ ਕੇ ਗੁਰੂ ਗ੍ਰੰਥ ਸਾਹਿਬ ਨੇ ਵੀ ਤੁਹਾਨੂੰ ਛੜਾਇਆ। ਇਹਦੀ ਬ੍ਰੇਕੀ ਨਾਲ ਇੱਥੇ ਜੜਾਇਆ ਹੋਇਆ ਆ। ਅਕਾਲ ਉੱਤੇ ਹੈ ਕੀ। ਅਕਾਲ ਦੀ ਪੂਜਾ ਕਰਨੀ ਏ। ਪੂਜਾ ਅਕਾਲ ਕੀ ਪਰਚੈ ਸ਼ਬਦ ਦਾ ਅਧਿਕਾਰ ਖਾਲਸੇ ਦਾ ਤੇਰੀ ਚੀਜ਼ਾਂ ਨੇ। ਪ੍ਰਾਣੀਓ। ਉੜਾਣਾ ਬਣ ਸ਼ਕੋ ਇਹ ਬਣਾਇਆ ਬਾਦ ਜੁਬੇਦਵਾਨਾਂ ਦਾ। ਇਹਨਾਂ ਦਾ ਬਣਾਇਆ ਹੋਇਆ। ਸਾਡੇ ਰਾਜ ਕਰੇਗਾ ਖਾਲਸਾ ਰਿਆਣਾ। ਇਹਦੀ ਸਾਡਾ ਹੈਗਾ। ਦੋਨਾਂ ਦਾ ਮੇਲ ਕਰਕੇ ਦਿਖਾਓ ਫਿਰ। ਜਿਹੜਾ ਨਾਮ ਜਪੋ ਉਹ ਬਣ ਸ਼ਕੋ ਕਰੋ ਇਹ ਖਾਲਸੇ ਦਾ ਨਹੀਂ ਹੈ ਇਹ ਦੋ ਨੰਬਰ ਬਣਾਇਆ ਹੋਇਆ ਕਰਤ ਸੰਸਾਰੀ ਕਰਤਾ ਹੈ ਸੰਸਾਰੀ ਕਰਦ ਕਰਕੇ ਵੰਡ ਕੇ ਛਕਣਾ ਇਹ ਉਹ ਗੱਲ ਕਰਦੇ ਨੇ ਸਾਡੀ ਦਾ ਕਰਤਾ ਹੀ ਨਹੀਂ ਹੈ ਕਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਕਰਤ ਕਰਮ ਤਾਂ ਵਿਛੋੜਦਾ ਸਾਨੂੰ ਇਹ ਕਹਿੰਦੇ ਨੇ ਕਰਤ ਕਰੋ ਜਿਹੜੇ ਲੋਕ ਇਹਨਾਂ ਕਰਤ ਕਰੋ ਗੁਰਬਾਣੀ ਕਹਿੰਦੀ ਹੈ ਕਰਤ ਕਰਮ ਕੇ ਵਿਛੜੇ ਕਰ ਕਰਪਾ ਬੁਲਉਂ ਕਰਤ ਕਰਮ ਨੇ ਸਾਨੂੰ ਬਿਛੜ ਦਿੱਤਾ ਤੂੰ ਇਹ ਰਾਮ ਕਰਪਾ ਕਰਕੇ ਬੁਲਾ ਲਾ ਕਰਤ ਕਰਮ ਕਰਨ ਵਾਲਾ ਪਾਣੀ ਚ ਨਹੀਂ ਚੱਲਦਾ ਹੁੰਦਾ ਜਿਹੜਾ ਤੁਸੀਂ ਕਮਾ ਲਿਆ ਉਹਨੂੰ ਵੰਡ ਕੇ ਛਕੋ ਤੇਰਾ ਨਾ ਤਾਂ ਵੰਡ ਕੇ ਛਕੜਿਆ ਨਾ ਜੇ ਮਾਇਆ ਕਮਾਇਆ ਮੇਰਾ ਹੋ ਗਿਆ ਨਾ ਉਸੇ ਨੂੰ ਵੰਡ ਕੇ ਛਕੜਾ ਰਹੇ ਨੇ ਇਹ ਤਾਂ ਬੁੱਠੀ ਮਾਰਦਾ ਇਹ ਤਾਂ ਗੁਰਮਤਿ ਖਿਲਾਫ ਹੈ ਇਹ ਇਹ ਦੋ ਨੰਬਰ ਦਾ ਬਣਾਇਆ ਹੋਇਆ ਇਹ ਬੱਤ ਇਹ ਬਣਾ ਯੂਐਸਏ ਦੇ ਡੇਰੇ ਜੀ ਸਾਧ ਆ ਗਏ ਉਹਨਾਂ ਦੀ ਇਹਨਾਂ ਨੂੰ ਕੀ ਪਤਾ ਇਹ ਸਰ ਆ ਪ੍ਰਚਾਰ ਕਰਦੇ ਨੇ ਸਪੋਕਸ ਮੈਨਰ ਉਹਨਾਂ ਨੂੰ ਕੀ ਪਤਾ ਸਾਡਾ ਕੀ ਹੈ ਪਰਚਾ ਸ਼ਬਦ ਦਾ ਪੂਜਾ ਅਕਾਲ ਦੀ ਖਾਲਸੇ ਦਾ ਕੋ ਕਰਤ ਕਰੋ ਬਣ ਸਕੋ ਇਹਦੇ ਵਿੱਚ ਅਕਾਲ ਆਇਆ ਹੀ ਨਹੀਂ ਦੱਸੋ ਗੱਲ ਕਿੱਥੇ ਅਕਾਲ ਕਿਥੇ ਆਇਆ ਜਿੱਦੀ ਆ ਚਰਚਾ ਚੱਲਦੀ ਐ ਜਿੱਦੀ ਚਰਚਾ ਇੱਕ ਗੰਕਾਰ ਸਤਨਾਕ ਕਰਤਾ ਮੇਰ ਪੌਂਡਰ ਅਕਾਲ ਪੁਰ ਤੇ ਜੁਦੀ ਸਾਇਪਕ ਦੀ ਗੱਲ ਕਿੱਥੇ ਰਹਿ ਗਈ ਤੇ ਇਹ ਗੱਲ ਵਿਸੋ ਉਹਦੇ ਚੋਂ ਪੜਿ ਝਕੋ ਜੋ ਪੜਿ ਝਕੋ ਅਰਬੀ ਵਿੱਚ ਕਰਤਕਾਰ ਹੱਥਾਂ ਨਾਲ ਨਾਪ ਜਪਣ ਵਾਲਾ ਨਾਲ ਨਾ ਵਾਲਾ ਨਾ ਨਾਪ ਜਪਣਾ ਸੀ ਨਾ ਆ ਕਰਤਕਾਰ ਨਹੀਂ ਐ ਜਿਹੜੀ ਇਹਨੂੰ ਕਰਤਮੰਦਨ ਹੈ ਇਹ ਕੰਮ ਆ ਕਰਤਨੀ ਹੈ ਹੱਥ ਪੈਰ ਕਰ ਕੰਬ ਸਭ ਕਰਤਕੀਆ ਕਰਦੇ ਸ਼ਬਦ ਵਿਚਾਰ ਇਹ ਆ ਕਲਪਨਾ ਹੈ ਆ ਕਰਤ ਸ਼ਬਦ ਵਿਚਾਰ ਹੈ ਦੋ ਕਿਸਮ ਦੀ ਕਰਤਾ ਇਹ ਦੋਨੇ ਸਰਬੰਦੇ ਲੈਵਲ ਤੇ ਕਰਤਮੰਦ ਲੈਵਲ ਤੇ ਜੇ ਦਾ ਕਲਪਨਾ ਕੀਤੀ ਹੈ ਤਾਂ ਉਹ ਵਿਛੜੂਗਾ ਉਹਦੇ ਨਾਲ ਜੇ ਸ਼ਬਦ ਵਿਚਾਰ ਕੀਤੀ ਹੈ ਕਰਬਦੀ ਕਰਤ ਕੀਆ ਸ਼ਬਦ ਵਿਚਾਰ ਇਹ ਗੁਰਬਾਣੀ ਵਿਚਾਰੀ ਹੈ ਰਿੜਕੀ ਹੈ ਉਹ ਤੁਹਾਨੂੰ ਜ਼ਿਕਰ ਕਰਤ ਕਰਤ ਵਰਤ ਕਰਤ ਧਰਮ ਦੀ ਇਹ ਜੋ ਜਿਹੜਾ ਮੜਿਆ ਉਹਨੂੰ ਮੰਨ ਕੇ ਛਲੜਨੀ ਤਾਂ ਗੱਲ ਬੰਦੇ ਆ ਸੀ ਜੋ ਅਸੀਂ ਖੜ ਰੜਕੇ ਹੈ ਜਿਵੇਂ ਸਮਝਿਆ ਉਹਨੂੰ ਮੰਨ ਕੇ ਸਾਰਿਆਂ ਨੂੰ ਮੰਨ ਲੈਣਾ ਉਹ ਗੱਲ ਤਾਂ ਅਲੱਗ ਹੈ ਪਰ ਉਹਦਾ ਮੰਨਣ ਦੀ ਗੱਲ ਉਹਨਾਂ ਕੋਲ ਤਾਂ ਗੱਲੇ ਨਹੀਂ ਹੈ ਉਹ ਤਾਂ ਵਾਅਲੇ ਕਰਦੀ ਗੱਲ ਕਰਦੇ ਨੇ ਲੰਗਰ ਵਾਹ ਰਹੇ ਉਹਨਾਂ ਦਾ ਇਹ ਸਾਰੇ ਧਰਮ ਤੋਂ ਸਖੜੇ ਨੇ ਲੋਕ ਪਤਾ ਹੀ ਨਹੀਂ ਧਰਮ ਕੀ ਹੁੰਦਾ ਇਹ ਤਾਂ ਵਿਦਵਾਨਾਂ ਦੀ ਆ ਜਿਹੜੇ ਵਿਸਲਾਂ ਵਾਲੇ ਨੇ ਉਹਨਾਂ ਦੀ ਗੱਲ ਹੈ ਇਹ ਵਿਸਲਾਂ ਵਾਲਿਆਂ ਦਾ ਧਰਮ ਬਣਾਇਆ ਹੋਇਆ ਦੋ ਨੰਬਰ ਦਾ ਇਹਦਾ ਦੋ ਨੰਬਰ ਦਾ ਧਰਮ ਦੋ ਨੰਬਰ ਦੇ ਧਰਮ ਦੇ ਵਿਦਵਾਨਾਂ ਕੋ ਪ੍ਰਚਾਰ ਹੈ ਇੱਕ ਨੰਬਰ ਦਾ ਧਰਮ ਹੈ ਆ ਗੁਰਬਾਣੀ ਕੋਈ ਤਾਂ ਦੋ ਨੰਬਰ ਦਾ ਸਾਰਾ ਹੀ ਪੂਜਾ ਅਕਾਲ ਕੀ ਹੈ ਫੇਰ ਅਸੀਂ ਅਕਾਲ ਉਹਦੇ ਜਿਹਦਾ ਪੂਜਾ ਹੀ ਨਿਕਲ ਗਈ ਬਾਣੀ ਸ਼ਕਲਾਂ ਕਰਤਕਾਲੀ ਦਾ ਉਜਪਣਾ ਪੂਜਾ ਕਿੱਥੇ ਆ ਤਾਲਮਾਨ ਅਰਪੂ ਪੂਜੀ ਚੜਾਉ ਵਾਲੀ ਗੱਲ ਕਿੱਥੇ ਗਈ ਪਾਣੀ ਚ ਚੱਲਣ ਵਾਲੀ ਗੱਲ ਉੱਥੇ ਕਿੱਥੇ ਆ ਦੋ ਹੀ ਗੱਲਾਂ ਬੜੀਆਂ ਨੇ ਪਾਣੀ ਚੱਲਣ ਤੇਰਾ ਬਾਣਾ ਮੀਠਾ ਲਾ ਕੇ ਨਾ ਪਦਾਰਥਦਾਨ ਖ ਮੰਗੇ ਨਾਮ ਉਥੇ ਕਿੱਥੇ ਆ ਜਿਹੜਾ ਉਹ ਨਾਮ ਹੈ ਨਾ ਨਾਮ ਜਪਣਾ ਉਹ ਨਾਮ ਜਪਣਾ ਹੀ ਨਹੀਂ ਹੈ ਉਹ ਸਾਰਾ ਨਾਮ ਜਪਣਾ ਜੇ ਸਾਰਾ ਨਾ ਪ੍ਰਚਾਰ ਕੀਤਾ ਹੋਇਆ ਉਹੀ ਹਸਾਲ ਹੁਲ ਕਰਦੇ ਨਾਮ ਜਪਣਾ ਨਹੀਂ ਆਪ ਨਾਮ ਨਹੀਂ ਹੈ ਨਾਮ ਨਾਮ ਦਾ ਗਿਆਨ ਹੁੰਦਾ ਐਸਾ ਗਿਆਨ ਜੱਬੋ ਵਨ ਮੇਰੇ ਗੱਲ ਜਬੋਲ ਕੇ ਮੇਜੋ ਨਾਮ ਕੀ ਹੈ ਗੁਰਬਾਣੀ ਨੂੰ ਸਮਝਣਾ ਨਾਮ ਜਪਣਾ ਸਰ ਜਪਣ ਨਾਲ ਸੋ ਜਾਨਣਾ ਆ ਜਾਂ ਸਮਝਣਾ ਹੁੰਦਾ ਮਾਰ ਕੋਚ ਵੀ ਅਰਥ ਦੇਖੀ ਦਿੱਤੇ ਉਹ ਜਪਣ ਨਾਲ ਤੇ ਜਾਨਣਾ ਆ ਜਾਂ ਸਮਝਣਾ ਹੁੰਦਾ ਰੈਪਿਟੇਸ਼ਨ ਜਪਣਾ ਦਾ ਮਤਲਬ ਨਹੀਂ ਹੈ ਬਾਰ ਬਾਰ ਉਚਾਰਨ ਕਰਨਾ ਗੁਰਬਾਣੀ ਨਹੀਂ ਬਣਦੀ ਉਹ ਤਾਂ ਕਹਿੰਦਾ ਹਰ ਅਟ ਤੂੰ ਤੂੰ ਕਰੇ ਉਹ ਤਾਂ ਹਰ ਤੂੰ ਤੂੰ ਕਰਦਾ ਬਾਰ ਬਾਰ ਇੱਕ ਜਪ ਨੂੰ ਰਟਣਾ ਨਾ ਜਪਣਾ ਨਹੀਂ ਹੈ ਗੁਰਬਾਣੀ ਨਹੀਂ ਬਣਦੀ ਇਹੋ ਇਹ ਕਰਤਾ ਸ਼ਬਦ ਵਿਚਾਰ ਕਰਨਾ ਕਰਤਾ ਹੈ ਇੱਕ ਕਰਤਵਰ ਧਰਮ ਦੀ ਕਰਤਾ ਹੈ ਇੱਕ ਧਰਮ ਦੀ ਕਰਤਾ ਹੈ ਇੱਕ ਅਧਰਮ ਦੀ ਕਰਤਾ ਅਧਰਮ ਦੀ ਕਰਤ ਕੀ ਇਹ ਦੂਜੇ ਹੱਕ ਖੋਲ ਕਲਪਨਾ ਕਰਨੀ ਮੈਨੂੰ ਵੱਧ ਮਾਰੇ ਜਵੇ ਰੱਬ ਨੇ ਆ ਕਿਉਂ ਨਹੀਂ ਕੀਤਾ ਕਿਉਂ ਕਰਤਾ ਇਹ ਅਧਰਮ ਦੀ ਕਰਤਾ ਹੈ ਹੁਕਮ ਦਾ ਵਿਰੋਧ ਕਰਨਾ ਅਧਰਮ ਦੀ ਕਰਤਾ ਹੁਕਮ ਦੇ ਅਨੁਸਾਰ ਚੱਲਣਾ ਅਧਰਮ ਦੀ ਕਰਤਾ ਹੈ ਜੋ ਹੁਕਮ ਨਾ ਹੋਵੇ ਪ੍ਰਵਾਨ ਦਰਗਾਹ ਪ੍ਰਵਾਨ ਹੋਣ ਵਾਸਤੇ ਹੁਕਮ ਨਾ ਪਊਗਾ ਉਹ ਤੇ ਹੁਕਮ ਦੀ ਗੱਲ ਆਪਣੀ ਮਰਜ਼ੀ ਇਹ ਬਣ ਛਕਣਾ ਉਹ ਤੇ ਜਾਤ ਜਨਮ ਨਾ ਕਾਲ ਕਰਮ ਨਾ ਕਰਮ ਧਰਮ ਕਰਮ ਧਰਮ ਕਰਮ ਬਹੀਨ जात जन्म ਨਾ ਕਾਲ ਕਰਮ ਜਾਤ ਜਲਮ ਨਾ ਕਾਲ ਕਰਬ ਨਾ ਉਤੇ ਜਾਤ ਹੈ ਸ਼ਰੀਰ ਹੈ ਨਾ ਉਤੇ ਜਨਮ ਨਾ ਉਤੇ ਕਾਲ ਹੈ ਨਾ ਕਰਮ ਕਰਮ ਤਾਂ ਹੈ ਨਹੀਂ ਉਤੇ ਉੱਡਣੀ ਕਰਤੇ ਬਰਤ ਕਰ ਇਹ ਜਿਹੜੀ ਗਾਇਆ ਕਰਮ ਕਰ ਲੂ ਕਰਤ ਕਰ਼ਨ ਨੂੰ ਆ ਕਰਮ ਘਟਿਆ ਗਿਆ ਕਰਮ ਤਾਂ ਹੈ ਹੋਰੀ ਉਤੇ ਗੁਰਬਾਣੀ ਪਾਣੀ ਜੀ ਚੱਲਣ ਵਾਲਾ ਕਰਤ ਕਰਮ ਹੋਏ ਨੇ ਕੰਮੀ ਹੁੰਦਾ ਜਿਹੜਾ ਪਾਣੀ ਚੱਲਦਾ ਉਹ ਕਰਮ ਕਰਤੇ ਹੋਏ ਨੇ ਕੰਮੀ ਤੇ ਸ ਕੋ ਹੋਤ ਪ੍ਰਾਪਤ ਸਾਮੀ ਇਹ ਕੀ ਜਾਨਨ ਬੂਰਖਾ ਆਦਮੀ ਵੀ ਕੀ ਆ ਗੁਰਬਾਣੀ ਕੀ ਕਹਿੰਦੀ ਤਾਂ ਬੂਰਖ ਨੇ ਸਾਰੇ ਇਹਨਾਂ ਨੂੰ ਕੀ ਬੋਲਾ ਗੁਰਬਾਣੀ ਤੂੰ ਕਦੋਂ ਅਸੀਂ ਉਲਟ ਹੋ ਗਏ ਗੁਰਬਾਣੀ ਕੀ ਕਹਿੰਦੀ ਅਸੀਂ ਕੀ ਕਹਿ ਰਹੇ ਆਪਣਾ ਜੋ ਕਹਿ ਰਹੇ ਨੂੰ ਬੁਲਾਇਆ ਹੀ ਨਹੀਂ ਗੁਰਬਾਣੀ ਨਾਲ ਟੈਲੀਓ ਨਹੀਂ ਕੀਤਾ ਵੀ ਅਸੀਂ ਜੋ ਕਹਿ ਰਹੇ ਠੀਕ ਹੈ ਫਿਰ ਕੰਨ ਸਿੱਖੀ ਕਿ ਕਿ ਤੇ ਸਿੱਖੀ ਦੋੜਾ ਕਾ ਠੀਕਾਲ ਫੜਾਈ ਕੀ ਨੇ ਤੁਹਾਨੂੰ ਸਿੱਖੀ ਬਿੜੀਆ ਨਹੀਂ ਸਾਨੂੰ ਵਰਸੇ ਸਿੱਖੀ ਸਿੱਖੀ ਨੇ ਵਰਸੇ ਚ ਮਿਲੀ ਹੋਈ ਸਿੱਖੀ ਮਿਲੀ ਤੇ ਡੇਰੇ ਉਹਦੇ ਵਿੱਚ ਗੁਰੂ ਗੁਰੂ ਤੋਂ ਲੈਣੀ ਸੀ ਸਿੱਖੀ ਬਾਣੀ ਤੋਂ ਲੈਣੀ ਸੀ ਸਿੱਖੀ ਗੁਰੂ ਦਾ ਰੋਲਾ ਪਾਈ ਜਾਨੂੰ ਗੁਰੂ ਗ੍ਰੰਥ ਇਹਦਾ ਪੁੱਛਿਆ ਲੀ ਕਦੇ ਵੀ ਸਿੱਖੀ ਕੀ ਹੈ ਇਹਦਾ ਪੁੱਛਦੇ ਹੁਣ ਵੀ ਨਹੀਂ ਪੁੱਛਦੇ ਇਹ ਤੋਂ ਇਤੋਂ ਜਿੱਦ ਨੂੰ ਮਰਜ਼ੀ ਲੈ ਕੇ ਤੁਰ ਪੈਦੇ ਨੇ ਥੋੜੀ ਦੇਰ ਤੇ ਨਾ ਵੀ ਇਦੋਂ ਹੁਣ ਰਾਹ ਭਾਈ ਹੁਣ ਕਿੱਧਰ ਨੂੰ ਜਾਣਾ ਹੈ ਪਲਾਨ ਆਪ ਕਰਦੇ ਨੇ ਰਾਹ ਦਾ ਜੇ ਨਗਰ ਕੀਰਤਨ ਜਿਹਨੂੰ ਕਹਿੰਦੇ ਨੇ ਕਰਦੇ ਨੇ ਗੁਰੂ ਤੋਂ ਪੁੱਛ ਕੇ ਕਰਦੇ ਨੇ ਪਲਾਨ ਵੀ ਕਿੱਧਰ ਕਿੱਧਰ ਲੈ ਕੇ ਚੱਲੀਏ ਤੁਹਾਨੂੰ ਫਿਰ ਪਲਾਨ ਤੁਹਾਡਾ ਮਰਜ਼ੀ ਤੁਹਾਡੀ ਹੈ ਗੁਰੂ ਤੋਂ ਪੁੱਛੋ ਵੀ ਕਰ ਅਸੀਂ ਲੈ ਕੇ ਜਾਈਏ ਨਾ ਲੈ ਕੇ ਜਾਈਏ ਗੁਰੂ ਤੋਂ ਪੁੱਛੋ ਕਿਹੜੇ ਰਾਹ ਜਾਣੇ ਕੀਤਾ ਲੋੜੀਏ ਕੰਪ 200 ਰੁਪਏ ਆਖੀਏ ਉਹ ਕਿੱਥੇ ਗਿਆ ਜੇ ਗੁਰੂ ਕਾਹਨਾ ਮੈਨੂੰ ਲੈ ਕੇ ਨਾ ਜਾਓ ਕਿਤੇ ਤਾਂ ਨਾ ਜਾਓ ਜੇ ਕਹਿੰਦੇ ਲੈ ਚੱਲੋ ਫਿਰ ਲੈ ਜਿਓ ਪਹਿਲੇ ਪੁੱਛਦਾ ਲੋਕੀ ਕਹਿੰਦੇ ਕਰਦੇ ਨਾ ਪੈਰ ਪੈਰ ਤੇ ਆਪਣੀ ਵਰਜੀ ਗੱਲਾਂ ਕਰਦੇ ਨੇ ਗੁਰੂ ਦੀ ਬਦਲੋ ਕੀਆ ਮਤਲਬ ਪੈਸੇ ਇਕੱਠੇ ਕਰਨ ਦਾ ਵਧਰ ਦਾ ਪੈਸੇ ਇਕੱਠੇ ਕਰਨ ਦਾ ਪਖੰਡ ਗੁਰੂ ਦਾ ਬੂਰੇ ਰੱਖਿਆ ਹੈ ਤਾਉਗਾ ਨਾ ਧਰਮ ਕਰਮ ਬਹੀਨ ਆ ਧਰਮ ਕਰਮ ਬਹੀਨ ਧਰਮ ਵੀ ਉਹਨੂੰ ਲੋੜ ਹੈ ਸਾਨੂੰ ਧਰਮ ਦੀ ਲੋੜ ਹੈ ਉਹਨੂੰ ਕੋਈ ਧਰਮ ਦੀ ਲੋੜ ਨਹੀਂ ਧਰਮ ਦੀ ਲੋੜ ਕਿਸੇ ਹੱਦ ਤੱਕ ਹੈ ਧਰਮ ਦੀ ਲੋੜ ਹੋ ਤੱਕ ਜੇ ਨਾ ਜੇ ਤੁਸੀਂ ਬੁੱਝਲਤੇ ਨਹੀਂ ਪਹੁੰਚੇ ਜਾ ਬੱਜਲ ਤੇ ਪਹੁੰਚੇ ਫਿਰ ਤੁਰ ਕੇ ਖੂਜ ਨਿਕਲਿਆਗਾ ਕਿੱਥੇ ਜਾਣ ਆਹ ਕਿੱਥੇ ਜਾਣ ਬੱਜਲ ਤੇ ਪਹੁੰਚ ਕੇ ਬਹਿ ਜਾ ਜਾ ਕੇ ਫਿਰ ਟਿਕਣਾ ਹੈ ਟਿਕਣਾ ਜਿੰਨਾ ਚਿਰ ਬੱਜਲ ਨਹੀਂ ਆਉਂਦੀ ਉਹਨਾਂ ਚਿਰ ਟਕਾਉ ਹੈ ਨਹੀਂ ਜਾਂ ਬੱਜਲ ਤੇ ਚਲੇਗੇ ਉੱਤੇ ਟਿਕ ਜਾਣਾ ਠਿਰ ਹੋ ਜਾਣਾ ਠਿਰ ਕਦ ਹੋਊਗਾ ਇਹ ਟਿਕਿਆ ਰ ਠੰਨਾ ਰਹਿਣ ਨਾਰਨ ਫਿਰ ਹੁੰਦਾ ਫਿਰ ਗੁਰੂ ਗੁਰੂ ਥਿਰ ਹੁੰਦਾ ਜਿਹੜਾ ਥਿਰ ਨਹੀਂ ਉਹ ਗੁਰੂ ਨਹੀਂ ਹੈ ਥਿਰ ਨਾਰਣ ਥਿਰ ਗੁਰੂ ਥਿਰ ਸਰੀਆ ਆਕਾਰ ਤੇ ਗੁਰੂ ਦਾ ਥੇਰਾ ਤੁਸੀਂ ਗੁਰੂ ਨੂੰ ਲਈ ਫਿਰਦੇ ਹੋ ਭਜੇ ਉਹਨੂੰ ਥੇਰ ਰਹਿਣ ਦਾ ਕਰਾਮ ਆਪ ਆਪ ਦੇਖੋ ਉਹ ਆਪਣਾ ਬੰਦੀ ਨੇ ਟਿਕਦਾ ਜਗਲ ਗੁਰੂ ਨੂੰ ਜਿੰਦ ਨਾਲੇ ਮਾਨ ਕਮੈਂਡ ਕੇ ਭੁੱਖ ਮਾਇ ਦੀ ਨਾ ਉਹ ਟਿਕਣ ਦੀ ਭੁੱਖ ਨਹੀਂ ਟਿਕਣ ਮਾਇਆ ਨੂੰ ਛੱਡ ਕੇ ਟਿਕੂਗਾ ਦੀ ਭੁੱਖ ਤਿਆਗ ਕੇ ਮਨ ਟਿਕੂਗਾ ਗੁਰੂ ਦਾ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਤਾਂ ਸਾਨੂੰ ਹੈ ਤੀਰਥ ਯਾਤਰਨਾ ਦੇਵ ਪੂਜਾ ਗੋਰ ਕੇ ਨਾ ਅਧੀਨ ਤੀਰਥਾਂ ਨਾ ਕੋ ਤੀਰਤਾ ਨਾ ਕੋ ਯਾਤਰਾ ਨਾ ਦੇਵ ਪੂਜਾ ਨਾ ਕੋ ਦੇਵ ਪੂਜਾ ਨਾ ਕਰੇ ਮੜੀ ਗੋਰ ਦੇ ਦੀਰ ਨਾ ਅਧੀਨ ਅਗ ਗੋਰਾ ਪੂਜਦੇ ਨੇ ਨਾ ਬਾਹਰ ਦੇ ਵਿੱਚ ਨਾ ਕੋ ਯੋਦੇ ਦੀਰ ਔਰੀ ਉੱਥੇ ਬੈਠਾ ਆਤਮਾ ਨੇ ਉੱਥੇ ਬੈਠੀ ਹੁੰਦੀ ਗੋਰ ਦੇ ਵਿੱਚ ਜੇ ਤੁਸੀਂ ਇਹੋ ਦੀ ਗੌਰ ਬਣਾ ਲਈ ਆਤਮਾ ਨਹੀਂ ਉੱਥੇ ਨਾਲ ਤੇ ਕੀ ਕਰਨਾ ਬੈਠੇ ਸੰਬੰਧਿਤ ਨਹੀਂ ਤੀਰਥ ਯਾਤਰਾ ਗੌਰ ਪੂਜਾ ਵਗੈਰਾ ਇਹ ਤਾਂ ਧਰਮ ਦੇ ਅਧੀਨ ਤੇ ਧਰਮ ਹੈ ਹੀ ਨਹੀਂ ਤਾਂ ਇਹ ਚੀਜ਼ ਆਉਣੀ ਦੌਰ ਦੀ ਦੌਰ ਹੂ ਸਰਬ ਸਤਪਤਾਲ ਕੇ ਤਰ ਜਾਨੀਏ ਜਿਹੇ ਜੋਤ ਜਿਹਦੀ ਜੋਤ ਸਾਰਿਆਂ ਦੇ ਵਿੱਚ ਸਤੈ ਪਤਾਲਾਂ ਦੇ ਵਿੱਚ ਥੱਲੇ ਜਾਏ ਪਾਣੀ ਦੇ ਵਿੱਚ ਜਿਹੜੇ ਜੀਵ ਉਹਨਾਂ ਦੇ ਵਿੱਚ ਵੀ ਜੋਤ ਹੈ ਸਭ ਘੁੰਦੇ ਰਹੇ ਉਹਨਾਂ ਚ ਕੀੜਿਆਂ ਦੇ ਉਹਨਾਂ ਜੋਤ ਹੈ ਸਰਬ ਸਤਪਤਾਲ ਦੇ ਵਿੱਚ ਜੋਤ ਹੈ ਉਹਦੀ ਜਿੱਥੇ ਉਹਨੂੰ ਤੁਸੀਂ ਕਿੱਥੇ ਮੰਨੋਗੇ ਕਿੱਥੋਂ ਲਿਬੋਗੇ कैसे बड़े चले लप लोगे कैसे खा जगह पे जाके लप लोगे हजूर साहब जाके लप लोगे होता सी जगह दा दर्शन कर जाने आवे इथे आए सी आ गल सी इथे हस्ती ओ चले जादर लपड़नो तो कुछ नहीं है लपड़नो तो कुर्बानी बन के है ओ जाए ओथे जाके मान लो जाए इथे बैठ के बोल लो ਗੁਰਬਾਨੀ ਬੰਦੇ ਤੇ ਬਿਨਾ ਕੁਛ ਨਹੀਂ ਪ੍ਰਾਪਤੀ ਹਣੀ ਸਾਰ ਸਪੱਟਾ ਕਰਿਓ ਕਿਤੇ ਕਰਿਓ ਸਾਰ ਸਪੱਟਾ ਕਰਕੇ ਦੇਖਿਆ ਹੋਇਸਤੀ ਹੈ ਇਤਹਾਸ ਪੜ ਕੇ ਕੀ ਫਾਇਦਾ ਬਾਣੀ ਬਣ ਕੇ ਫਾਇਦਾ ਇਤਹਾਸ ਬਣ ਕੇ ਕੋਈ ਫਾਇਦਾ ਨਹੀਂ ਹੁੰਦਾ ਇਤਹਾਸ ਸਾਰਾ ਪੜ ਕੇ ਆਦ ਕਰਕੇ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਸੇਸ਼ਨਾਮ ਸੰਸਰ ਹੈ ਨੇਤਪੂਰਨ ਹੋਤ ਸੇਸ਼ਨਾਮ ਸੰਸਰ ਫੜਨ ਨਾ ਸੰਸਰ ਫੜਨ ਉਹ ਜਿਹੜੇ ਕਰਦੇ ਨੇ ਨਾ ਲੋਕ ਰਟਣ ਜੋਗ ਉਹ ਸਭ ਨੂੰ ਸਾਰੇ ਸੰਸਰ ਫੜ ਉਹ ਥੱਲੇ ਬੈਠੇ ਨਾ ਨੇਤਪੂਰਨ ਹੋਤ ਉਹ ਸਭ ਮਾਇਆ ਧਾਰੀ ਨੇ ਮਾਇਆ ਹੁੰਦਾ ਸਭ ਇਹ ਸਾਰੇ ਮਾਇਆ ਨੇ ਇਹਨਾਂ ਨੇ بڑے بڑے ਜੜੇ ਨੇ ਸੋਨੇ ਦੀਆਂ ਮੂਰਤੀਆਂ ਬਜਲਾ ਕੇ ਹੀਰੇ ਜਿਹੜੇ ਬਣਾਏ ਤੇ ਮੂਰਤੀਲ ਸੋਹਰਾ ਦੇ ਬੰਦਜ ਬਣਾਈ ਸੀ ਮੂਰਤੀ ਬਣਾਈ ਸੀ ਨਾ ਕੋਈ ਨੂ ਹੀਰਾ ਲਾ ਕੇ ਇਹ ਮਾਇਆ ਧਾਰੀਆਂ ਨੇ ਬਣਾਈ ਤੀ ਇਹਨਾਂ ਨੂੰ ਤਾਂ ਇਹ ਨਾ ਬੁਰਾ ਕਹਿੰਦੀ ਐ ਗੁਰਬਾਣੀ ਇਹ ਲੋਕਾਂ ਦੀ ਬੁਰਕੀ ਬੂਝੋ ਖੋ ਕੇ ਨਾ ਇਹ ਜੇ ਊਟ ਪਟਾਂਖੀ ਜਾਂਦੇ ਪੈਸਾ ਲਈ ਜਾਂਦੇ ਭਗਤਾਂ ਨੇ ਇਹ ਕੰਮ ਕੀਤਾ ਹੈਗਾ ਗਰੀਬ ਲੋਕਾਂ ਤੋਂ ਖੋ ਕੇ ਸੋਨਾ ਜੇ ਅਭੀ ਰਾਣਾ ਤੁਹਾਨੂੰ ਦੇ ਵੀ ਦਿੱਤਾ ਬੱਲੋ ਤੁਸੀਂ ਗਰੀਬਾਂ ਨੂੰ ਦੇ ਦਿਓ ਦਾਨ ਕਰ ਦਿਓ ਪੈਸਾ ਉਹਨੂੰ ਵੇਚ ਕੇ ਲੰਗਰ ਲਾ ਦਿਓ ਕੋਈ ਉਹਨਾਂ ਦਾ ਸਵਾਰ ਦਿਓ ਗਰੀਬਾਂ ਦਾ ਮੈਨੂੰ ਇਹ ਦੱਸੋ ਵੀ ਮੰਦਿਰ ਬਣਾ ਕੇ ਲਾਭ ਕੀ ਹੈ ਉਹਨਾਂ ਦਾ ਤੁਹਾਡੇ ਨਾਲ ਤਾਂ ਗਵਰਨਮੈਂਟ ਵੀ ਬਾੜੀ ਹੈ ਗਵਰਨਮੈਂਟ ਦੇ ਬੰਦੇ ਬੁਰੇ ਤੁਸੀਂ ਵੀ ਕਹਿੰਦੇ ਲੋਕ ਵੀ ਕਹਿੰਦੇ ਨੇ ਉਹ ਜੰਗੇ ਨੇ ਉਹ ਗਰੀਬਾਂ ਦਾ ਕੋਸਣਾ ਕੋਸਤਾ ਕਰੀ ਜਾਂਦੇ ਨੇ ਉਹ ਭੁਕੇ ਵਰਦੇ ਨੇ ਕਿਤੇ ਹੱਲ ਭੇਜਦਾ ਕਿਤੇ ਕੁਸ਼ਤਾ ਕਰਦੇ ਹੀ ਨੇ ਉਹ ਤੁਸੀਂ ਦੱਸੋ ਕੀ ਕਰਦੇ ਹੋ ਪੈਸਾ ਉਹਨੇ ਇਕੱਠਾ ਕਰਕੇ ਕਿਥੋਂ ਬਲੌਕ ਕਰਕੇ ਰੱਖਦੇ ਨੇ ਇਹ ਬਲੌਕਰ ਵਾਲੀ ਚੀਜ਼ ਹੈ ਪੈਸਾ ਇਹਦਾ ਸਰਕਲ ਚੱਲਦਾ ਰਹੇ ਪਬਲਿਕ ਹੈ ਪੈਡੀ ਪਬਲਿਕ ਐਨੀ ਦੁਖੀ ਹੈ ਤੁਸੀਂ ਅਰਬਾਂ ਖਰਬਾਂ ਰੁਪਏ ਲਾਇਆ ਨੂੰ ਬੇਸਤ ਕਰੀ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਅਸੀਂ ਤਾਂ ਤਾਰੇ ਬਤਾ ਹੋਦਾ ਹੈ ਜੋ ਪਬਲਕ ਹੈ ਜਿਹਦੇ ਵਿੱਚ ਆਤਮਾ ਹੈ ਉਹਦੀ ਅਛਾ ਕਰੇ ਕੋਈ ਉਹਦੇ ਵਾਸਤੇ ਕੁਝ ਕਰੇ ਤੁਨੂੰ ਆਤਮਾ ਕੋਈ ਕੁਝ ਨਹੀਂ ਕਹਿੰਦੀ ਤੁਹਾਡੀ ਆਤਮਾ ਬਿਲਕੁਲ ਨਹੀਂ ਪਛੀਦਦੀ ਇਹ ਦੇਖ ਕੇ ਸਭ ਕੁਝ ਫਿਰ ਤਾਂ ਤੁਸੀਂ ਦਿਲਦਈ ਫਿਰ ਕੌਣ ਕਹਿਆ ਤੁਹਾਡੇ ਦਿਆ ਇਹ ਤਾਂ ਟੈਸਟ ਹੈ ਤੁਹਾਡਾ ਤੁਹਾਨੂੰ ਦੇਖ ਕੇ ਦੇਖਿਆ ਰਾਜੇ ਨੂੰ ਰਾਜ ਦੇਖੇ ਦੇਖ ਰਹੇ ਹੋ ਵੀ ਰਾਜਾ ਕੀ ਕਰਦਾ ਹੈ ਰਾਜ ਮਿਲਦਾ ਤਬ ਕੀਤਾ ਤੁਹਾਨੂੰ ਬੜ ਬੜੀਆਂ ਇਹ ਸਰਦਾਰੀਆਂ ਮਿਲੀਆਂ ਨੇ ਬੜ ਬੜੇ ਤੁਹਾਨੂੰ ਉਹਦੇ ਮਿਲੇ ਨੇ ਪੁਜਾਰੀ ਬਣਾ ਦੇ ਹੱਕ ਮਿਲੇ ਨੇ ਅਰਬਾਂ ਖਰਬਾਂ ਰੁਪਏ ਮਿਲੇ ਨੇ ਤੁਸੀਂ ਇਹ ਰੁਪਏ ਦਾ ਇਸਤੇਮਾਲ ਕਿੱਥੇ ਕਰਦੇ ਹੋ ਜੇ ਇਸ ਠੀਕ ਨਾ ਕੀਤਾ ਨਰਕ ਤਿਆਰ ਨੇ ਯਾਦ ਰੱਖਿਓ ਸਾਰੇ ਇਹ ਥੋੜੇ ਨਾ ਸਰਕਾਰ ਦੇ ਬੰਦੇ ਥੋੜੇ ਨਾ ਚੰਗੇ ਨੇ ਚਾਹੇ ਬੁਰੇ ਕੱਢੀ ਨੇ ਉਹ ਬੁਰੇ ਕਿੰਨੇ ਨੇ ਪਰ ਥੋੜੇ ਨਾ ਫਿਰ ਚੰਗੇ ਨੇ ਵੋਟਾਂ ਕਰਦੇ ਰਿਹਾ। ਕੋਈ ਤਾਂ ਉਹ ਨਹੀਂ ਕਰਦੇ। ਪਬਲਿਕ 'ਚ ਰਹਿੰਦੇ ਨੇ, ਪਬਲਿਕ 'ਚ ਵਿਚਰਦੇ। ਜੇ ਨਹੀਂ ਕਰਦੇ ਪਬਲਿਕ ਬੁੱਧੇ ਮਾਰ ਦਿੰਦੀ ਇਹਨਾਂ ਨੂੰ। ਵੋਟਾਂ ਅਗਲੇ ਚਾਹੇ ਡਰ ਕਰਦੇ ਨੇ ਜਾਂ ਕਿਵੇਂ ਕਰਦੇ ਨੇ। ਕਰਦੇ ਤਾਂ ਹਰ ਨੂੰ ਕੁਛ। ਨਾਲੇ ਬਹੁਤ ਕੋਈ ਨਹੀਂ ਖਿੰਦਾ ਇਹਨਾਂ ਨੂੰ ਕਹਿੰਦਾ ਚਾਹੇ। ਆਪ ਵੀ ਕਹਿੰਦਾ ਨੇ ਵੀ ਸਾਥ ਬਹੁਤ ਗੱਦੀ ਆ ਸੀ, ਠੀਕ ਨਹੀਂ ਹੈਗੇ। ਤੁਸੀਂ एवरीवन ਬੰਦੇ ਤੇ ਨਾ ਨਾ ਬਈ ਬੜੇ ਤੂੰ ਸੀ ਇਹਨਾਂ ਨੂੰ ਸੇਹ ਦੇ ਦੀ ਸੀ ਸੇਹ ਤੁਸੀਂ ਕੀ ਦਬੋ ਸਵਾਦ ਬੋ ਸੇਹ ਜੇ ਤੁਸੀਂ ਆਪੇ ਠੀਕ ਨਹੀਂ ਹੈ ਤੇ ਤੁਹਾਡੀ ਤਾਂ ਸੇਹ ਕਿਉਂ ਨਹੀਂ ਦੇ ਦੇ ਆਪਣੇ ਦਰਬ ਚੁਗੇ ਰਹੀ ਤਾਰੀ ਸਿੱਦਤ ਸੇਹ ਤਾਂ ਉਹ ਦਵਨ ਹਾਂ ਸੇਹ ਤਾਂ ਨਾਨਕ ਦੇ ਸਕਦਾ ਨਾ ਰਾਜੇ ਸੀ ਬਕਦਮ ਕੁੱਤੇ ਕੌਣ ਕਹੂਗਾ ਜਿਹਦੇ ਬੱਲੇ ਪਾਈਆ ਆਟਾ ਨਹੀਂ ਹੋਊਗਾ ਜੇ ਇਦੋਂ ਤੇ ਜਾਂਦਾ ਤੁਰ ਕੇ ਪੈਦਲ ਪਾਈਆ ਆਟਾ ਵੱਢ ਕੇ ਨਹੀਂ ਲੈ ਕੇ ਜਾਂਦਾ ਉਥੋਂ ਵੀ ਰਾਜ ਮੈਂ ਭੁੱਖਾ ਹੂੰ ਕਿੱਥੇ ਜੇ ਰਾਜ ਭੁੱਖ ਲੱਗਿਆ ਖਾਊਗਾ بڑے بڑے ਤਨਾਲ ਆਦਮੀ ਬੂਝਦੇ ਪਰ ਪਾਈਆ ਆਟਾ ਨਹੀਂ ਵੱਢ ਕੇ ਲੈ ਕੇ ਜਾਂਦਾ ਨਾ ਖਾਣ ਕਹਿੰਦਾ ਜਹਾਂ ਦਾਣਾ ਤਹਾਂ ਖਾਣ ਨਾਨਕਾ ਸੱਚੇ ਜਿੱਤੇ ਗੁਰੂ ਲਿਖੇ ਦਾਣੇ ਉਹ ਪੈਣਗਾ ਖਲਾਂਗੇ ਨਾ ਕਨਾਥਾ ਹਸਮਾ ਹਦ ਕਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣ ਅੱਗੇ ਦਾਣੇ ਪਏ ਨੇ ਮੇਰੇ ਉਹੀ ਖਾਣੇ ਨੂੰ ਜਾ ਕੇ ਤੁਸੀਂ ਰੱਖੋ ਆਪਣੇ ਉਰ ਉਹ ਕਹਿ ਸਕਦਾ ਹੋ ਨਹੀਂ ਕੋਈ ਕਹਿ ਸਕਦਾ ਇਹਨੇ ਸੈਗਲੇ ਕੋਟਲ ਸੋਨਾ ਰਖਿਆ ਬਿਨਾ ਜਮਾ ਕਰਕੇ ਹੀਰੇ ਜਵਾਹਰਾਤ ਉਹ ਨਹੀਂ ਕਰ ਸਕਦਾ ਉਹ ਕਿ ਬੋਲੂਗਾ ਇਹ ਅਪਰਾਧ ਤਰਫ ਨੋਤੇ ਜਿਕੇ ਨਹੀਂ ਹੈ ਲੋ ਤਾਪਰਾਧ ਸੇਸ਼ਨਾਮ ਤੇ ਬਹਿ ਨੇਤ ਪੂਰਨ ਹੋਤ ਜੇ ਬਹਰਲੇ ਨੋ ਜਪਣ ਲੱਗੀ ਹੈ ਨਾ ਆਪਾਂ ਕਿੱਕ ਲੈ ਕੇ ਰੋਟਣ ਲੱਗੀ ਹੈ ਮੁੱਕਦੇ ਹੀ ਨਹੀਂ ਕਹਿੰਦਾ ਸੇਸ਼ਨਾਗ ਜਪਦਾ ਰਾਂ ਉਥੇ ਜੇ ਛੇਸ਼ ਨਾਗ ਜਦਦਾਈ ਜਪਰਾ ਮੁਕੇ ਨੇ ਉਹਨੂੰ ਪ੍ਰਾਪਤੀ ਕੀ ਹੋਈਏ ਦੱਸੋ ਪਹਿਲਾਂ ਛੇਸ਼ ਨੂੰ ਧਰਤੀ ਦਾ ਬੋਝ ਸਰਤੇ ਲਈ ਖੜਾ ਉਹ ਗੱਲ ਕੁਝ ਹੋਰ ਕਹੀ ਸਮਝ ਹੋਰ ਲਈ ਤੁਸੀਂ ਕੱਲ ਇਹ ਕਹੀ ਜੀ ਵੀ ਜੇ ਇਦਾਂ ਤੁਸੀਂ ਨਾਮ ਜਪੋਗੇ ਨਾ ਜਾਂ ਮਹੇਸ਼ੇਸ਼ ਨਾਗ ਜਪਦੇ ਮੂੰਹ ਨਾ ਉਚਾਰਨ ਕਰੋਗੇ ਚਾਹੇ ਕੱਲਾ-ਕੱਲਾ ਲਾਉਂ ਜਪੀ ਜੋ ਫਲ ਕੁਛ ਵੀ ਨਹੀਂ ਧਰਤੀ ਦਾ ਬੋਝ ਉਦੋਂ ਹੀ ਸਰਤੇ ਮੁਕੇ ਆਲੀ ਜਿੰਨਾ ਜਰ ਜਪਦੇ ਰਹੋਗੇ ਧਰਤੀ ਦਾ ਬੋਝ ਸਰਤੇ ਰਹੂਗਾ ਉਬ ਮੋ ਪਰ ਮੈਂ ਭਾਰ ਸਿਰ ਤੇ ਹੀ ਰਹੂਗਾ ਕੋਈ ਫੜ ਲਈ ਹੈ ਉਹਨੂੰ ਫੜ ਲਈ ਮੈਂ ਤੁਹਾਨੂੰ ਤੁਹਾਡੇ ਤੱਕ ਜੀਵ ਹੈ ਗੱਲ ਕੁਝ ਹੋਰ ਕਹੀ ਦੀ ਸਮਝ ਹੋਰ ਲਈ ਫਿਰ ਵੀ ਅਕਲ ਨਹੀਂ ਤੁਹਾਨੂੰ ਇਹ ਕਹੇ ਤੇ ਫਿਰ ਮੜਾ ਫੜ ਕੇ ਜੇ ਵੀ ਜਨਗ ਦੇ 1000 ਜੀਵ ਹੈ 1000 ਜੀਵ ਨਾਲ ਇਕੱਠਾ 1000 10000 ਜੀਵ 10000 ਨੂੰ ਇੱਕੋ ਵਾਰ ਲੈਣ ਤੁਸੀਂ ਇੱਕ ਲੈ ਉਹਨਾਂ ਨੇ ਕੁਝ ਵੜਿਆ ਤੁਹਾਨੂੰ ਕੀ ਬਲੂ ਇਹ ਦੇਖਣੀ ਸੀ ਇਹ ਪੱਖ ਦੇਖਣਾ ਸੀ ਗੱਲ ਵਿਚਾਰ ਨਹੀਂ ਸੀ ਇਹ ਬਜਾਅ ਦੇ ਤਾਂ ਤਾਜੇ ਖਾਲੇ ਜਗਲ ਹੁੰਦੀ ਅਕਲ ਨਾਲ ਦਾ ਤਾਲਾ ਬੰਦ ਹੈ ਵਿਚਾਰ ਦਾ ਕੋਈ ਸੁਣ ਕੇ ਕਹਾਣੀ ਸੁਣਾ ਦਿੰਦੇ ਨੇ ਸੇਦਨਾ ਦੀ ਕਹਾਣੀ ਸੁਣਾਉਂਦੇ ਨੇ ਕਰਦੇ ਹੋਈ ਕਬਨੇ ਸੇਦਨਾ ਗੜੀ ਕਹਾਣੀ ਵਿਸਣਾਈ ਜਾਂਦੇ ਨੇ ਉਹ ਨੂੰ ਨਹੀਂ ਭੜਾ ਹੋਇਆ ਤੁਹਾਨੂੰ ਭੜਕੀ ਹੋਊਗਾ ਇਸ ਕਾ ਕੇ ਨਾਮ ਇਹ ਦੇਈ ਹੁੰਦਾ ਨਾਮ ਕੁਛ ਹੋਰ ਹੈ ਜਿਹੜਾ ਨਾਮ ਬਲਿਆ ਉਹਨੇ ਗੱਲ ਲਿਖਿਆ ਉਹਨੇ ਦੱਸਿਆ ਐ ਨਾਮ ਮਿਲਦਾ ਨਾਮ ਆਹ ਹੁੰਦਾ ਜਿਹਨੂੰ ਮਿਲ ਜਾਂਦਾ ਉਹਦੀ ਵਿਵਸਥਾ ਆਹ ਹੋ ਜਾਂਦੀ ਹੈ ਉਹ ਤਾਂ ਗੁਰਬਾਣੀ ਦੱਸਿਆ ਹੈ ਇਹ ਮੱਥਾ ਟੇਕੀ ਜਾਂਦੇ ਉਹਨੂੰ ਮੱਥਾ ਟੇਕਣੂ ਹੈ ਏ ਸਮਝਣ ਵਾਸਤੇ ਐ ਕਬੂੜ ਵਾਸਤੇ ਬਥਾ ਡੇਕਣ ਵਾਸਤੇ ਨਹੀਂ ਖਾਲੀ ਪਤਾ ਡੇਕਣਾ ਮਾੜਾ ਨਹੀਂ ਹੈ ਪਰ ਬਥਾ ਡੇਕਣਾ ਅਪਰਾਧ ਵੀ ਹੈ ਜਬ ਲੋ ਦੀ ਖਾਲੀ ਬਥਾ ਡੇਕ ਕੇ ਬਨੋ ਬਨਣਾ ਅਪਰਾਧ ਵੀ ਹੈ ਸੇ ਸੁਣਵਾਇਆ ਕਾਥੀ ਹੈ ਜੇ ਰਦੇ ਸੁਧਾ ਜਾਏ ਸੁਧ ਹਿਰਦਾਰੀਆਂ ਹੈ ਤੁਹਾਡਾ ਫਿਰ ਬੁਨਣੀ ਦਾ ਸੀ ਹੈ ਨਹੀਂ ਬਥਾ ਡੇਕ ਦੇਣ ਯਾ ਭਰਾ ਸੋਧ ਸੋਧ ਹਟੇ ਸਵੇ ਸੁਰ ਬਿਰੋਧ ਦਾਨਵ ਸਰਬ ਸੋਧਿਆ ਬਹੁਤ ਹੈ ਦੇਵਤਿਆਂ ਨੇ ਵੀ ਕੀ ਕਰੀਏ ਕੀ ਨਾ ਕਰੀਏ ਸੋਧਰ ਹੈ ਨਾ ਤਰ ਤਰਜੋ ਜਾਂ ਪ੍ਰਾਪਤੀ ਨਹੀਂ ਹੁੰਦੀ ਦੇਵਤੇ ਸੋਧ ਬਧੇਰੀ ਕਰਦੇ ਰਹਿੰਦੇ ਨੇ ਐਡੀ ਬਤਾਂ ਤਾਂ ਹੀ ਹੋ ਗਈ ਉਹ ਨੂੰ ਸੋਧਣਾ ਵੱਧ ਗਈ ਮਰਿਆਦਾ ਸੋਧ ਦੇ ਨੇ ਹੋਰ ਬੰਦ ਸੋਧਦੇ ਰਹੇ ਮਰਿਆਦਾ ਬਦਲੀ ਜਾਂਦੇ ਉਧਰ ਜੇ ਬੇ ਬਦਲੀ ਜਾਂਦੇ ਨੇ ਕਦੇ ਕੈਲੰਡਰ ਬਦਲ ਲਿਆ ਕਦੇ ਸੋਧ ਕਰ ਲੀ ਕਦੇ ਕੁਛ ਕਰ ਲਿਆ ਜਿਵੇਂ ਲੱਗੇ ਨੇ ਇਹ ਵੀ ਜੋ ਲੱਗੇ ਰਹਿੰਦੇ ਤੇ ਇਹ ਵੀ ਦੇਵਤਿਆਂ ਨਾਲ ਯੋਗ ਲੈਣਾ ਕੋਲ ਵਿਦਵਾਨਾਂ ਕੋਲ ਹੋਰ ਕੁਛ ਨਹੀਂ ਤਾਂ ਚੰਡੀ ਦੇ ਬਾਹਰ ਲੋਏ ਦਿਖਾਏ ਨੇ ਕੋਟੇ ਨਾ ਤੇ ਫੇਦੀ ਹੁੰਦੀ ਹੈ ਰਾਖੇ ਜੇ ਜਿੱਦਣ ਇਹਨਾਂ ਨੂੰ ਪੈ ਗਏ ਸਾਰੇ ਹੀ ਹਾਰ ਜਾਂਦੇ ਇਹਨਾਂ ਕੋ ਕੁਛ ਵੀ ਨਹੀਂ ਹੈ ਕਿਸੇ ਕੱਲ ਦਾ ਜਵਾਬ ਨਹੀਂ ਇਹਨਾਂ ਨੂੰ ਕੁਰਬਾਨੀ ਦਾ ਕੋਈ ਸਵਾਲ ਕਰਦੋ ਕਿਸੇ ਕੋਈ ਨਹੀਂ ਇਹਨਾਂ ਕੋ ਜਿਹੜੇ ਕਲੰਡਰ ਦਾ ਰੋਲਾ ਪਾਉਂਦੇ ਨੇ ਜੇ ਨਾ ਨੂੰ ਨਾਮ ਕਾਇਦਵੇ ਨਾਮ ਕੀ ਹੁੰਦਾ ਸਮਝਾ ਦਿਓ ਜਾਂ ਛੁੱਟਣ ਦੀ ਵਿਧੀ ਕੀ ਹੈ ਕੀ ਹੈ ਸਮਝਾ ਦਿਓ ਜੇ ਬੰਦਾ ਦੱਸ ਦਵੇ ਤਾਂ ਕਹ ਦੇ ਇਹ ਹੀ ਕੁਰਬਾਨੀ ਜੋ ਹੋਇਆ ਹੈ ਕੀ ਇਹ ਹੋਰ ਤਾਂ ਕੁਝ ਨਹੀਂ ਹੈ ਉਹ ਜੋਰ ਜੋਰ ਕੇ ਧੱਕ ਕੇ ਦਾ ਵਿਰੋਧ ਕਰ ਕਰ ਕੇ ਥੱਕ ਗਏ ਉਹ ਵਿਰੋਧ ਕਰਦੇ ਰਹਿਣੇ ਰੇ ਗੱਲ ਦਾ ਜਿਹੜਾ ਨਵਾਂ ਕੁਝ ਕਰਦੇ ਤਾਂ ਉਹ ਦਾ ਵਿਰੋਧ ਕਰਦੇ ਸੀ ਜਿਵੇਂ ਇੱਕ ਪਾਸੇ ਤਾਂ 10000 ਰਾਂ ਦੇ ਹੱਕਾਲੇ ਨੇ ਗਿਆਨ ਦੀ ਜਿਹਨਾਂ ਨੂੰ ਹੈ ਉਹ ਅੱਜ ਬਿਆਨ ਕੁਝ ਦੇ ਦੇਣ ਕੱਲ ਨੂੰ ਕੁਝ ਦੇ ਦੇਣ ਸੋਧ ਕੇ ਵਿਰੋਧ ਕਰਨ ਵਾਲੇ ਵਿਰੋਧ ਕਰੀ ਜਾਂਦੇ ਨੇ ਉਹ ਸੋਧ ਕਰਨ ਵਾਲੇ ਸੋਧ ਕਰੀ ਜਾਂਦੇ ਨੇ ਦੋਏ ਥੱਕ ਜਾਣਗੇ ਦੋਹਾਂ ਨੂੰ ਨਹੀਂ ਪਤਾ ਗੱਲਦ ਕੀ ਹੈ ਐ ਗੱਲ ਹੈ ਸੋਧ ਕਰਕੇ ਸੋਧ ਕਰਕੇ ਉਹ ਆਪਣੇ ਬਿਆਨ ਚ ਸੋਧ ਕਰੀ ਜਾਣਗੇ ਜਿਵੇਂ ਹੁਣ ਉਹਨਾਂ ਨੇ ਕਹੇ ਖਾਲਸੇ ਵਾਸਤੇ 10 ਵਰੰਤ ਸਿੱਖਾਂ ਵਾਸਤੇ ਆਦ ਸੋਧ ਕੀਤੀ ਹੈ ਨਾ ਐ ਉਹ ਸੋਧ ਕਰੀ ਜਾਣਗੇ ਵਿਰੋਧ ਵਾਲੇ ਵਿਰੋਧ ਕਰੀ ਜਾਣਗੇ ਤਾਂ ਘਤ ਹੋਏ ਜਾਣਗੇ ਬਜਾਣਾ ਬਤੀਜਾ ਫਾਇਦਾ ਹੋ ساری ਗੱਲ ਜਦ ਉਹ ਬੋਲੂਗਾ ਫਿਰ ਜਿਹੜੇ ਸੋਧ ਵਾਲੇ ਨੇ ਉਹ ਤਾਂ ਖੁਸ਼ ਹੋਣਗੇ ਹਾਲਾਂਕਿ ਉਹਨਾਂ ਦੇ ਵੀ ਕੋਈ ਕਈ ਗੱਲਾਂ ਜਾਣਗੇ ਵੀ ਭਾਈ ਇਹਨਾਂ ਨੂੰ ਪਤਾ ਨਹੀਂ ਸੀਗੇ ਵੀ ਇਹ ਜੇ ਨਹੀਂ ਥੋੜੇ ਵਰਗੇ ਹੀ ਪਰ ਉਹ ਖੁਸ਼ ਹੋਣਗੇ ਕੋਣਾਂ ਨੇ ਬ੍ਰੋਧ ਨਹੀਂ ਨ ਕੀਤਾ ਸੋਤਾ ਕਰਦੇ ਰਹੇ ਨਾ ਬ੍ਰੋਧ ਤਾਂ ਨਹੀਂ ਨ ਕੀਤਾ ਬ੍ਰੋਧਾਣੇ ਜਿਹੜੇ ਨੇ ਉਹ ਬਿਸ਼ਰਮ ਗਰੀ ਦੇ ਮਾਰੇ ਆ ਮੰਨ ਲਿਆ ਭਾਜੀ ਆਣ ਇਹ ਤਾਂ ਮੰਨਣਾ ਪਊਗਾ ਬਰਨਣਾ ਪਊ ਉਹਨਾਂ ਨੂੰ ਉਹਦੀ ਸੌ ਹੋ ਜੂਗੀ ਇਹਨਾਂ ਦੇ ਤਾਂ ਹੋਣਗੇ ਕੋਲੇ ਬੰਨੜ ਵਾਲਿਆਂ ਦੇ ਕੋਲੇ ਨਾ ਮੰਨ ਰਵਾਂ ਦੀ ਸੌ ਜਿਹੜੇ ਤਾਂ ਮੰਨਦੇ ਨੇ ਤਾਂ ਦੇ ਕੋਲੇ ਰਹਿ ਜਾਣਗੇ ਦੁਨੀਆਂ ਦੇ ਸੌ ਰਾਜ ਫਿਰ ਵੀ ਕੋਲੇ ਨਹੀਂ ਕਰਨਾ ਜਿਆਦਾ ਕੋਲੇ ਬਣਾ ਗਰਭ ਤਾਂ ਕੋਈ ਚੀਜ਼ ਕੋਲੇ ਹੀ ਕਰ ਸਕਦੇ ਨੇ ਸੌਣੇ ਦਾ ਕੁਝ ਨਹੀਂ ਕਰਨਾ ਇਸ ਕਰਕੇ ਰਾਜ ਦੇਵਤਿਆਂ ਨੂੰ ਮਿਲਦਾ ਹੁੰਦਾ ਬਾਅਦ ਕਿ ਕੋਲੇ ਹੁੰਦੇ ਨੇ ਨਾ ਕੋਲੇ ਹੁੰਦੇ ਨੇ ਕੋਲੇ ਜਾਗੋ ਤੀਰ ਇਹਨਾਂ ਦੇ ਕੋਲੇ ਵਜਣਾ ਨੇ ਉਹਨਾਂ ਦੀ ਸੌਹ ਹੋ ਜਾੜੀ ਇਹ ਹੋਣਾ ਉਹਲੇ ਹੋ ਜੂਗਾ ਦੋ ਚਾਰ ਸਾਲ ਦੇਖ ਲਿਓ ਥੋੜੇ ਸਾਹਣੀ ਹੋੜ। ਦੋਿਆਂ ਨੇ ਸੌ। ਭੁੱਖਮਾਰੀ ਉੱਡ ਗਈ। ਜਿੱਦੜਾ ਹਵਾਇਓ ਦਰੂ ਉੱਡ ਗਈ। ਕੱਖ ਖੋਰੀ ਇਹਨਾਂ ਦੇ ਪੱਲੇ ਰਹਿਣ। ਬਰੋਦਾਂ ਵਾਲੇ ਦੇ ਪੱਲੇ ਸੌਹ ਹੋਊਗੀ। ਇਹਨਾਂ ਦੀ ਸੌਹ ਬਣੂਗੀ। ਜੇ ਮੋਕੈਨਾਂ ਅੰਦਰ ਅਸੀਂ ਤੇ ਬਾਦੀ ਦਾ ਕੇਸ ਹੈ। ਹਾਰ ਗਿਆ ਸੌਹ ਹੋਊਗੀ ਜਿੱਤ ਗਿਆ ਕੋਦੇ ਰਹਿਗੇ। ਲੰਬੀ ਲੜਾਈ ਆ ਨਾ। ਬੰਦੇ ਦੀ ਇਹ ਵੀ ਲੰਬੀ ਲੜਾਈ ਆ ਇਹਨਾਂ ਦੇ ਖੋਲੇ ਬਾਝੜ ਕੇ ਫਲੇ ਫੇਰ ਵੀ ਇਹਨਾਂ ਦਾ ਬਜੂ ਕੁਛ ਨਾ ਖੋਇ ਇੱਜ਼ਤ ਇਹਨਾਂ ਦੀ ਬਚੂ ਜਿਹੜੇ ਬੰਨਣ ਵਾਲੇ ਨੇ ਇੱਜ਼ਤ ਇਹਨਾਂ ਦੀ ਬਚੂਗੀ ਤੋ ਇਹਨਾਂ ਬਿਲਕੁਲ ਵੀ ਇੱਜ਼ਤ ਗਾਏ ਗਾਏ ਹਟੇ ਗੰਧਰਬੋ ਗਵਾਏ ਕਿਨਰ ਗਰਬ ਗਾਏ ਗਾਏ ਹਟੇ ਗੰਧਰ ਕਿੱਧਰ ਵਿਚਾਰੇ ਗਾ ਗਾ ਕੇ ਥੱਕ ਗਏ ਗਾਏ ਗਾਏ ਹਟੇ ਗੰਧਰ ਬੋ ਗਵਾਏ ਕਿਨਰ ਗਰਬ ਕਿੱਧਰ ਗੰਧਰ ਬਣੇ ਜਿਹੜੇ ਬਜਾ ਬਜਾ ਕੇ ਗੰਧਰ ਵਿਚਾਰੇ ਗਵਾਏ ਕਿਨਰ ਗਰਬ ਕਿੱਧਰ ਜਿਹੜੇ ਸੀ ਉਹ ਨਚਣ ਵਾਲੇ ਨੇ ਜਿਹੜੇ ਉਹ ਗੋਲਦੇ ਸੀ ਉਹ ਘੋੜ ਤੇ ਨਚਦੇ ਸੀ ਪਟਨਾੜ ਦੇ ਗਉਨਦੇ ਰੀਨਾ ਨੂੰ ਗਵਾਏ ਕਿੰਨਰ ਗਰਬ ਗਰਬ ਗਰਬ ਉਹ ਗਰਬ ਕਰਦੇ ਰਹੇ ਵਿਚਾਰੇ ਨਰ ਗਾਚਦੇ ਤ ਰਹੇ ਉਹ ਉਹਨਾਂ ਨੂੰ ਵੀ ਹੰਕਾਰ ਹੋਇਆ ਇਹਨਾਂ ਨੂੰ ਗਉਲੇ ਵਜਾਉਣੇ ਵਾਲਿਆਂ ਨੂੰ ਵੀ ਹੰਕਾਰ ਹੋਇਆ ਵੀ ਆਪਣੀ ਕਲਾ ਦਾ ਹੰਕਾਰ ਹੋਇਆ ਪੜਤ ਪੜਤ ਥੱਕੇ ਮਹਾਕਵੀ ਗੜਤ ਗਾੜ ਅਨੰਤ ਬੜੇ ਬੜੇ ਕਬੀਰ ਜਿਹੜੇ ਸਿਮਰਤियां ਲਿਖਵਾਰੀਓ ਬੜੇ ਬਹੁਤ ਦੇ ਰਾਹ ਤੇ ਕਿਸੇ ਨੇ ਕਹਾਂ ਸਿਰੇ ਦੀ ਗੱਲ ਸਮਝ ਆਇਣੀ ਗੁਰਬਾਣੀ ਵਾਲੀ ਸਮਝ ਕਿਸੇ ਨੂੰ ਨਹੀਂ ਲੱਗੀ ਗੱਲ ਨਹੀਂ ਟੋੜੀ ਕਿਸੇ ਗੜਤ ਗਾੜ ਅਨੰਤ ਅਨੰਤ ਕਿਸਮ ਦੇ ਘੜ ਤਾਂ ਰਹੇ ਅਨੰਤ ਕਿਸਮ ਦੇ ਉਹ ਪ੍ਰਸੰਗ ਘੜਦੇ ਰਹੇ ਹਾਰ ਹਾਰ ਕਹਿਓ ਸਭ ਮੇਰਾ ਨਾਮ ਨਾਮ ਦੁਰੰਤ ਬਹਾਰ ਕੇ ਸਾਰਿਆਂ ਨੇ ਹੀ ਕਿਹਾ ਨਾਮ ਨੂੰ ਵੀ ਹੁਣ ਬਾਈ ਪਰਮੈਸ਼ਨ ਨੂੰ ਇਹੀ ਕਿਹਾ ਵੀ ਤੂੰ ਨਾਮ ਲੈ ਆਪਣਾ ਤਾਂ ਕਿ ਜਿਹੜਾ ਅੰਤਰ ਹੈ ਸਾਡਾ ਤੇਰਾ ਸਾਡਾ ਫਰਕਾ ਦੂਰ ਹੋ ਜਵੇ ਬੇਦ ਭੇਦ ਨਾ ਪਾਇਓ ਜਿਹੜਾ ਅੰਤਰ ਹੈ ਦੁਨੀਆਂ ਦੇ ਵਿੱਚ ਬਣਿਆ ਹੋਇਆ ਦੂਰ ਹੋ ਜਵੇ ਤੂੰ ਨਾਮ ਲੈ ਹੁਣ ਹਰ ਕੇ ਹੀ ਬੱਗੇ ਨਾਮੇ ਬੱਗੇ ਸਾਰਿਆਂ ਦੇ ਫਿਰ ਵੀ ਆਪ ਦਾ ਗਾਰਦੀ ਲੋਕਾਂ ਨੂੰ ਦਾ ਬਿਨਾਮ ਕੀ ਹੈ ਅਸਲ ਸ਼ੀ ਬੇ ਬੇਦ ਨਾ ਪਾਇਓ ਲਖੇ ਉਹਨਾਂ ਸੇਵਕ ਤੇਵ ਨਾ ਡਬੇ ਦਾ ਨੇ ਬੇਦ ਪਾਇਆ ਜਿਹੜੇ ਨੇ ਬੇਦ ਲਿਖਨੇ ਉਹਨਾਂ ਨੇ ਬੇਦ ਪਾਇਆ ਉਹ ਬੇਦ ਨਾ ਬੇਦ ਵਾਲੇ ਨੇ ਜਿਹੜੀ ਸੇਵਾ ਕੀਤੀ ਹੈ ਸੇਵ ਕੀਤੀ ਹੈ ਨਾ ਕਿਤੇ ਆਪਣੇ ਸੇਵ ਨੂੰ ਪਰਮਾ ਜਿਆਦਾ ਕੀਤਾ ਹੋਇਆ ਦੇਵਦਾਨੋਂ ਉਹ ਕਹਿੰਦੇ ਨੇ ਜਿਹੜਾ ਖੁਦਾ ਦੇ ਬੰਦਿਆਂ ਦੀ ਸੇਵਾ ਕਰਦਾ ਨਾ ਉਹ ਖੁਦਾ ਦੀ ਸੇਵਾ ਚਲ ਉਹਨਾਂ ਨੇ ਤੇ ਇਹ ਗੱਲ ਬੁਖਾਤੀ ਇਸੇ ਕਰਕੇ ਇਸਾਈ ਰੱਬ ਦੇ ਬੰਦਿਆਂ ਦੀ ਸੇਵਾ ਕਰਦੇ ਉਹ ਪਬਲਿਕ ਦੀ ਸੇਵਾ ਕਰਦੀ ਦੀਨਾਂ ਦੀ ਸੇਵਾ ਕਰਨ ਲੂ ਉਹ ਕਹਿੰਦੇ ਇਹ ਰੱਬ ਦੀ ਸੇਵਾ ਗਲ ਵੀ ਠੀਕ ਹੈ ਰੱਬ ਦੀ ਤੁ ਹੀ ਸੇਵਾ ਹੋਰ ਕੀ ਕਰਦੀ ਉਹਦੀ ਸੇਵਾ ਕੀ ਕਰਨੀ ਹੁੰਦਾ ਸਾਰਿਆਂ ਦੀ ਸੇਵਾ ਕਰਦਾ ਆਏ ਉਹਦੇ ਬੰਦਿਆਂ ਦੀ ਸੇਵਾ ਕਰਨੀ ਜਿਹੜੀ ਇਹਨਾਂ ਈ ਉਹਦੀ ਸੇਵਾ ਜੇ ਕਿਸੇ ਸਬਰਥਾ ਹੈ ਫਾਲਤੂ ਹੈ ਆਇਆ ਹੋਇਆ ਉਹ ਪਬਲਿਕ ਵਾਸਤੇ ਆਇਆ ਤੇ ਵਾਧੂ ਹੈ ਜੇ ਤੇਤੋਂ ਵਾਧੂ ਹੈ ਉਹ ਕਿਸੇ ਵਾਸਤੇ ਦੂਏ ਵਾਸਤੇ ਕਰਦੇ ਨੇ ਪਰ ਉਹਨਾਂ ਨੂੰ ਉਹ ਜੋ ਉਹ ਗੱਲ ਨਾਮ ਰੀ ਪ੍ਰਾਪਤ ਹੋਇਆ ਜਾਂ ਸੇਵਾ ਦਾ ਕਰਦੇ ਨੇ ਹੋ ਆਤਮਾ ਤਾਂ ਸ਼ੁੱਧ ਹੋਈ ਆ ਪਰ ਨਾਮ ਦੀ ਪ੍ਰਾਪਤੀ ਨਹੀਂ ਹੋਈ ਆਤਮਾ ਸ਼ੁੱਧ ਨਾਮ ਦੀ ਪ੍ਰਾਪਤੀ ਕਦ ਹੋਊਗੀ ਇਹ ਗੁਰਬਾਣੀ ਨੂੰ ਸਮਝੇ ਫਿਰ ਉਹ ਨਹੀਂ ਪ੍ਰਾਪਤੀ ਸੇਵਾ ਜੋ ਨਹੀਂ ਪ੍ਰਾਪਤੀ ਸ਼ੁੱਧ ਹੋਊਗੀ ਦੇਵਦਾਨੋ ਮੂੜਮਾਨੋ ਚਾਛਣਾ ਜਾਣੇ ਜੀਵ ਕਾਇਨ ਦੇਵਦਾਨੋ ਮੂਢ ਮਾਨੋ ਦੇਵਤਿਆ ਦਾਲਵਾਨੋ ਤਾਂ ਦੋਹਾਂ ਨੂੰ ਤੁਸੀਂ ਇਹ ਮੰਨ ਲਓ ਵੀ ਇਹ ਤਾਂ ਦੋਏ ਮੂਰਖ ਨੇ। ਨਾ ਲਉਂਦਾ ਦਵਾ। ਦੇਵਦਾਨੋ ਮੂਢ ਜਾਂਦਾ। ਦੇਵਦਾਨੋ ਮੂਢ ਮਾਨੋ ਦੇਵਤਿਆ ਰਾਵ ਸ਼ੰਤ ਤਾਂ ਸਰਬ ਤੁਸੀਂ 2 ਮਿੰਟ ਬਾਅਦ ਤੇ ਮੰਨ ਲਓ ਵੀ ਇਹ ਤਾਂ ਦੋਏ ਬੂਰਖ ਨੇ। ਊੜ ਮਾਨੋ। ਜੱਛ ਜਾਣੇ ਜੀਵ। ਜਿਹੜੇ ਜੱਛ ਨੇ। ਕਬੀਰ ਉਹ ਮੂਰਖ ਨਹੀਂ ਹੁੰਦੇ। ਕਬੀ ਨਹੀਂ ਮੂਰਖ ਹੁੰਦੇ ਲਕੀਰ ਦੇ ਫਕੀਰ ਨਹੀਂ ਹੁੰਦੇ ਕਬੀ ਕਵੀ ਕਈ ਗੱਲਾਂ ਹੈ ਕਹਿੰਦੀਆਂ ਇਹਨਾਂ ਦੇ ਖਿਲਾਫ ਕਵੀ ਉਹ ਨਹੀਂ ਜਿਹੜੇ ਕਹਿੰਦੇ ਨੇ ਤੂੰ ਵੀ ਉਹ ਮੂਰਤੀ ਵਿੱਚ ਵੀ ਤੂੰ ਵਿਆਪਕ ਹੋ ਫੁੱਲੋਂ ਵਿੱਚ ਭਲਾ ਭਗਵਾਨ ਕੋ ਭਗਵਾਨ ਪਰ ਕੈਸੇ ਚੜਾਉ ਵੇ ਕਵੀਦਾਨ ਮਾਲ ਸੀ ਇਹ ਗੱਲ ਕਹੇ ਸੀ ਤੁਸੀਂ ਕਹਿੰਦੇ ਮੂਰਤੀ ਚ ਵੀ ਆ ਫੁੱਲ ਚ ਵੀ ਆ ਮੈਂ ਤੁਹਾਨੂੰ ਵੀ ਚੜਾਉਂਦਾ ਭਗਵਾਨ ਨੂੰ ਭਗਵਾਨ ਤੇ ਤੋੜ ਕੇ ਕਬੀਦਾ ਦਿਮਾਗ ਸੀ ਲੋ ਉਹਨੇ ਵਿਚਾਰਿਆ ਇਹ ਜਾਚਾ ਹੋਰੇ ਇਹਨਾਂ ਦਾ ਮੋਰਖਾ ਉਹ ਚੱਗੇ ਹੁੰਦੇ ਨੇ ਆਗਲ ਕਹਿ ਰਹੇ ਆ ਜੱਝ ਜਾਨਾ ਜੋ ਕਬਤਾਰ ਘਟ ਕੇ ਜੀ ਰੋਜ਼ ਬੋਲਣੀ ਹੈ ਕਬਤਾਰ ਨੂੰ ਸਮਝਣਾ ਹੈ ਘਟ ਕੇ ਬੋਲਣੀ ਹੈ ਜੀ ਉਹਦਾ ਦਿਮਾਗ ਆਪਣਾ ਚੱਲਦਾ ਹੁੰਦਾ ਇਹਨਾਂ ਦਾ ਦਿਮਾਗ ਖੜਾ ਹੁੰਦਾ ਹੈ ਇਹ ਤਾਂ ਛੱਪੜ ਦਾ ਬਾਣੀ ਹੁੰਦਾ ਦੇਵਤੇ ਆਦਾਂ ਨੂੰ ਉਹ ਮੈਨਾਵਾਂ ਨੂੰ ਵਾਲੇ ਹੁੰਦੇ ਨੇ ਉਹਨਾਂ ਤਾਂ ਬਗਾਵਤ ਦੀ ਗੱਲ ਵੀ ਰੱਬ ਹੈ ਨਹੀਂ ਚੁੱਟੀ ਹੋ ਗਈ ਰਾਖਿਆ ਨੇ ਤਾਂ ਇਹ ਲਕੀਰ ਦੇ ਫਕੀਰ ਹੁੰਦੇ ਨੇ ਲਕੀਰ ਦਾ ਇੱਧਰ ਉੱਧਰ ਜੇ ਕੋਈ ਲੈ ਕੇ ਜਾਵੇ ਗਿਆਨਵਾਣਾਂ ਉਹਦਾ ਵਿਰੋਧ ਕਰਦੇ ਨੇ ਦੇਵਤੇ ਗਿਆਨ ਦਾ ਵਿਰੋਧ ਕਰਦੇ ਹੁੰਦੇ ਨੇ ਜਿਹੜਾ ਉਹਨਾਂ ਨੂੰ ਗਿਆ ਜਿਹੜੀ ਉਹਨਾਂ ਨੇ ਲਕੀਰ ਖਿੱਚ ਨਾਲ ਲਕੀਰ ਦੇ ਫਕੀਰ ਹੋ ਗਏ ਉਹ ਤੋਂ ਚੰਗਾ ਗਿਆਨ ਨੂੰ ਉਹਦਾ ਵਿਰੋਧ ਕਰਦੇ ਹੁੰਦੇ ਦੇਵਤੇ ਦਾ ਅਕਲਬੁਦਰੀ ਹੋ ਸਕਦੇ ਉਹ ਉੱਥੇ ਰੁਕ ਜਾਂਦਾ ਉਹਨਾਂ ਦਾ ਉਹ ਦੂਏ ਕਹਿੰਦਾ ਉਹਨਾਂ ਨੇ ਵੀ ਅਕਲ ਦਾ ਸਾਡੇ ਕੋਲ ਕੰਮੇ ਕੋਈ ਨਹੀਂ ਐਂਦਾ ਸੰਸਾਰ ਜਾਣਦਿਆਂ ਸੰਸਾਰ ਚ ਆਪਣਾ ਰਜ ਦੱਬ ਕੇ ਬਾਅਦ ਤੇ ਰਜ ਕੇ ਖਾ ਉਹਨਾਂ ਦਾ ਇਹ ਵੀ ਆਪਣਾ ਦੇਹੀ ਤੋੜ ਕੇ ਕੰਮ ਕਰੋ ਅਨੰਤ ਤੇ ਜਿਕੇ ਖਾਓ ਬਾਕੀ ਰਾਬਰੂ ਬੁ ਦੇਖੀ ਜਊ ਰੱਬ ਦਾ ਦੀ ਅਪਨ ਕੀ ਲੈਣਾ ਰੱਬ ਤੇ ਪੁਖੇ ਨਮਰੋ ਉਹ ਸਰੀਰ ਤੱਕ ਅਸੀਮਤ ਹੁੰਦੇ ਰਗਾਹ ਦੀ ਗੱਲ ਆਤਮਾ ਤੱਕ ਅਸੀਮਤ ਤੇਰੀ ਉਹ ਆਤਮਾ ਤੱਕ ਪਹੁੰਚਦੇ ਹੀ ਨਹੀਂ ਆਤਮਾ ਦੀ ਗੱਲੇ ਹੀ ਦੀ ਉੱਥੇ ਰਖਿ ਜਾ ਗੋੜ ਪੂਤ ਭਵਾਨ ਭੂਪਤ ਆਦਨਾਥ ਅਨਾਥ ਜਿਹੜੇ ਹੁਣ ਤੱਕ ਰਾਜੇ ਹੋਏ ਨੇ ਤੇਨਾਂ ਗਾਲਾਂ ਦੇ ਭੂਤ ਭਵਿਕਤ ਇਹ ਹੁੜ ਹਾਜ਼ਰ ਆਦਿਨਾਥ ਅਨਾਥ ਆਦਿਨਾਥ ਜਿਹੜਾ ਹੈਗਾ ਇਹੀ ਦੱਸਿਆ ਉਹਨਾਂ ਨੇ ਆਦੇ ਰਾਤ ਹੈ ਉਹ ਅਨਾਥ ਹੈ ਜਿੰਨੇ ਵੀ ਹੁਣ ਤੱਕ ਹੋਏ ਨੇ بڑے بڑے ਗਿਆਨਵਾਨ ਆਦਮੀ ਰਾਜੇ ਤਾਰੂ ਕਰਾ ਜੀ ਆਦੂਏ ਵੀ ਰਾਜੇ ਉਹਨਾਂ ਨੇ ਇਹੀ ਦੱਸਿਆ ਵੀ ਜਿਹੜਾ ਆਦ ਹੈ ਭਾਈ ਇਹ ਅਨਾਥ ਹੈ ਇਹ ਕਿਸੇ ਇਹ ਸਭ ਦਾ ਨਾਥ ਹੈ ਆਪ ਅਨਾਥ ਹੈ ਅਗਨੀ ਭਾਏ ਜਲੇ ਥਲੇ ਮਹਿ ਸਰਵਠੋਰ ਥੌਰ ਨਿਵਾਸ ਉਹਦਾ ਜਲਥਾ ਲਗਦੀ ਦੇ ਵਿੱਚ ਹਰ ਜਗ੍ਹਾ ਨਿਵਾਸ ਹੈ ਅਗਨੀ ਕਿਵੇਂ ਹੁਣ ਤੇ ਤੇ ਪੇੜ ਹੈ ਤੇ ਪੈਦਾ ਹੁੰਦਾ ਹੈ ਅਗਰ ਪਾਣੀ ਉੱਤੇ ਇਕੱਠੇ ਕਰ ਰਿਹਾ ਪੇੜ ਦੇ ਵਿੱਚ ਪਾਣੀ ਦੇ ਵਿੱਚ ਅੱਗ ਰੱਖ ਰਿਹਾ ਹੈ ਪੇੜ 'ਚ ਪਾਣੀ ਹੈ ਨਾ ਆਗੋਂ ਤੇਰਾ ਕਰੇ ਟਿਕਾ ਟਕਾ ਕੇ ਜਬੂ ਕਰਕੇ ਰਤਬਤੀ ਚੱਗ ਲੱਕੜ ਜਿਹੜੀ ਆਉਗੀ ਅੱਗੇ ਐ ਪਾਣੀ ਵਿੱਚ ਅੱਗ ਪੈਦਾ ਕਰਕੇ ਰੱਖ ਰਿਆ ਹੈ ਸਾਹਮ ਕੇ ਰੱਖ ਰੇ ਪੜ ਜਗ ਨੂੰ ਨਵਾਸ ਨੂੰ ਤਾਂ ਕਰਕੇ ਜਿੱਦਾਂ ਜ ਆ ਉਹਨੇ ਚ ਹੈ ਅਗਨੀ ਬਾਏ ਜਲੇ ਥਲੇ ਮੈਂ ਸਰਬothor ਨਵਾਸ ਸਰਬothor ਨਵਾਸ ਉਤੇ ਅੱਗ ਵੀ ਐ ਪੇੜ ਦੇ ਵਿੱਚ ਸਰੀਰ ਚ ਅੱਗ ਵੀ ਐ ਮਾਰੂਥਰ ਵਿੱਚ ਵੀ ਪਾਣੀ ਵੀ ਹੈ ਕੱਠੇ ਨਾ ਦੋਏ ਰਹਿੰਦੇ ਜਲ ਵੀ ਹੈ ਥਲ ਵੀ ਹੈ ਥਲ ਸੁਖਕਾ ਬਾਸਪੱਟੀ ਵੀ ਖੁਸ਼ਕਾ ਹੈ ਲਹੂ ਦੇ ਵਿੱਚ ਪਾਣੀ ਵੀ ਹੈ ਗਿੱਲ ਵੀ ਹੈ ਨਵਾਸ ਨਹੀਂ ਇੱਥੇ ਇਹ ਜਲੇ ਥਲੇ ਸਰੀਰ ਦਾ ਨਾਮ ਆ ਪੇੜ ਵੀ ਜਲੇ ਥਲੇ ਉਹਦੇ ਮਿੱਟੀ ਵੀ ਆਊਗੀ ਜਦ ਆਪਾਂ ਸੁੱਕ ਜੂਗਾ ਮਿੱਟੀ ਹੋ ਜੂਗੀ ਜਲ ਪਾਣੀ ਉਡ ਜੂਗਾ ਜਲਦਲੇ ਪੇੜ ਵੀ ਜਲੇ ਥਲੇ ਆ। ਜਲਦਲੇ ਕਹਿੰਦੇ ਧਰਤੀ ਔਰ ਪਾਣੀ ਐ ਨਹੀਂ ਹੈਗਾ ਜਲੇ ਥਲੇ। ਜਲਦਲ ਇਕੱਠਾ ਹੀ ਐ। ਜਿੱਤੇ ਸਰੀਰ ਐ ਉੱਤੇ ਜਲਦਲ ਦੋਏ ਨੇ। ਉਪੈ ਜੇ ਤਾਂ ਤਾਂ ਸਰੀਰ ਐ ਜਲਦਲ ਇਕੱਠੇ ਨੇ ਤਾਂ ਹੀ ਸਰੀਰ ਐ। ਜਲੇਦਲੇ ਨਵਾਸ ਹੈ। ਦੇਹ ਗਹਿ ਨਹੇ ਸਨੇਹ ਅਬੇ ਅਨਾਥ ਅਜੀਤ ਦੇਦਾ ਕੋਇ ਉਹਨੂੰ। ਨਾ ਦਾ ਦੇ ਹਲਦੀ ਨਾ ਘਰ ਹੈ ਉਹਦਾ ਕੋਈ ਨਾ ਇਹਦਾ ਨੇ ਹੈ ਦੇ ਦਾ ਘਰ ਦਾ ਸਨੇਹ ਅਬੇ ਨਾਥ ਜਾ ਸਕਦਾ ਉਹਨੂੰ ਕੋਈ ਬਨ ਕੇ ਨਹੀਂ ਰੱਖ ਸਕਦਾ ਅੱਛੀ ਉਹਨੂੰ ਕੋਈ ਬਨ ਕੇ ਆ ਬਿਨ ਕੇ ਮਣ ਕੇ ਬਿਨੇ ਹੋਏ ਪਰਉ ਹੋਦੇ ਨੇ ਬਾਲਾ ਦੇ ਵਿੱਚ ਚਾਹੇ ਉਹ ਬਨ ਕੇ ਗਾਲੋ ਚਾਹੇ ਬਿਨ ਕੇ ਗਾਲੋ ਇਹ ਸੂਤ ਪਰਉਏ ਬਣੀ ਹੈ ਪਰ ਪਰ ਕਾਠੀ ਪਰ ਪਰ ਤੜੀ ਅਜੀਤ ਅਜੀਤ ਨੂੰ ਕਾਬੂ ਨਹੀਂ ਕਰਿਆ ਜਾ ਸਕਦਾ ਕੋਈ ਆਦਮੀ ਕਾਬੂ ਕਰਕੇ ਉਹਨੂੰ ਰੱਖ ਲਵੇ ਜਿਵੇਂ ਕਹਿੰਦੇ ਨੇ ਮੇਰੇ ਭੂਤ ਕਾਬੂ ਹੋ ਜੀ ਆ ਕਾਬੂ ਹੈ ਦੇਵ ਕਾਬੂ ਕਹਾਣੀਆਂ ਨੇ ਜਿਹੜੀਆਂ ਬਣਾਈ ਹੋਈਆਂ ਉਹ ਕਹਾਣੀਆਂ ਤੋਂ ਹਟਾਇਆ ਥੋੜੂ ਕੋਈ ਬੰਦਾ ਨਹੀਂ ਕਾਬੂ ਕਰਕੇ ਰੱਖਦਾ ਇਹਨੂੰ ਉਹ ਕਰ ਸਕਦਾ ਬੰਦੇ ਦੇ ਬਾਸ ਵਿੱਚ ਨਹੀਂ ਜੇ ਕੋਈ ਮੇਰੇ ਸ਼ਕਤੀ ਹੈ ਜੀ ਮੇਰੇ ਕੋ ਸ਼ਕਤੀ ਹੈ ਗਲਤ ਗੱਲਾਂ ਆਤਮਾ ਨੂੰ ਕਾਬੂ ਕੋਈ ਕਰ ਸਕਦਾ ਆਤਮਾ ਨੂੰ ਨੀ ਕਾਬੂ ਕਰਕੇ ਰੱਖ ਸਕਦਾ ਉਹ ਤਾਂ ਛੱਡੋ ਤੁਸੀਂ ਆਤਮਾ ਜੀ ਵੀ ਉਹ ਸਾਰੇ ਗੁਣ ਜਿਹੇ ਜਿਹੋ ਤੇ ਚਲੇ ਉਹ ਜਿਹੜਾ ਗੁਣ ਕੁਛ ਆਤਮਾ ਚ ਨਾ ਕੁਛ ਔਗੜਿਆ ਆਤਮਾ ਚ ਹੋਰ ਗੱਲ ਕੁਛ ਨਹੀਂ ਹੈ ਗੁਣ ਵੀ ਉਹ ਗੁਣਤਵ ਦੇ ਵਾਲੇ ਹੈਗੇ ਨੇ ਇਹ ਔਗੜਣੇ ਜਿਹੜੇ ਉਹਨਾਂ ਦਾ ਰੌਲਾ ਜਾਂ ਔਗਣ ਹਟ ਕੇ ਇੱਕੋ ਹੀ ਹੋ ਗਏ ਫਿਰ ਔਗਣਾ ਕਰਕੇ ਆਟਾ ਆਤਮਾ ਹੋਰਾ ਆਤਮਾ ਦੇ ਕੀ ਹੋਏ ਗਰਬਗੰਜਨ ਸਰਵਪੰਜਨ ਸਰਬਤੇ ਅਨਪੀਤ ਗਰਬਗੰਜਨ ਸਰਵਪੰਜਨ ਗਰਬਗੰਜਨ ਬਾਹਰ ਦਾ ਤੇ ਜੋੜ ਕਰਦਾ ਬਾਹਰ ਦਾ ਵਿਰੋਧੀ ਹੈ ਸਰਵਪੰਜਨ ਸਰਬਤੇ ਅਨਪੀਤ ਸਰਬਤੇ ਅਨਪੀਤ ਸਰਬਤੇ ਅਨਪੀਤ ਸਾਨਾਂ ਦੇ ਨਾਲ ਪੀਤੋ ਦੀ ਅਸਲ ਦੇ ਬਾਹਰ ਪੀਤ ਕਦ ਹੁੰਦੀ ਹੈ ਕਿਸੇ ਨਾਲ ਵੀ ਉਹਦੀ ਵਟ ਨਹੀਂ ਪਾਈ ਗਈ ਪੀਤ ਵੱਟ ਨਹੀਂ ਉਕਦੀਆਂ ਜਦ ਕਿ ਪੀਤ ਪਵਨ ਦਾ ਥੰਬਾ ਐ ਨਹੀਂ ਹੈਗਾ ਵੀ ਐ ਦੇ ਨਾਲ ਪ੍ਰੇਮ ਕਰਦਾ ਐ ਦੇ ਨਾਲ ਕਰਦਾ ਨਹੀਂ ਇਹਨੂੰ ਚੰਗਾ ਸਮਝਦਾ ਇਹਨੂੰ ਸਮਝਦਾ ਨਹੀਂ ਕੋਈ ਉਹਦੇ ਅੰਦਰ ਵੱਟ ਨਹੀਂ ਕਿਸੇ ਖਾਤਰ ਕੋਈ ਦਰਾਇਤ ਨਹੀਂ ਹੈ ਸਾਰੇ ਨਾਰ ਪੀਤੇ ਸਮੁੰਦਰ ਆਉਂਦੇ ਕੋਈ ਖਲਦ ਹੁੰਦੀ ਆ ਬਸ ਅਦਲੀ ਮੱਛੀ ਹੈਦਰ ਆਜੋ ਇਦਰੀ ਹੈਦਰ ਆਜੋ ਮੱਛੀਆਂ ਭਾਵੇਂ ਉਸ ਵਿੱਚ ਲੜ ਲ ਸਮੁੰਦਰ ਦਾ ਤਾਂ ਕੈਨੜੀ ਵੀ ਲੜੋ ਬਚਿਆ ਜਾ ਹੈ ਲੜਨ ਆਉਜੀ ਸਾਡੇ ਏਰੀਆ ਚ ਨਾਲ ਤੂੰ ਰਹਾ ਉਹ ਕਰਤਾ ਸਰਬ ਹਰਤਾ ਸਰਬ ਦਿਆਲ ਅਦੈ ਅਦੈਖ ਦਿਆਲ ਸਾਰਿਆਂ ਦਾ ਕਰਤਾ ਦੇਖੋ ਨਾ ਸਰਬ ਕਰਤਾ ਜਦ ਬੱਟ ਕੀ ਦੇ ਖਾਤਰ ਪਾਊਗਾ ਉੱਤੇ ਆਈ ਨਾ ਬਾਟ ਹੈ ਦੀ ਸਰਬ ਕਰਤਾ ਇਹ ਸਾਰੇ ਉਹਨਾਂ ਬਣਾਏ ਨੇ ਸਰਬ ਹਰਤਾ ਤੇ ਵੱਟ ਕੀ ਦੇ ਖਾਤਰ ਪਾਉਂ। ਵੱਟ ਤਾਂ ਪਾ ਨਹੀਂ ਸਕਦਾ ਉਹ। ਸਾਰੇ ਉਹਦੇ ਹੀ ਦੇ। ਸਰਬਦੇਵਾਲ। ਸਾਰੇ ਵਾਲ ਤੇ ਦਿਵਾਲ ਐ। ਸਾਰਿਆਂ ਦਾ ਹਰਤਾ ਵੀ ਐ, ਖਤਮ ਵੀ ਉਸਨੇ ਕਰਨਾ ਸਾਰਿਆਂ ਨੂੰ। ਅਸਲ ਜੀ ਖਤਮ ਕੀ ਕਰਨਾ। ਹਰਤਾ ਕੀ ਐ? ਹਰਤਾ ਗਿਆ ਖਤਮ ਨਹੀਂ ਕਰਤਾ ਕਿਹਾ। ਹਰਤੇ ਦਾ ਬੁੱਧਰ ਮਾਰਨ ਵਾਲਾ ਨਹੀਂ ਉਹ ਹਰਤੇ ਦਾ ਜਿਹੜੇ ਇਹਨਾਂ ਦੇ ਨਾ ਔਗਣ ਹਰ ਲੈਣੇ ਨੇ ਉਹਨੇ। ਖੋ ਲੈਣੇ ਨੇ ਤੇ ਆ ਤਾਂ ਉਹਨੂੰ ਖੋਦ ਐ ਅਸੀਂ ਦਿੱਦੇ ਦੀ ਉਹਨੂੰ ਛੱਡਦੇ ਨਹੀਂ ਜੇ ਮੈਂ ਨਿਆਣੇ ਤੋਂ ਜਾਕੂ ਖੋਲੀ ਉਹ ਵੀ ਉਂਗਲੀ ਵੱਲ ਰੱਖ ਲੂਗਾ ਉਹ ਨਿਆਣਾ ਜਾਕੂ ਦੰਦਾ ਦੀ ਉਹ ਤਾਂ ਖੋਦ ਐ ਉਹ ਚੀਜ਼ਾਂ ਗਲਤ ਨੇ ਜਿਹੜੀਆਂ ਅਸੀਂ ਛੱਡਦੇ ਨਹੀਂ ਉਹਨੂੰ ਬਸ ਆ ਗੱਲ ਅਸੀਂ ਵੀ ਤਾਂ ਕੋਈ ਐਸੀ ਜੀ ਚੀਜ਼ ਹੋਵੇ ਬੱਚੇ ਕੋਲ ਸੀ ਖਾਲੀ ਡੱਬੀ ਹੋਵੇ ਇਹਨਾਂ ਕੋ ਚਲਾਉਣ ਬਚਾਉਣ ਜਾਣਦਾ ਹੋਵੇ ਅਸੀਂ ਉਹਦੇ ਖੋਲਾਂਗੇ ਵੀ ਸੀਗ ਮੂੰਹ ਚ ਪਾ ਤਾਂ ਵੀ ਗਲਤ ਹੈ ਇਹਨੇ ਜਾਲ ਕੱਕ ਤੇ ਇਧਰ ਉਧਰ ਅਗਲਾ ਤੀ ਤਾਂ ਔਖਾ ਹੈ ਉਹ ਸਾਡੇ ਜਿਹੜੇ ਔਗਣ ਨੇ ਉਹ ਖੋਦ ਵੀ ਔਗਣ ਦੁੱਖ ਦਿੰਦੇ ਨੇ ਇਹਨਾਂ ਨੂੰ ਇਹ ਦੁਖੀ ਨੇ ਇਹਨਾਂ ਤੇ ਔਗਣ ਮੈਂ ਖੋਲਾਂ ਹਰਤਾ ਇਹ ਹੈ ਔਗਣ ਹਰਦਾ ਸਾਡੇ ਦੂਰ ਕਰਦਾ ਹੈ ਉਹ ਨਹੀਂ ਆ ਕਿਸੇ ਨਾਲ ਉਹਦਾ ਉਸਾਂ ਨੂੰ ਲੱਗਦਾ ਦੋਸ਼ ਹੈ ਦੋਸ਼ ਕਾਲੂ ਦੇ ਸਨ ਨਾ ਤਾਉਗਣ ਦੂ ਖੋ ਰਿਆ ਸਾਤੇ ਅਸੀਂ ਉਹ ਬਜਾ ਜੀ ਕੰਮਾਰਦਾ ਵੀ ਮੈਨਿ ਚਾਕੂ ਦੜ ਉਹ ਚਾਕੂ ਨਹੀਂ ਦਿੰਦਾ ਹੋਰ ਉਹ ਫੇਗਰਾ ਵੀ ਚਾਕੂ ਨੇ ਗਲਵਡਾ ਲੈਣੀ ਚੱਕਰ ਨਾ ਬਰਨ ਜਾ ਕੋ ਜਾਤ ਪਾਤ ਨਾ ਭੇਖ ਚੱਕਰ ਜਨ ਹੈ ਨਹੀਂ ਕੋਈ ਫੇਰ ਵੀ ਇਹਨਾਂ ਕੁਝ ਕਰੀ ਜਾਂਦਾ ਚੱਕਰ ਤੇਨ ਫੇਰ ਵੀ ਹੈ ਜੀ ਜਾਤ-ਪਾਤ ਨਾ ਦੇਖੋ ਕਰਦਾ ਕਿ ਕੁਛ ਹੈ ਸਾਰਿਆਂ ਨਾਲ ਤੇ ਜਾਤ-ਪਾਤ ਦਾ ਕੋਈ ਸ਼ਕਲ ਸਾਨੂੰ ਅੱਖਾਂ ਹੈ। ਜਿਹਨੂੰ ਉਹ ਦੱਸ ਰਿਹਾ ਜਿਹਨੂੰ ਦੱਸ ਰਿਹਾ ਉਹ ਨੂੰ ਦੇਖ ਰਿਹਾ। ਐਨਾ ਕੋਈ ਦੱਸਿਆ ਤੇ ਵੀ ਵਿਸ਼ਵਾਸ ਨਹੀਂ ਹੋਇਆ ਸਾਨੂੰ। ਥਾਰੀ ਬਾਣੀ ਪੜ ਕੇ ਵਿਸ਼ਵਾਸ ਕਰਨ ਦੀ ਗੱਲ ਹੈ। रूप रेख ना रंग जाको राग रूपन रंग रूप रे कोई नहीं है राग रंग कोई नहीं राग नहीं है कोई रंग नहीं है रूप नहीं है ਦਲੈਕੀ ਕੋਈ ਨਹੀਂ ਹੈ ਸਰਨ ਲਾਇਕ ਸਾਰੀਆਂ ਲੈਕੀਆਂ ਨਹੀਂ ਦੇ ਨਲੈਕੀ ਰਹੀ ਕੋਈ ਉਹ ਸਰਭ ਘਾਇਕ ਸਾਰੀਆਂ ਸਾਡੀਆਂ ਨਲੈਕੀਆਂ ਨੂੰ ਉਹਦੀਆਂ ਲੈਕੀਆਂ ਖਤਮ ਕਰ ਰਹੀਆਂ ਨੇ ਘਾਇਕ ਘਾਇਕ ਹਮਲਾ ਕਰ ਰਹੀਆਂ ਸਾਡੀਆਂ ਨਲੈਕੀਆਂ ਤੇ ਉਹਦੀਆਂ ਲੈਕੀਆਂ ਅਸਲਚੋ ਸਰਬ ਸਾਨੂੰ ਲੱਗਦਾ ਗੁੱਸਾ ਨਲਾਇਕ ਨੂੰ ਜੇ ਨਲਾਇਕ ਕਹ ਜੀ ਗੁੱਸਾ ਕਰਦਾ ਫੇਛੜੂ ਕਾ ਦੋ ਨਲਾਇਕੀ ਉਹ ਤਾਂ ਨਾਇਕ ਹੈ ਤੇ ਗੁੱਸਾ ਕਰਦਾ ਛੱਡੂ ਕਾ ਦੋ ਗੱਲਾ ਹੈ ਜਿੰਨੀਆਂ ਬੰਤਾਂ ਦੀਆਂ ਨਲਾਇਕੀਆਂ ਨੇ ਉਹਨਾਂ ਨੂੰ ਯਾਰ ਦੱਸ ਕੇ ਵੀ ਤੇਰੇ ਚ ਭਾਈ ਇਹ ਨਲਾਇਕੀ ਹਰ ਕਾ ਸੇਵਕ ਕਰ ਰਿਹਾ ਹਰ ਜਿਹਾਂ ਹਰ ਕਾ ਸੇਵਕ ਸੋ ਹਰ ਜਿਹਾਂ ਭੇਦ ਨ ਜਾਣੂ ਮਾਨਸ ਦੇ ਹ ਮਾਨਸ ਦੇ ਆਨੰਦ ਤੁਸੀਂ ਜਾਣੋ ਭੇਦ ਮਾਨਸ ਦੇ ਕੀ ਹੈ ਕਰਵਾ ਕੌਣ ਰਿਹਾ ਹੈ ਕਰਵਾਇ ਜਿਹੜਾ ਰਿਹਾ ਹੈ ਉਹ ਪਿੱਛੇ ਖੜਾ ਬੋਲਣ ਵਾਲਾ ਬੋਲ ਰਿਹਾ ਪਿੱਛੇ ਖੜਾ ਦੀਦਾ ਲੋਕਾਂ ਨੂੰ ਉੱਤਜੀ ਸਰਬਦਾਤਾ ਸਰਬ ਗਿਆਤਾ ਸਰਬ ਕੋਪਰਤਪਾਲ ਸਰਬ ਸਾਰਿਆਂ ਦਾਤਾ ਸਾਰਿਆਂ ਨੂੰ ਜਾਣਦਾ ਸਾਰਿਆਂ ਦੀ ਪਰਤਪਾਲਾ ਕਰਦਾ ਸਭ ਕੁਝ ਜਾਣਦਾ ਸਰਬ ਗਿਆਤਾ ਐਸੀ ਗੱਲ ਕੋਈ ਨਹੀਂ ਜਿਹੜੀ ਉਹ ਜਾਣਦਾ ਨਾ ਹੋਵੇ ਸਰਬ ਦਾਤਾ ਸਰਬ ਗਿਆਤਾ ਸਾਰਿਆਂ ਦੇ ਅੰਦਰ ਕੀ ਹੈ ਸਮਝ ਕੀ ਚੀਕ ਕਮੀਆਂ ਜਾਣਦਾ ਸਾਰਿਆਂ ਦੀ ਪਰਤ ਕਰਦਾ